ਸਤਨਾ ਧਨਵਾਖੇ ਗੁਰੂ ਸਾਖੇ हम महले तुम उजल करते हम निरगुण दाता हम मूर्ख ਤੁਮ चतुर सान सर्व कला का ज्ञाता माधव हम ऐसे तुम ऐसा हम पापी तुम पाप खंडन ਨੇ ਕੋ ਠਾਕੁਰ ਦੇ ਸ਼ਾਮ ਡੰਡੋਤ ਬੰਦਨ ਅਨਕ ਬਾਾਰ ਸਰਬ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਸਤਨਾਮ ਧਨ ਵਾਖੇ ਗੁਰੂ ਸਾਹਿਬ ਜੀਓ ਸੋਚ ਸੋਚ ਨਾ ਖੋਵਈ ਜੇ ਸੋਚੀ ਲੱਖ ਵਾਰ ਚੁੱਪ ਚੁੱਪ ਨਾ ਹੋਈ जे लाए रहा लेवर भूख्या भूख ना उतरी जे बनना पुरिया पार साहस स्यान पा लख हो है एक ना चल नाल केव सचारा होई है केव कूड़ा टूट पाला हुक्म रज़ाई चलना ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਵਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਇਹ ਇਕਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਏ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾ ਖਉਮੈ ਕਹਿ ਨਾ ਕੋਇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ साहिब शरीक गुरु ग्रंथ साहिब सचे बादशाह महाराज जी दी पावन पवित्र खाजूरी अंदर हाजरी पर रहे गुरु सवारे सत संगी जनो ਸਤਿਗੁਰਾਂ ਦੇ ਅੰਮ੍ਰਿਤ ਵਚਨਾਂ पाठ ਪਾਠ जी ਸਾਹਿਬ ਦੀਆਂ ਦੋ ਪਉੜੀਆਂ ਆਰੰਭ ਵਾਲੀਆਂ ਆਪ ਜੀ ਨੇ ਪਾਠ ਰੂਪ ਸਰਵਣ ਕੀਤੀਆਂ ਨੇ ਆਉ ਬਖਸ਼ੂ ਅਸੀਸ ਇਸ ਅੰਮ੍ਰਿਤ ਵਚਨ ਦੇ ਅਖਰੀ ਸਮੇ ਅਨੁਸਾਰ ਸੰਖੇਪ ਵਿਚਾਰ ਔਰ ਭਾਵ ਅਰਥ ਆਪਾਂ ਸਮਝ ਅਦਬ ਸਹਿਤ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਖੇ ਗੁਰੂ ਜੀ ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਖੇ ਗੁਰੂ ਜੀ ਕੱਲ ਆਰੰਭ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜੋ ਬਖਸ਼ੀਸ਼ ਕਾ ਆਰੰਭਤਾ ਵਿੱਚ ਅਸੀਂ ਇੱਕ ਓੰਕਾਰ ਤੋਂ ਪ੍ਰਾਰੰਭਤਾ ਕੀਤੀ ਤੇ ਸੰਕੋਚ ਵਿੱਚ ਟਾਈਮ ਵਿੱਚ ਯਤਨ ਕੀਤਾ ਵੀ ਇਹਨਾਂ ਪਵਿੱਤਰ ਸ਼ਬਦਾਂ ਦੇ ਅਖਰੀ ਅਰਥ ਸੰਗਤ ਨਾਲ ਸਾਂਝੇ ਕਰ ਸਕਾਂ ਥੋੜਾ ਜਿਹਾ ਆਪਾਂ ਉਸ ਅੰਮ੍ਰਿਤ ਬਚਨ ਨੂੰ ਫਿਰ ਦੁਹਰਾ ਲਈਏ ਕੱਲ ਹਜ਼ੂਰ ਦੇ ਆਰੰਭ ਵਾਲੇ ਬਚਨ ਸਨ ਇੱਕ ਓਵੰ ਕਾਰ ਤਿੰਨ ਹਿੱਸਿਆਂ ਚ ਅਸੀਂ ਇਹਦਾ ਉਚਾਰਨ ਕਰਨਿਆ ਏਕੋ ਅੰਕਾਰ ਇੱਕ ਇਹਦਾ ਅਰਥ ਸਿਰਫ ਅਦੁੱਤੀ ਜਿਸ ਇੱਕ ਵਰਗਾ ਹੋਰ ਕੋਈ ਇੱਕ ਨਹੀਂ ਫਿਰ ਇਸ ਬਿੰਤੀ ਨੂੰ ਅਦੁੱਤੀ ਦਾ ਲਫਜੀ ਅਰਥ ਹੁੰਦਾ ਜਿਸ ਵਰਗਾ ਕੋਈ ਵੀ ਦੂਜਾ ਨਹੀਂ ਜਿਵੇਂ ਇਸ ਧਰਤੀ ਦਾ ਸੂਰਜ ਇੱਕ ਹੈ ਪਰ ਇਹ ਅਦੁੱਤੀ ਨਹੀਂ ਇਸ ਸੂਰਜ ਵਰਗੇ ਹੋਰ ਵੀ ਬਹੁਤ ਵੱਡੇ ਸੂਰਜ ਨੇ ਪਰ ਪ੍ਰਮਾਤਮਾ ਇਹ ਨਹੀਂ ਕਿ ਇਸ ਧਰਤੀ ਦਾ ਸਿਰਫ ਏਕ ਓੰਕਾਰ ਹੈ ਬਾਕੀ ਜਿਹੜੇ ਖੰਡ ਬ੍ਰਹਿਮੰਡ ਨੇ ਉਹਨਾਂ ਦਾ ਪ੍ਰਮਾਤਮਾ ਕੋਈ ਹੋਰ ਹੈ ਨਹੀਂ ਏਕ ਓੰਕਾਰ ਕਰੋੜਾਂ ਬ੍ਰਹਿਮੰਡਾਂ ਦਾ ਸਿਰਜਣਹਾਰਾ ਹੈ ਤੇ ਕਰੋੜਾਂ ਬ੍ਰਹਿਮੰਡਾਂ ਵਿੱਚ ਉਹ ਲਾ ਸ਼ਰੀਕ ਹੈ ਉੱਚ ਵਰਗਾ ਕੋਈ ਹੋਰ ਉਹਦਾ ਮੁਕਾਬਲਾ ਕਰਨ ਵਾਲਾ ਹੈ ਹੀ ਨਹੀਂ ਕਿ ਸਿਰਫ ਇੱਕ ਹੈ ਇੱਕ ਓੰਕਾਰ ਓੰਕ ਸ਼ਬਦ ਜਿਹੜਾ ਸੀ ਉਹ ਬ੍ਰਹਮਵਾਚਕ ਹੈ ਪਰਮਾਤਮਾ ਦਾ ਵਾਚਕ ਹੈ ਤੇ ਕਾਰ ਦੇ ਲਫਜ਼ੀ ਅਰਥ ਕੀਤੇ ਸਨ ਸੀ ਇੱਕ ਰਸ ਇੱਕ ਓੰਕਾਰ ਫਿਰ ਅੱਗੇ ਸਤਿਗੁਰੂ ਨੇ ਉਸ ਏਕ ਓੰਕਾਰ ਜਿਹਨੂੰ ਪਰਮਾਤਮਾ ਕਹਿੰਦੇ ਆ ਬ੍ਰਹਮ ਕਹਿੰਦੇ ਆ ਵਹਿਗੁਰੂ ਕਹਿੰਦੇ ਆ ਰੱਬ ਕਹਿੰਦੇ ਆ ਰਾਮ ਕਹਿੰਦੇ ਆ ਗੋਪਾਲ ਕਹਿੰਦੇ ਆ ਉਸ ਏਕ ਓੰਕਾਰ ਦੇ ਬੇਅੰਤ ਗੁਣਾ ਵਿੱਚੋਂ ਕੁਝ ਗੁਣ ਦਾਤਾਰ ਜੀ ਨੇ ਸਾਨੂੰ ਦੱਸੇ ਉਹਨੇ ਸੱਤ ਨਾਮ ਉਸ ਸਦੀਵਹੀ ਸੱਤ ਹੈ ਉਸ ਦੇ ਨਾਮ ਨੇ ਇੱਥੇ ਫਿਰ ਬੇਨਤੀ ਇਸ ਨਾਮ ਦੇ ਅਰਥ ਕਲਮੇ ਕਹਿਸਨ ਜਿਵੇਂ ਸਾਡੇ ਨਾਮ ਨੇ ਇਸ ਤਰ੍ਹਾਂ ਨਹੀਂ ਇਹਦੇ ਅਰਥ ਕਰਨੇ ਕਿ ਇਹ ਫਲਾਣੇ ਬੰਦੇ ਦਾ ਇਨਾਮ ਹੈ ਅਸਲ 'ਚ ਨਾਮ ਆਪਣੇ ਆਪ ਵਿੱਚ ਇਸ ਏਕ ਓੰਕਾਰ ਦੀ ਸ਼ਕਤੀ ਹੈ ਨਾਮ ਉਸਦੇ ਆਪੇ ਵਿੱਚੋਂ ਨਿਕਲਿਆ ਹੈ ਤੇ ਇਹ ਵੀ ਬੇਨਤੀ ਕਰਾਂ ਇੱਕ ਪਾਸੇ ਏਕ ਓੰਕਾਰ ਨਾਮ ਤੇ ਦੂਜੇ ਪਾਸੇ ਜਗਤ ਹੈ ਤੇ ਸੱਚ ਇਹ ਵੇ ਕਿ ਜਗਤਕ ਜੀਵਾਂ ਨੂੰ ਜੋੜਨ ਵਾਲਾ ਪ੍ਰਮਾਤਮਾ ਦਾ ਆਪਣੀ ਜਿਹੜੀ ਸ਼ਕਤੀ ਹੈ ਉਸ ਨੂੰ ਗੁਰਦੇਵ ਨੇ ਨਾਮ ਕਿਹਾ ਉਸ ਦਿਨ ਅਸੀਂ ਬਾਬਾ ਜੀ ਦੀ ਬਾਣੀ ਚੋਂ ਬਚਨ ਪੜਿਆ ਸੀ ਆਸਾ ਕੀ ਵਾਰ ਚ ਕਿ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਆਪੀ ਏਕ ਓੰਕਾਰ ਹੈ ਤੇ ਆਪ ਹੀ ਨਾਉ ਇਹ ਨਾਮ ਹੈ ਅੱਗੇ ਆਪ ਦੇਖੋਗੇ ਕਰਤਾ ਪੁਰਖ ਆ ਗਿਆ ਕਰਤਾ ਪੁਰਖ ਦਾ ਅਰਥ ਸਭ ਕੁਝ ਬਣਾਉਣ ਵਾਲਾ ਅਸਲ ਚ ਸਤ ਨਾਮ ਦਾ ਅਰਥ ਇਹ ਨਹੀਂ ਕਿ ਜਿਵੇਂ ਸਾਡੇ ਤਨ ਦੇ ਨਾਮ ਨੇ ਸੱਚ ਐਵੇਂ ਕਿ ਇਸ ਨਾਮ ਦਾ ਅਰਥ ਹੈ ਉਹਦੀ ਖੋਂਦ ਸਦੀਵ ਕਾਲਤਾ ਦੀ ਹੈ ਸਤ ਨਾਮ ਅੱਗੇ ਮਹਾਰਾਜ ਕਿਹਾ ਨੇ ਕਰਤਾ ਪੁਰਖ ਉਹ ਹਰ ਚੀਜ਼ ਦਾ ਬਣਾਉਣ ਵਾਲਾ ਕਰਤਾ ਹੈ ਤੇ ਪੁਰਖ ਦਾ ਅਰਥ ਹੈ ਜੋ ਕੁਝ ਬਣਾਇਆ ਹੈ ਉਸ ਵਿੱਚ ਉਹ ਆਪ ਸਮਾਇਆ ਹੋਇਆ ਹੈ ਲਿਟਿਆ ਹੈ ਕਰਤਾ ਪੁਰਖ ਅੱਗੇ ਸਿ ਬਚਨ ਨਿਰਭਉ ਉਸ ਕਿਸੇ ਦਾ ਕੋਈ ਡਰ ਨਹੀਂ ਉਸ ਨੇੜੇ ਭਏ ਨਾਂ ਦੀ ਕੋਈ ਚੀਜ਼ ਕੀ ਨਖੇ ਨਿਰਵੈਰ ਉਹ ਕਿਸੇ ਨਾਲ ਵੈਰ ਨਹੀਂ ਕਮਾਉਂਦਾ ਆਕਾਲ ਮੂਰਤ ਆਕਾਲ ਦਾ ਅਰਥ ਸਮੇਂ ਤੋਂ ਬਹੁਤ ਉੱਪਰ ਹੈ ਤੇ ਦਾ ਅਰਥ ਇਹ ਹੁੰਦ ਉਹ ਪਾਰ ਬ੍ਰਹਮ ਪਰਮੇਸ਼ਵਰ ਆਕਾਲ ਮੂਰਤ ਉਸ ਉੱਪਰ ਸਮਾਂ ਕੋਈ ਪ੍ਰਭਾਵ ਨਹੀਂ ਪਾਉਂਦਾ ਅਜੂਨਾ ਅਜੂਨੀ ਉਹ ਜੂਨਾ ਵਿੱਚ ਨਹੀਂ ਆਉਂਦਾ ਸੈ ਭੰਗ ਕੋਈ ਮਾਂ ਨਹੀਂ ਜਨਮ ਦੇਣ ਵਾਲੀ ਉਸਦਾ ਦਾ ਕੋਈ ਪਿਤਾ ਨਹੀਂ ਬਾਪ ਨਹੀਂ ਸਹਿ ਬੰਗ ਦਾ ਅਰਥ ਉਸ ਸੋਤੇ ਸਿੱਧ ਆਪਣੇ ਆਪ ਹੀ ਹੈ ਤੇ ਇਸ ਨੂੰ ਮਿਲਿਆ ਕਿਵੇਂ ਜਾਸਕਦਾ ਗੁਰ ਪ੍ਰਸਾਦ ਗੁਰੂ ਕਿਰਪਾ ਨਾਲ ਉਸ ਦਾ ਮਿਲਾਪ ਹੈ ਇਹ ਅਸੀਂ ਕੱਲ ਡਿਟੇਲ ਨਾਲ ਦੇਖਿਆ ਸੀ ਕਿਉਂਕਿ ਅੱਜ ਆਪਾਂ ਇਹ ਦੋ ਪੌੜੀਆਂ ਇਹਦੇ ਭਾਵ ਅਰਥ ਅਖਰੀ ਅਰਥ ਜ਼ਰੂਰ ਕਰਨੇ ਨੇ ਅੱਗੇ ਹੈ ਜਪ ਅਸਲ 'ਚ ਇੱਥੇ ਜਪ ਜਿਹੜਾ ਹੈ आप ਪੜੋਗੇ ਇਹਦੇ ਅੱਗੇ ਵੀ ਦੋ ਡੰਡੀਆਂ ਨੇ ਦੇ ਪਿੱਛੇ ਵੀ ਦੋ ਡੰਡੀਆਂ ਨੇ ਜਪ ਗੁਰੂ ਗ੍ਰੰਥ ਸਾਹਿਬ ਜੋ ਲਿਖਿਆ ਹੈ ਇੱਕ ਪਾਸੇ ਕਹਿੰਦੇ ਨੇ ਜਪ ਦੇ ਪੱਪੇ ਨੂੰ ਔਂਕੜ ਕਹਿ ਕੁਛ ਵਿਦਵਾਨਾਂ ਦਾ ਮਤ ਕਿ ਇਸ ਇਹ ਬਾਣੀ ਦਾ ਸਰਲੇਖ ਹੈ ਕੋਈ ਸ਼ੱਕ ਨਹੀਂ ਕੁਛ ਵਿਦਵਾਨ ਇਹ ਕਹਿੰਦੇ ਆ ਹੁਣ ਉਹਦੀ ਵਿਆਖਿਆ ਅੱਗੇ ਹੈ ਤੇ ਉਸ ਪਰਿਪੂਰਣ ਪਰਮਾਤਮਾ ਨੂੰ ਜਪੋ ਇਹਦਾ ਮਤਲਬ ਜਪ ਬਾਣੀ ਦਾ ਸਰਲੇਖ ਹੈ ਉਸ ਨੂੰ ਜਪਨਾ ਕਰੋ ਜਪ ਦੇ ਅਰਥ ਕੀ ਨੇ ਜੇ ਤੁਸੀਂ ਕੋਸ਼ ਨੂੰ ਦੇਖੋਗੇ ਤੇ ਜਪ ਦੇ ਲਬਜ਼ੀ ਅਰਥ ਨੇ ਸ਼ਬਦ ਨੂੰ ਵਾਰ-ਵਾਰ ਜ਼ਬਾਨ ਤੋਂ ਰਟਣਾ ਵਾਰ-ਵਾਰ ਕਿਸੇ ਸ਼ਬਦ ਨੂੰ ਬੋਲਣਾ ਉਹਨੂੰ ਕਿਹਾ ਜਾਂਦਾ ਵੀ ਇਹ ਜਪ ਹੈ ਥੋੜੀ ਜਿਹੀ ਮੈਂ ਬੇਨਤੀ ਕਰਕੇ ਅੱਗੇ ਤੁਰਾਂਗਾ ਕਿਉਂਕਿ ਜਪ ਦੀ ਬੜੀ ਵੱਡੀ ਮਹਾਨਤਾ ਹੈ ਤੇ ਅਸਲ ਵਿੱਚ ਜਪਜੀ ਸਾਹਿਬ ਵੀ ਆਪਣੇ ਆਪ ਵਿੱਚ ਇੱਕ ਜਪ ਹੀ ਹੈ ਤਾਂ ਹੀ ਅਸੀਂ ਇਹਦੇ ਲਈ ਸ਼ਬਦ ਜਪਜੀ ਸਾਹਿਬ ਵਰਤਨੇ ਖਾਂ ਕਿ ਇਸ ਨੂੰ ਜਪੋ ਕੁਝ ਵਿਦਵਾਨ ਕਹਿੰਦੇ ਆ ਕਿ ਜਪ ਉੱਪਰਲੇ ਬਚਨ ਨਾਲ ਵੀ ਤੇ ਆਦ ਸੱਚ ਨਾਲ ਵੀ ਜੁੜ ਕੇ ਵਿਆਖਿਆ ਕਰਦਾ ਵਿਚਾਰ ਰੱਖ ਕੇ ਕਿ ਉੱਤੇ ਹੇਠਾ ਇਸ ਪ੍ਰਮਾਤਮਾ ਦੇ ਬਖਸ਼ਿਸ਼ ਭਰੇ ਨਾਮ ਨੂੰ ਜਪੋ ਬੰਤੀ ਕਰਾ ਜਪਦਾ ਅਰਥ ਰਿਪੀਟ ਕਰਨਾ ਬੋਲਣਾ ਇੱਕ ਵਾਰ ਮੈਂ ਅਰਜ਼ ਕੀਤੀ ਸੀ देखो ਗੁਰਬਾਣੀ ਦਾ ਜਦੋਂ ਆਪਾਂ पाठ करने ਤੇ एक ਪਾਸੇ ਇੱਕ ਸ਼ਬਦ ਵਿੱਚ ਮਹਾਰਾਜ ਉਹਦੀ ਵਾਰ-ਵਾਰ ਪ੍ਰੋੜਤਾ ਕਰਦੇ ਆ ਤੇ ਦੂਸਰੇ ਪਾਸੇ ਬਾਣੀ ਚੋ ਸ਼ਬਦ ਪੜੋ ਤੇ ਉਸੇ ਗੱਲ ਦਾ ਖੰਡਨ ਹੋ ਰਿਹਾ ਕਈ ਵਾਰੀ ਬੰਦਾ ਜਿਹੜਾ ਉਹ ਖੰਡਨ ਵਾਲੇ ਸ਼ਬਦ ਨੂੰ ਲੈ ਕੇ ਉਸ ਮੈਂ ਇੱਕ ਪਾਠ ਕਰਨਾ ਇਹ ਤੇ ਹੈ ਜਪ ਮੈਂ ਅਰਜ਼ ਕਰਾਂਗੇ ਜ਼ਿਆਦਾਤਰ ਵਿਦਵਾਨ ਇਹ ਕਹਿੰਦੇ ਆ ਵੀ ਇਹਦਾ ਸਬੰਧ ਜਪਣ ਨਾਲ ਵੀ ਹੈ ਕਿਸ ਨੂੰ ਜਪੋ ਇਸ ਨੂੰ ਬੋਲੋ ਬੋਲਣਾ ਜਪਣਾ ਰਿਪੀਟ ਕਰਨਾ ਹੁਣ ਜਿਵੇਂ ਮੈਂ ਅਰਜ਼ ਕਰਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਚ ਇੱਕ ਸ਼ਬਦ ਹੁੰਦਾ ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ ਜਾਂ ਕਹਿ ਰਿਦੈ ਭਾਉ ਖੈ ਦੂਜਾ ਖੰਡਨ ਕਰਤਾ ਨਾ ਜਪ ਨੂੰ ਤਪ ਨੂੰ ਸੰਜਮ ਨੂੰ ਪਰ ਇਸੇ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਕਹਿੰਦੇ ਨੇ ਜਪ ਤਪ ਕਾ ਬੰਦ ਬੇੜ ਲਾ ਜੇ ਜਪ ਤਪ ਕਰੇਗਾ ਤੇ ਬੇੜਾ ਤਿਆਰ ਖੋਣਾ ਇਸੇ ਬਾਹਰ ਦੇ ਸਰੂਪ ਚ ਹਜ਼ੂਰ ਕਹਿੰਦੇ ਨੇ ਜਪ ਤਪ ਸੰਜਮ ਧਰਮ ਨਾਲ ਕਮਾਇਆ ਇਹ ਕਮਾਣਾ ਚਾਹੀਦਾ ਸੀ ਬਸ ਇਸ ਨੁਕਤੇ ਨੂੰ ਪੂਲੀ ਧਿਆਨ ਨਾਲ ਸੁਣਿਓ ਜਪ ਦਾ ਖੰਡਨ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਵਾਰੀ ਹੈ ਪਰ ਉਸ ਜਪਦਾ ਜਿਹਦੇ ਖਿਰਦੇ ਵਿੱਚ ਭਉ ਦੂਜਾ ਹੈ ਚਲਾਕੀ ਵਰਤ ਕੇ ਜਪ ਦਾ ਪ੍ਰਭਾਵ ਪਾ ਕੇ ਲੋਕਾਂ ਨੂੰ ਠੱਗਣਾ ਚਾਹੁੰਦਾ ਹੈ ਗੁਰੂ ਕਹਿੰਦਾ ਇਸ ਤਰ੍ਹਾਂ ਰੱਬ ਨਹੀਂ ਤੈਨੂੰ ਮਿਲ ਸਕਦਾ ਪਰ ਇਹਦਾ ਮਤਲਬ ਇਹ ਨਹੀਂ ਕਿ ਜਪ ਕਰਨੇ ਨਹੀਂ ਦੇਖੋ ਜਦੋਂ ਸਾਡਾ ਜਨਮ ਹੋਇਆ ਮੈਂ ਥੋੜੇ ਜਿਹੇ ਦੇ ਅਰਥ ਕਿਉਂਕਿ ਕੱਲ ਬੜੀ ਕਾਲੀ ਨਾਲੇ ਦੇ ਕੀਤੇ ਸਨ ਜਦੋਂ ਸਾਡਾ ਸਭ ਦਾ ਜਨਮ ਹੋਇਆ ਮਨੁੱਖ ਜਾਤੀ ਦੀ ਮੈਂ ਗੱਲ ਕਰਾਂਗਾ ਤੇ ਸਾਨੂੰ ਸਭ ਤੋਂ ਪਹਿਲਾਂ ਜੋ ਕੁਛ ਮਾਂ ਦੀ ਕੱਖ ਤੋਂ ਨਿਕਲ ਕੇ ਬਾਅਦ ਜਨਮ ਤੋਂ ਬਾਅਦ ਮਿਲਿਆ ਸਾਡੇ ਅੱਖਾਂ ਸਨ ਪਰ ਮਾਂ ਦੇ ਚਿਹਰੇ ਦੀ ਪਹਿਚਾਨ ਨਹੀਂ ਸਾਡੇ ਕੋਲ ਹੱਥ ਸਨ ਪਰ ਹੱਥਾਂ ਕੋਲ ਤਾਕਤ ਨਹੀਂ ਤੰਦਰੁਸਤ ਨੇ ਹੱਥ ਪਰ ਪਕੜ ਸ਼ਕਤੀ ਨਹੀਂ ਪੈਰਾਂ 'ਚ ਚੱਲਣ ਦੀ ਸਮਰੱਥਾ ਨਹੀਂ ਅਜੇ ਸਭ ਤੋਂ ਪਹਿਲਾਂ ਇਨਸਾਨ ਨੂੰ ਬਿਨਾ ਸਿਖਾਇਆ ਬਿਨਾ ਕਿਸੇ ਦੇ ਤਾਲੀਮ ਦਿੱਤਿਆਂ ਸਭ ਤੋਂ ਪਹਿਲਾਂ ਇਨਸਾਨ ਨੂੰ ਜਿਹੜੀ ਸਮਝ ਪਈ ਉਹ ਆਪਣੇ ਜੀਬ ਨਾਲ ਆਪਣੇ ਮੂੰਹ ਨਾਲ ਆਪਣੇ ਲਬਾਂ ਦੇ ਨਾਲ ਮਾਂ ਦਾ ਦੁੱਧ ਚੁੰਗਣ ਦੀ ਸਮਝ ਪਈ ਕਿਸੇ ਨੇ ਨਹੀਂ ਸਮਝਾਇਆ ਜੀ ਇਸ ਗੱਲ ਤੇ ਗੁਰੂ ਸਾਹਿਬ ਨੇ ਬਾਣੀ ਚ ਬਕਾਇਦਾ ਲਿਖਿਆ ਜਦੋਂ ਸਾਡੀ ਉਮਰ ਦੇ 10 ਪੜਾਂ ਬਾਬਾ ਜੀ ਨੇ ਕਹੇ ਨਾ ਤੇ ਪਹਿਲੇ ਪੜਾਂ ਵਿੱਚ ਅਜ਼ੂਰ ਨੇ ਲਿਖਿਆ ਪਹਿਲੇ ਪਿਆਰ ਲੱਗਾ ਥਨ ਦੁੱਧ ਪਹਿਲਾ ਸ਼ਬਦ ਦਾਤਾਰ ਨੇ ਇਹ ਸ਼ਬਦ ਵਰਤਿਆ ਪਹਿਲਾ ਪਹਿਲੇ ਪਿਆਰ ਲੱਗਾ ਥਨ ਦੁੱਧ ਸੁਣੋ ਇਸ ਬਿੰਦਤੀ ਸਾਡੀ ਸ਼ੁਰੂਆਤ ਮੂੰਹ ਤੋਂ ਹੋਈ ਹਾਲਾਂਕਿ ਜੋ ਅਸੀਂ ਕਰ ਰਹੇ ਹਾਂ ਸਾਮੂਹ ਨਾਲ ਸਾਨੂੰ ਉਹਦੀ ਸੋਝੀ ਕੋਈ ਨਹੀਂ ਇੱਕ ਬੱਚਾ ਮਾਂ ਦਾ ਦੁੱਧ ਚੁੰਗਦਾ ਹੈ ਪਰ ਉਹਨੂੰ ਪਤਾ ਹੈ ਵੀ ਇਹਨੂੰ ਦੁੱਧ ਕਹਿੰਦੇ ਆ ਉਹਨੂੰ ਇਹ ਪਤਾ ਹੈ ਵੀ ਇਸ ਦੁੱਧ ਨੇ ਮੇਰੇ ਅੰਦਰ ਤਾਕਤ ਕੀ ਦੇਣੀ ਕੋਈ ਦੁੱਧ ਦੀ ਸਮਝ ਨਹੀਂ ਜੋ ਕੋਈ ਚੁੰਗ ਰਿਹਾ ਉਸ ਮਾਂ ਦੀ ਸਮਝ ਨਹੀਂ ਸੱਚ ਇਹ ਵੇ ਉਸ ਅਚੇਤ ਅਵਸਥਾ ਵਿੱਚ ਵੀ ਜਦੋਂ ਬਿਲਕੁਲ ਇੰਨੀ ਸਮਝ ਨਹੀਂ ਬਾਹਰ ਮੁਖੀ ਇਨਸਾਨ ਦੁੱਧ ਪੀਂਦਾ ਹੈ ਤੇ ਉਸ ਦੁੱਧ ਦੀ ਕਿਰਿਆ ਉਹਦਾ ਕਰਮ ਆਪਣੀ ਜ਼ਬਾਨ ਤੇ ਮੂੰਹ ਨਾਲ ਕਰਦਾ ਜਦੋਂ ਉਹ ਦੁੱਧ ਗਲੇ ਤੋਂ ਥੱਲੇ ਉਤਰਦਾ ਤੇ ਇਹਦੇ ਸਰੀਰ ਦਾ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ ਹੈ ਗੁਰਮਖੋ ਸਰੀਰਕ ਤੌਰ ਤੇ ਜੇ ਕੋਈ ਵਿਕਾਸ ਕਰਦਾ ਤੇ ਉਹਦੀ ਸ਼ੁਰੂਆਤ ਜ਼ਬਾਨ ਤੋਂ ਮੂੰਹ ਤੋਂ ਫਿਰ ਲੈ ਕੇ ਹੈ ਜਿਹਨੇ ਸੱਚਖੰਡ ਦੀ ਪੌੜੀ ਤੱਕ ਪਹੁੰਚਣਾ ਹੈ ਉਹਦੀ ਸ਼ੁਰੂਆਤ ਵਹਿਗੁਰੂ ਜੀ ਦੇ ਜਪ ਤੋਂ ਉਹ ਵੀ ਮੂੰਹ ਤੇ ਜ਼ਬਾਨ ਨਾਲ ਕਰਨ ਤੋਂ ਹੈ ਕਿਉਂ ਉਹਦੀ ਸ਼ੁਰੂਆਤ ਜਪ ਹੈ ਮੈਂ ਕੁਝ ਥੋੜ ਬੇਨਤੀਆਂ ਆਪ ਨੂੰ ਕਰਨੀਆਂ ਨੇ ਜੇ ਕਿ ਬੜੇ ਆਪ ਚ ਬੈਠਿਆ ਸਿਮਰਨ ਕਰਨ ਵਾਲੇ ਚਲੋ ਅਸੀਂ ਤਾਂ ਪ੍ਰਚਾਰਕ ਹੋਣ ਦੇ ਨਾਤੇ ਬੋਲਦੇ ਨੇ ਹੁਣ ਦੇਖੋ ਉਹ ਜਪ ਹੈ ਅਗਲੀ ਗੱਲ ਬੜੇ ਸਵਾਲ ਨੇ ਦੇਖੋ ਜੀ ਜ਼ਬਾਨ ਨਾਲ ਜਪਿਆ ਕੀ ਹੋ ਜਾਏਗਾ ਅਸੀਂ ਕਿਸੇ ਬੰਦੇ ਦਾ ਕੋਈ ਉੱਤਰ ਨਹੀਂ ਦੇ ਰਹੇ ਕੀ ਕੋਈ ਕਰ ਰਿਹਾ ਆਮ ਬੰਦੇ ਜਿਗਿਆਸੂ ਦੇ ਅੰਦਰ ਹੈ ਕਿ ਵਾਰ-ਵਾਰ ਜ਼ਬਾਨ ਨਾਲ ਜਪਿਆ ਕੀ ਹੋ ਜਾਏਗਾ ਜ਼ਬਾਨ ਨਾਲ ਵੈਗਰੂ ਕਿਹਾ ਤੇ ਮੈਂ ਇੱਕੋ ਬੇਨਤੀ ਕਰਾਂਗਾ दो ਉਦਾਹਰਨਾਂ ਨੇ ਸਿਰ ਸਮਝਣ ਲਈ ਕਿ ਅਸੀਂ ਇੱਕ ਰੁੱਖ ਦੀ ਜੜਜ ਪਾਣੀ ਦਿੰਨੇ ਆ ਮੰਨ ਲਓ ਅੰਬ ਦਾ ਰੁੱਖ ਕੋਈ ਫਲ ਦਾ ਰੁੱਖ ਹੈ ਉਹਦੀ ਜੜਜ ਪਾਣੀ ਦਿੱਤਾ ਜਾਂਦਾ ਹੈ ਪਰ ਦੀ ਕਿਸੇ ਨੇ ਪੱਤੇ ਖੋਲ ਕੇ ਟਾਣੀਆਂ ਖੋਲ ਕੇ ਇੰਜੈਕਸ਼ਨ ਲੈ ਪਾਣੀ ਦਾ ਜੜਜ ਗੁਰਮਖੋ ਜੀਵ ਸਾਡੀ ਜੜ੍ਹ ਹੈ ਇਹਦੇ ਤੇ ਗੁਰੂ ਨਾਨਕ ਦਾ ਰੱਖਿਆ ਜਪ ਸਰੀਰ ਦੇ ਰੋਮ ਰੋਮ ਵਿੱਚ ਰਚ ਜਾਂਦਾ ਹੈ ਇਹ ਆਪਣਾ ਕੰਮ ਕਰਦਾ ਹੈ ਦੂਸਰੀ ਗੱਲ ਜੇ ਅਧਿਆਤਮਕਤਾ ਨੂੰ ਅਸੀਂ ਸੂਖਸ਼ਮਤਾ ਨਾਲ ਸਮਝੀਏ ਅਸੀਂ ਜੋ ਕੁਝ ਖਾਂਦੇ ਆ ਚਲੋ ਪ੍ਰਸ਼ਾਦ ਲਿਆ ਦੇਗ ਲਈ ਲੰਗਰ ਛੱਕਿਆ ਜੋ ਜੀਵ ਨਾਲ ਚੱਖਨੇ ਕਿੰਨਾ ਕੁ ਟਾਈਮ ਲੱਗਦਾ ਜੀ 10 ਮਿੰਟ ਵਿੱਚ ਅਸੀਂ ਭੋਜਨ ਦਾ ਸਵਾਦ ਲੈਨੇ ਆ ਕੱਤਾ ਮਿੱਠਾ ਕੁਸੈਲਾ ਜੋ ਕੁਝ ਵੀ ਇਨਸਾਨ ਖਾਰੇ ਪਰ ਪਿਆਰਿਓ 10 ਮਿੰਟ ਦਾ ਖਾਦਾ ਹੋਇਆ ਭੋਜਨ ਮੂੰਹ ਨੂੰ ਪਤਾ ਹੈ ਮੈਂ ਕਰਮ ਕੀਤਾ ਹੈ 10 ਮਿੰਟ ਦੰਦ ਪੀਸਦੇ ਰਹੇ ਉਹਨੂੰ ਜੀਭ 10 ਮਿੰਟ ਉਸ ਲਾਰ ਦਾ ਸਵਾਦ ਚੁੱਕਦੀ ਰਹੀ ਪਰ 10 ਮਿੰਟ ਤੋਂ ਬਾਅਦ ਉਹ ਕਿਰਿਆ ਖਤਮ ਹੋ ਗਈ ਕਿ 10 ਮਿੰਟ ਚੱਖਣ ਤੋਂ ਬਾਅਦ ਉਹ ਕੰਮ ਖਾਣ ਨਹੀਂ ਸਿਰ ਬੰਦਿਆ ਤੂੰ 10 ਮਿੰਟ ਮੇਜ਼ ਤੇ ਪੰਗਤ ਚ ਬੈਠ ਕੇ ਭੋਜਨ ਛਕਿਆ ਤੈਨੂੰ सिर्फ जीब ਦਾ रब ने सवाद दिता है ਤੂੰ ਅੱਖ ਨਾ ਜਾਏ ਕਿ ਤੈਨੂੰ ਦਵਾਈ ਸਮਝ ਕੇ ਅੱਖ ਨਾ ਜਾਏ ਤੇਰੀ ਜੀਬ ਨੂੰ ਸਵਾਦ ਦਾ ਇੱਕ ਗੁਣ ਦਿੱਤਾ ਤੂੰ ਜੀਬ ਨਾਲ 5 10 ਮਿੰਟ ਖਾਦਾ ਉਸ ਤੋਂ ਬਾਅਦ ਗਲੇ ਥਲੇ ਉਤਰਿਆ ਅਚੇਤ ਤੈਨੂੰ ਪਤਾ ਵੀ ਨਹੀਂ ਕੋਈ ਕਾਗਰ ਨਹੀਂ ਤੂੰ ਕੈਲਸ਼ੀਅਮ ਕਦੋਂ ਬੰਦਾ ਪਿਆ ਐਰਨ ਕਦੋਂ ਨਿਕਲਦਾ ਪਿਆਖ ਗਲੇ ਤੋਂ ਥੱਲੇ ਉਤਰਿਆ ਭੋਜਨ ਸਰੀਰ ਦੀ ਬਰੀਕ ਤੋਂ ਬਰੀਕ ਨਾੜ ਨੂੰ ਵੀ એનર્ਜੀ ਦੇ ਰਿਹਾ ਹੈ ਗੁਰਮਖੋ ਇੱਕ ਜਪਜੀ ਸਾਹਿਬ ਦਾ ਟੇਕ ਕੇ ਕੀਤਾ ਹੋਇਆ ਪਾਠ ਮਿੰਟ ਭਾਵੇਂ 10 15 ਲੱਗਣ ਪਰ 15 ਮਿੰਟ ਦਾ ਜਪਿਆ ਵੀ ਰੱਬ ਦੀ ਦਰਗਾਹ ਵੀ ਸਵੀਕਾਰ ਹੁੰਦਾ ਹੈ ਇੱਕ ਅਗਲਾ ਸਵਾਲ ਇਹ ਇਹ ਕਿਸੇ ਦੇ ਮੈਂ ਉੱਤਰ ਨਹੀਂ ਦੇ ਰਿਹਾ ਮੈਂ ਆਪਣੇ ਮਨ ਚੁੱਠੇ ਸਵਾਲ ਕਹਿ ਰਿਹਾ जी देखो ए बार-बार जुबान क्या की होजूगा मान लो एक बंदा निम-निम कही जाए ते, वार वार नेम नेम कही जाए, ते खांड खांड ओदे नाल मुंह थोड़ा ਥੋੜਾ ਹੋ ਜਾਣਾ ਦਲੀਲ ਵੀ ਉਹਨਾਂ ਦੀ ਠੀਕ ਹੈ ਜੇ ਮੰਨ ਲਓ ਵਾਰ-ਵਾਰ ਨਿਮ-ਨਿਮ ਕਹੀ ਜਾਈਏ ਨਿਮ ਸ਼ਬਦ ਤਾਂ ਪਰ ਸਮਝਣੇ ਅਤਰੇ ਕਹਿ ਲੋ ਕਿ ਉਹਦੇ ਨਾਲ ਕੜਤਨ ਆ ਜਾਏਗੀ ਤੇ ਅਗਲਾ ਦਲੀਲ ਦੇ ਕੇ ਕਹ ਗਿਆ ਬਿਲਕੁਲ ਠੀਕ ਹਾਲਾਂਕਿ ਭਾਈ ਸਾਹਿਬ ਨੇ ਸ਼ਬਦ ਵਰਤੇ ਆ ਖਾਂਡ-ਖਾਂਡ ਕਹੇ ਜੇਵਾ ਨਾਲ ਸਭ ਮਨ ਲਓ ਅਸੀਂ ਕਹੀ ਜਾਂਦੇ ਆ ਜੀਵ ਦੇ ਨਾਲ ਨਿਮ ਨਿਮ ਸਾਡਾ ਕੁਲਤਨ ਆਏਗੀ ਖੰਡ ਖੰਡ ਕਾਹਗੇ ਮਠਾਸ ਆਏਗੀ ਮੈਂ ਇੱਥੇ ਇੱਕ ਬੇਨਤੀ ਕਰਨੀ ਇਸ ਫਰਕ ਹੈ ਨਿਮ ਜਿਹੜਾ ਉਹ ਸਰੀਰ ਤੋਂ ਬਾਹਰ ਦਾ ਪਦਾਰਥ ਹੈ ਨਿਮ ਬਾਹਰ ਹੈ ਉਹਦਾ ਬਾਡੀ ਦੇ ਅੰਦਰ ਧੁਰ ਨਾਲ ਕੋਈ ਸਬੰਧ ਨਹੀਂ ਖੰਡ ਬਾਹਰ ਦਾ ਇੱਕ ਪਦਾਰਥ ਹੈ ਉਹਦਾ ਧੁਰ ਸਰੀਰ ਦੇ ਅੰਦਰ ਕੀ ਸਬੰਧ ਨਿੰਮ ਦਾ ਸਵਾਦ ਨਹੀਂ ਆ ਸਕਦਾ ਖੰਡ ਦਾ ਸਵਾਦ ਨਹੀਂ ਆ ਸਕਦਾ ਜਦੋਂ ਵਾਰ-ਵਾਰ ਪਰਮਾਤਮਾ ਨੂੰ ਵੈਗਰੂ ਨੂੰ ਜਪਾਂਗੇ ਉਹ ਬਾਹਰ ਨਹੀਂ ਉਹ ਸਾਡੇ ਤੁਰ ਅੰਦਰ ਹੈ ਸੱਚੀ ਇਹੋ ਦਾ ਤੁਰ ਅੰਦਰ ਤੋਂ ਸਵਾਦ ਆਉਣ ਲੱਗ ਪੈਂਦਾ ਹੈ ਫਿਰ ਇਸ ਬਿੰਦ ਤਨ ਸੁਣੋ ਨਿੰਮ ਬਾਹਰ ਹੈ ਕਦੀ ਵੀ ਨਹੀਂ ਆ ਸਕਦਾ ਕੁੜਤਨ ਰਹੇਗੀ ਸਵਾਦ ਹੀ ਨਹੀਂ ਪੈਦਾ ਹੁੰਦਾ ਪਰਮਾਤਮਾ ਤੱਤ ਸਾਡੇ ਤੁਰ ਅੰਤਰਸ ਹੈ ਸਾਡੇ ਅੰਦਰ ਹੈ ਜਿਹੜਾ ਅੰਦਰ ਪਿਆ ਹੈ ਮਹਾਰਾਜ ਕਹਿੰਦੇ ਨੇ ਜਦੋਂ ਵਾਰ-ਵਾਰ ਪੁਕਾਰੇਗਾ ਸੱਚ ਇਹ ਵੀ ਤੇਰੀ ਗੱਲ ਠੀਕ ਹੈ ਵੀ ਨਿੰਮ ਕਿਆਂ ਕੁੜਾ ਤਨ ਨੂੰ ਲੂਣ ਕਿਆ ਨਮਕੀਨ ਦਾ ਸਵਾਦ ਨਹੀਂ ਆਉਣਾ ਨਹੀਂ ਆਉਣਾ ਕਿਉਂਕਿ ਉਹ ਬਾਹਰ ਦੇ ਪਦਾਰਤ ਨੇ ਪਰ ਜਿੰਨੂੰ ਤੂੰ ਜ਼ਬਾਨ ਨਾਲ ਪੁਕਾਰਨਾ ਪਿਆ ਉਹ ਤੁਰ ਤੇਰੇ ਅੰਦਰ ਵਸਿਆ ਪਰ ਉੱਤੇ ਵਾਸ਼ਨਾ ਦੀ ਚਾਦਰ ਹੈ ਪਰਤ ਹੈ ਜਦੋਂ ਜਪੇਗਾ ਪਰਤ ਉੱਡ ਗਈ ਤੇ ਅੰਦਰ ਉਹ ਨੇ ਪ੍ਰਗਟ ਹੋ ਜਾਣਾ ਹੈ ਇਸ ਕਰਕੇ ਮੈਂ ਬੇਨਤੀ ਕਰਾਂ ਜਪ ਅੰਦਰ ਤੋਂ ਦੂਜੀ ਗੱਲ ਜਿੰਨੇ ਜਪ ਕਰਨ ਦਾ ਜਿਹਨੂੰ ਸ਼ੌਂਕ ਹੈ ਇਹ ਨਹੀਂ ਕਹਿਣਾ ਵਿਲੜਾ ਦਾ ਕੰਮ ਹੈ ਸੱਚੇ ਵੇ ਕਿ ਅੱਜ ਬਣਾ ਦਿੱਤਾ ਜੇ ਤੇ ਵਿਲਿਆਂ ਦਾ ਕੰਮ ਹੈ ਨਿਤਨਮ ਕਰਨਾ ਇਹ ਵਿਲੜਾਂ ਦਾ ਕੰਮ ਐਵੇਂ ਪਾਠ ਕਰੀ ਜਾਣਾ ਮੈਂ ਕਿ ਬੇਨਤੀ ਕਰਾਂ ਤੁਹਾਡੇ ਚ ਬਹੁਤ ਸਿੰਘ ਐਸੇ ਬੈਠੇ ਹੋਣਗੇ ਜਿਹੜੇ ਸੁਖਮਨੀ ਸਾਹਿਬ ਕਰਦੇ ਨਿਤਨਮ ਕਰਦੇ ਸਾਰਾ ਦਿਨ ਕੀਰਤ ਵੀ ਕਰਦੇ ਹੋ ਵਿਲੇ ਨੇ ਇਹ ਸ਼ਬਦ ਕਹਿ ਕੇ ਕੁਦਮ ਲੋਕਾਂ ਦਾ ਧਿਆਨ ਖੰਡਿਤ ਕਰ ਦੇਣਾ ਵਿਲੜਾਂ ਦਾ ਕੰਮ ਹੈ ਨਹੀਂ ਪਿਆਰਿਓ ਬਦ ਕਿਸਮਤ ਲੋਕ ਨੇ ਜਿਨ੍ਹਾਂ ਨੂੰ ਇਸ ਚੀਜ਼ ਦੀ ਸਮਝ ਨਹੀਂ ਪੈਂਦੀ ਹੈ ਹੈ ਤਾਂ ਪਰਮੇਸ਼ਵਰ ਦੀ ਖੇਡ ਜਿਸ ਨੇ ਜਪ ਕਰਨਾ ਕੁਝ ਕੁ ਅਸੂਲ ਨੇ ਇਸ ਬੌਡੀ ਦੇ ਪਹਿਲੀ ਗੱਲ ਕਿ ਜਪ ਕਰਨ ਵਾਲਾ ਮੈਂ ਸਿਰਫ ਥੋੜਾ ਜਿਹਾ ਜਪ ਤੇ ਬੋਲ ਰਿਹਾ ਕਿ ਜਪ ਕਰਨ ਵਾਲਾ ਜੇ ਤਾਂ ਚਲੋ ਇੱਕ ਜਗ੍ਹਾ ਤੇ ਰਹਿੰਦਾ ਘਰ ਉਹਨੇ ਘਰ ਨਹੀਂ ਬਦਲਣਾ ਗ੍ਰਸਤੀ ਉਹ ਰੋਜ਼ ਰੋਜ਼ ਥਾਂ ਨਾ ਬਦਲੇ ਇੱਕ ਥਾਂ ਤੇ ਬੈਠ ਕੇ ਜਪ ਕਰੇ ਤੇ ਥਾਂ ਦਾ ਸਬੰਧ ਇਹ ਨਹੀਂ ਕਿ ਬਹੁਤ ਵੱਡਾ ਬੰਗਲੋ ਹੋਵੇ ਤੇ ਤਾਂ ਜਪ ਚੱਲਣਾ ਥਾਂ ਜ਼ਮੀਨ ਤੇ ਕੱਚੀ ਮਿੱਟੀ ਤੇ ਵੀ ਬੈਠੇ ਤਾਂ ਵੀ ਚੱਲੇਗਾ ਮੈਂ ਬੇਨਤੀ ਕਰਾਂ ਇੱਕ ਥਾਂ ਦੂਜਾ ਜਿਸ ਨੇ ਜਪ ਕਰਨਾ ਉਹਨੂੰ ਆਪਣੀ ਬਾਡੀ ਦੇ ਤਕਰੀਬਨ 10 ਗੱਲਾਂ 'ਵਲ 10 ਗੱਲਾਂ ਨੇ ਮੇਰਾ ਖਿਆਲ ਉਹਨਾਂ 'ਵਲ ਧਿਆਨ ਦੇਣਾ ਅਤ ਲਾਜ਼ਮੀ ਹੈ ਉਸ ਵਿੱਚ ਆ ਦਾ ਵੀ ਹੈ ਮੈਂ ਗੁਰਮੁਖ ਪਿਆਰਿਆਂ ਦੇ ਬਚਨ ਪੜਿਓ ਜਪ ਦੇ ਬਾਰੇ ਕਹਿ ਰਹੇ ਸਨ ਕਹਿੰਦੇ ਸਭ ਤੋਂ ਪਹਿਲਾਂ ਜਿਸ ਨੇ ਜਪ ਵੱਲ ਜੁੜਨਾ ਹੈ ਉਹਨੂੰ ਜ਼ਬਾਨ ਦਾ ਫਿੱਕਾਪਨ ਜ਼ਰੂਰ ਛੱਡਣਾ ਪਏਗਾ ਕਠੋਰ ਜ਼ਬਾਨ ਫਿੱਕਾ ਬੋਲਣ ਵਾਲੇ ਦਾ ਰਸ ਨਹੀਂ ਬਣੇਗਾ ਦੂਸਰਾ ਜਿੰਨੇ ਜਪ ਕਰਨੇ ਉਹਨੂੰ ਤਿੰਨ ਗੱਲਾਂ ਜ਼ਬਾਨ ਤੇ ਹੋਰ ਕਾਬੂ ਪਾਣੀਆਂ ਪੈਣਗੀਆਂ ਇੱਕ ਫਿੱਕਾ ਬੋਲਣਾ ਦੂਸਰਾ ਝੂਠ ਬੋਲਣਾ ਤੀਸਰੀ ਨਿੰਦਿਆ ਕਰਨੀ ਚੌਥੀ ਚੁਗਲੀ ਕਰਨੀ ਜਿਹੜਾ ਬੰਦਾ ਚਾਰ ਇਹ ਵੀ ਕਰੀ ਜਾਂਦਾ ਤੇ ਨਾਲ ਕਹਿੰਦਾ ਮੈਂ ਜਪ ਕਰੀ ਜਾਂ ਨਾ ਖਿਮਾ ਕਰਿਓ ਛੇਤੀ ਜਪ ਫਲੀ ਪੂਤ ਨਹੀਂ ਹੁੰਦਾ ਇਹ ਇਹ ਚਾਰ ਗੱਲਾਂ ਜ਼ਬਾਨ ਦੀਆਂ ਲਈ ਮੈਂ ਰਸਦਗ ਜ਼ਿਕਰ ਨਹੀਂ ਕੀਤਾ ਜ਼ਬਾਨ ਦੀ ਕਠੋਰਤਾ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ ਦੂਸਰਾ ਜ਼ਬਾਨ ਨਾਲ ਨਿੰਦਿਆ ਕਰਨੀ ਤੀਸਰੀ ਮੈਂ ਬੇਨਤੀ ਕੀਤੀ ਚੁਗਲੀ ਕਰਨੀ ਚੌਥਾ ਸ਼ਬਦ ਮੈਂ ਵਰਤਿਆ ਝੂਠ ਬੋਲਣਾ ਉਸ ਤੋਂ ਬਾਅਦ ਇੱਕ ਵਾਰ ਮਰਜ਼ ਕੀਤੀ ਸੀ ਤਿੰਨ ਇਸ ਬਾਡੀ ਦੇ ਨੇ ਪੂਰੇ ਮੁਕੰਮਲ ਸ਼ਰੀਰ ਦੇ ਇੱਕ ਅਹਿੰਸਕ ਬਿਰਤੀ ਆਪਣੇ ਤੋਂ ਮਾੜੇ ਨੂੰ ਦੇਖ ਕੇ ਫਿਜ਼ੀਕਲ ਤੌਰ ਤੇ ਉਹਦੇ ਵਾਰ ਕਰਨ ਲਈ ਜਾਣਾ ਉਹਦਾ ਅੰਦਰ ਕਿਵੇਂ ਟਿਕੇਗਾ ਦੂਸਰੀ ਚੋਰੀ ਕਰਨੀ ਤੇ ਤੀਸਰਾ ਕਹਿੰਦੇ ਸਨ ਪਰ ਤਨਵਲ ਆਕਰਸ਼ਿਤ ਜਿਹੜਾ ਬੰਦਾ ਖੋਣ ਲੱਗ ਪਵੇ ਭਾਵੇਂ ਫੀਮੇਲ ਕਾ ਭਾਵੇਂ ਫੀਮੇਲ ਕਾ ਗੁਰਮਖੋ ਉਹਦੇ ਅੰਦਰ ਛੇਤੀ ਜਪ ਨਹੀਂ ਚੱਲਦਾ ਫਿਰ ਬਿੰਤੀ ਤਿੰਨ ਜ਼ਬਾਨ ਦੇ ਚੇਬਾ ਗੁਰੂ ਚਾਰ ਜ਼ਬਾਨ ਦੇ ਤਿੰਨੇ ਸ਼ਰੀਰ ਦੇ ਖਿੰਸਾ ਚੋਰੀ ਪਰ ਤਨਵਲ ਆਕਰਸ਼ਿਤ ਹੋਣਾ ਖਿੱਚ ਬਣ ਜਾਣੀ ਤੇ ਤਿੰਨ ਸਾਡੇ ਅੰਦਰ ਦੇ ਨੇ ਜਿਹੜੇ ਕੋਈ ਨਹੀਂ ਜਾਣ ਸਕਦਾ ਸਿਰ ਬੰਦਾ ਜਾਣਦਾ ਜਾਂ ਗੁਰੂ ਜਾਣਦਾ ਝੂਠ ਬੋਲਿਆ ਪਕੜਿਆ ਜਾਂਦਾ ਚੁਗਲੀ ਨਾਲ ਪਕੜਿਆ ਜਾਂਦਾ ਨਿੰਦਿਆ ਨਾਲ ਪਕੜਿਆ ਜਾਂਦਾ ਕਿਤੇ ਨਾ ਕਿਤੇ ਬੰਦਾ ਫਾਸੀ ਜਾਂਦਾ ਨਾ ਫਿੱਕਾ ਬੋਲਿਆ ਪਕੜਿਆ ਜਾਂਦਾ ਜਿਹੜੇ ਮੈਂ ਤਿੰਨ ਸ਼ਬਦ ਕਹੇ ਚੋਰੀ ਕਿੰਸਾ ਪਰ ਤਨ ਆਕਰਸ਼ ਉਥੇ ਬੜਾ ਪਕੜਿਆ ਜਾਂਦਾ ਤਿੰਨ ਐਸੇ ਸੂਖਸ਼ਮ ਨੇ ਜਿਨ੍ਹਾਂ ਬਾਰੇ ਬੰਦਾ ਜਾਣਦਾ ਜਾਂ ਰੱਬ ਜਾਣਦਾ ਪਹਿਲਾ ਹੈ ਕਪਟ ਕਰਨਾ ਕਪਟੀ ਬੰਦੇ ਦੇ ਅੰਦਰ ਜਪ ਨਹੀਂ ਚੱਲੇਗਾ ਸ਼ਾਇਦ ਇਹੀ ਕਾਰਨ ਮਹਾਰਾਜ ਗੁਰੂ ਰਾਮਦਾਸ ਨੇ ਗੁਰਸਿੱਖਾਂ ਨੂੰ ਖਾਸ ਕਰਕੇ ਤਾਕੀਦ ਕੀਤੀ ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ ਨਿਕਪਟ ਕਮਾਵੋ ਹਰ ਕੀ ਹਰ ਮਹਾਰਾਜ ਜੀ ਨੇ ਕਿਹਾ ਖਿਰਦਾ ਕਪਟ ਮੁਖ ਗਿਆਨੀ ਮਹਾਰਾਜ ਇਹ भी ਜਪ ਕਰਦਾ है ਕਹਿੰਦੇ ਝੂਠੇ ਕਾਹ ਬਿਲੋਵਸ ਪਾਣੀ पानी ਰੜਕਦਾ ਪਾਣੀ ਚ ਮਧਾਣੀ ਪਾਇਆ ਤੱਕ ਦਿਮੱਖਾਂ ਨੇ ਨਿਕਲਣਾ ਇਹਦਾ ਮਤਲਬ ਪਹਿਲੀ ਗੱਲ ਕਪਟ ਕਿਸੇ ਨੂੰ ਦਿਸਦਾ ਨਹੀਂ ਪਰ ਉਹ ਕਪਟ ਗਿਰਦੇ ਨੂੰ ਸਾੜੀ ਜਾਂਦਾ ਦੂਸਰਾ ਮਾਨਸਿਕ ਤੌਰ ਤੇ ਜਪ ਕਰਨਾ ਤੇ ਨਾਲ ਹੁਣ ਮੰਨ ਲਓ ਮੇਰੇ ਮਨ ਚ ਫੁਰਨਾ ਮੈਂ ਬੈਠੇ ਦਾ ਬੁਰਾ ਸੋਚ ਰਿਆ ਦੂਜੇ ਨੂੰ ਪਤਾ ਨਹੀਂ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਬੁਰਾ ਚਿੱਤ ਬਨਾ ਵੀ ਜਪ ਨਹੀਂ ਚੱਲਣ ਦਿੰਦਾ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਐਸੇ ਕਰਕੇ ਬਾਬਾ ਜੀ ਨੇ ਇੱਕ ਸ਼ਬਦ ਕਿਹਾ ਕਿ ਫਰੀਦਾ ਬੁਰੇ ਦਾ ਭੜਾ ਕਰ ਤੂੰ ਫੁਰਨੇ ਨਾਲੀ ਭਲਾ ਕਰ ਦੇ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਖੰਡਾਏ ਦੇ ਕੀ ਰੋਗ ਨ ਲੱਗੀ ਪੱਲੇ ਸਭ ਕੁਛ ਪਾਏ ਮੈਂ ਬੇਨਤੀ ਕਰਾਂਗਾ ਕਪਟ ਦੂਸਰਾ ਸ਼ਬਦ ਮੈਂ ਵਰਤਿਆ ਕਿਸੇ ਦਾ ਬੁਰਾ ਚਿਤ ਬਣਾ ਤੀਸਰੀ ਇੱਕ ਬੇਨਤੀ ਹੈ ਜੀ ਜੈਲਸ ਈਰਖਾ ਦਿਸਦੀ ਨਹੀਂ ਪਰ ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ ਗੁਰੂ ਸਾਹਿਬ ਕਹਿ ਰਹੇ ਮੇਰੇ ਕਹਿਣ ਤੋਂ ਮੁਰਾਦ ਕਿ ਜਪ ਦਾ ਸ਼ੌਂਕ ਹੈ ਤੇ ਇਸ ਵਾਸਤੇ ਬੇਨਤੀਆਂ ਜ਼ਰੂਰ ਅਗਲੀ ਗੱਲ ਕਿ ਜਪ ਜਿਹੜਾ ਹੈ ਇਹ ਵੈਸੇ ਤਾਂ ਬਾਣੀ ਵਿੱਚ ਕਈ ਤਰ੍ਹਾਂ ਦਾ ਹੈ ਅਸਲ 'ਚ ਪੁਰਾਣੇ ਲੋਕ ਕਹਿੰਦੇ ਸਨ ਜਪ ਤਿੰਨ ਤਰ੍ਹਾਂ ਦਾ ਹੈ ਇੱਕ ਵਾਚਕ ਹੈ ਇੱਕ ਉਪਾਂਸੂ ਹੈ ਤੇ ਇੱਕ ਮਾਨਸਿਕ ਹੈ ਵਾਚਕ ਜਪ ਦਾ ਅਰਥ ਹੁੰਦਾ ਹੈ ਬੋਲਣਾ ਤੇ ਜਿਹੜਾ ਦੂਜੇ ਬੈਠੇ ਨੂੰ ਸੁਣਾਈ ਦੇ ਦੇਵੇ ਉਹਨੂੰ ਵਾਚਕ ਜਪ ਕਹਿੰਦੇ ਆ ਉਪਾਂਸੂ ਦਾ ਅਰਥ ਹੈ ਉਹਨਾਂ ਕ ਬੋਲੇ ਕਿ ਸਿਰਫ ਆਪਣੇ ਅੰਦਰ ਹੀ ਸੁਕੰਨਾਂ ਨੂੰ ਸੁਣਾਈ ਦੈ ਬਹੁਤ ਨਿਮਮ ਤੇ ਮਾਨਸਿਕ ਦਾ ਅਰਥ ਹੈ ਕਿ ਜ਼ਬਾਨ ਬੁੱਲ ਬੰਦ ਹੋਣ ਤੇ ਫੁਰਨੇ ਦੇ ਨਾਲ ਅੰਦਰ ਜਾਪ ਚੱਲੇ ਇਹਦਾ ਬਾਰੇ ਗੁਰੂ ਸਾਹਿਬ ਜੀ ਨੇ ਕਿਹਾ ਆਤਮ ਉਪਦੇਸ਼ ਭੇ ਸੰਜਮ ਕੋ ਜਾਪ ਸੋ ਜੱਪਾ ਜਾਪੈ ਸਦਾ ਰਹ ਕੰਚਨ ਸੀ ਕਾਲ ਨ ਕਬੂ ਬਿਆਪੈ ਮੈਂ ਬੇਨਤੀ ਕਰਾਂਗਾ ਇਹ ਜਪਲੀ ਕੁਝ ਅਸੂਲ ਨੇ ਉਸ ਵਿੱਚ ਜਿਸ ਨੇ ਜਪ ਕਰਨਾ ਹੈ ਉਹਦੇ ਲਈ ਖੁਰਾਕ ਤੇ ਖਾਸ ਕਰਕੇ ਨੀਂਦ ਜਿੰਨੇ ਜਪ ਕਰਨਾ ਹੈ ਸਰੀਰ ਸਾਧਣਾ ਹੈ 6 ਘੰਟੇ ਤੇ 7 ਘੰਟੇ ਉਹਦੀ ਨੀਂਦ ਕੋਣੀ ਲਾਜ਼ਮੀ ਹੈ ਹ ਸੁਰਤ ਬੈਗੁਰੂ ਖੇੜੇ ਚ ਲੈ ਜਾਏ ਫਿਰ ਸਿਆਣੇ ਕਹਿੰਦੇ ਆ 11 ਮਿੰਟ ਨਾਲ ਵੀ ਸਰ ਜਾਂਦਾ ਮੈਂ ਸਿਰਫ ਜਪ ਦੀ ਗੱਲ ਕੀਤੀ ਹਜ਼ੂਰ ਨੇ ਇਸ ਤੋਂ ਅੱਗੇ ਫਿਰ ਵਿਆਖਿਆ ਕੀਤੀ ਜਿਹੜਾ ਅਸੀਂ ਕੱਲ ਪੜਿਆ ਆਦ ਸੱਚ थोड़ी ਜੀ करनी ਕਰਨੀ ਸੀ ਵਿਆਖਿਆ ਹੁਣ ਇੱਥੇ ਆਦ ਸੱਚ ਕੱਲ ਸੀ ਇਹਦਾ ਪਾਠ ਅਰਥ ਕੀਤਾ ਸੀ ਕਿ ਪਰਮਾਤਮਾ ਇਸ ਸ੍ਰਿਸ਼ਟੀ ਦੇ ਮੁੱਢ ਤੋਂ ਪਹਿਲਾਂ ਵੀ ਸੱਚ ਹੈ ਇਹ ਨਹੀਂ ਕਿ ਸ੍ਰਿਸ਼ਟੀ ਬਣੀ ਤੇ ਉਹ ਸੱਚ ਆਦ ਸੱਚ ਇਹ ਕਿਉਂ ਅੱਜ ਮੈਂ ਰਿਪੀਟ ਕਰਨ ਲੱਗਾ ਮੇਰੇ ਜੋਗਦਰਥੇ ਟਾਈਮ टाइम समा ਪਰਮਾਤਮਾ परमात्मा ਜੀ ਨੂੰ कह रहे हैं ਸ੍ਰਿਸ਼ਟੀ ਦੇ ਮੋਢੇ 'ਚ ਸੱਚ ਹੈ ਜਦੋਂ ਸਮਾ ਬਣਿਆ समय बनना ਨਾਲ बनी जी बने पर ਪਰ ਸੱਚ ਇਹ ਵੇ ਉਹ सी टाइम ਸੀ पसारे ਦੇ ਪਸਾਰੇ ਨਾਲ ਵੀ ਝੂਠਾ ਨਹੀਂ ਪਿਆ ਉਤਾ ਵੀ ਸੱਚ ਹੈ ਉਹ ਨਹੀਂ ਬਦਲਿਆ ਫਿਰ ਬੇਨਤੀ ਆਦ ਸੱਚ ਜੋਗਾਦ ਸੱਚ ਜੁਗ ਆਦ ਸਮੇਂ ਤੋਂ ਸੱਚ ਉਹ ਅੱਜ ਵੀ ਨਹੀਂ ਬਦਲਿਆ ਇਹ ਅਬਦਲ ਖੈ ਇਹ ਅਬਨਾਸ਼ੀ ਖੈ ਇਹਨੇ ਬਿਲਕੁਲ ਨਹੀਂ ਬਦਲਨਾ ਹੈ ਭੀ ਸੱਚ ਉਹ ਅੱਜ ਵੀ ਹੈ ਤੇ ਮਹਾਰਾਜ ਕਹਿੰਦੇ ਨੇ ਆਣਾ ਜਿਹੜਾ ਭਵੇਖਾ ਨਾਨਕ ਹੋਸੀ ਭੀ ਸੱਚ ਉੰਜ ਕਾਲ ਵੈਸੇ ਤੈਨੀਆਂ ਅਸੀਂ ਕਹਿੰਨੇ ਜਦੋਂ ਅਸੀਂ ਟਾਈਮ ਦੀ ਗੱਲ ਕਰਨੇ ਆ ਅਸੀਂ ਕਹਿੰਨੇ ਆ ਵਰਤਮਾਨ ਇਸ ਲਈ ਸ਼ਬਦ ਬੀਤ ਭੂਤ ਕਾਲ ਭਵਿਕਤ ਕਾਲ ਪਰ ਇੱਥੇ ਗੁਰੂ ਜੀ ਨੇ ਚਾਰ ਕਹਿਆ ਆਦ ਸੱਚ ਜਦੋਂ ਟਾਈਮ ਦਾ ਕੁਝ ਵੀ ਨਹੀਂ ਸੀ ਕਿਉਂਕਿ ਜਦੋਂ ਤੁਸੀਂ ਜੁਗਾਦ ਹੈ ਹੈਪੀ ਤੇ ਨਾਨਕ ਉਸ ਵੀ ਤਿੰਨ ਕਾਲ ਨੇ ਜਦੋਂ ਕਹਿ ਰਹੇ ਜੁਗਾਦ ਸੱਚ ਇਹ ਹੋ ਗਿਆ ਬੀਤਾ ਹੋਇਆ ਜੁਗਾ ਦਾ ਆਦ ਹੈਪੀ ਪ੍ਰੈਜੈਂਟ ਹੋ ਗਿਆ ਖੁਸ਼ੀ ਜਿਹੜਾ ਇਹ ਪ੍ਰਵਿਖਤ ਹੋ ਗਿਆ ਫਿਰ ਬੇਨਤੀ ਖ ਇੱਥੇ ਚਾਰ ਨੇ ਆਦ ਸੱਚ ਉਹ ਪਹਿਲਾਂ ਵੀ ਸੱਚ ਸਮੇਂ ਤੋਂ ਪਹਿਲਾਂ ਵੀ ਸੱਚ ਅੱਜ ਵੀ ਸੱਚ ਤੇ ਕੱਲ ਨੂੰ ਵੀ ਸੱਚ ਇਹ ਕਿਉਂ ਮੈਂ ਰਿਪੀਟ ਕੀਤਾ ਇੱਕ ਬਚਨ ਹੁੰਦਾ ਆ ਚ ਅਸੇ ਜੀ ਮੇਰੇ ਮਨ ਚ ਪਾਠ ਕਰਦੇ ਸ਼ਬਦ ਆ ਗਿਆ ਰਾਤੀ ਸੱਚ ਤਾਂ ਪਰ ਜਾਣੀਐ ਜਾਂ ਰਿਦੈ ਸਚੈ ਦੋਵਰੀ ਸੱਚ ਕਿਉ ਆ ਗਿਆ ਸੱਚ ਤਾਂ ਪਰ ਜਾਣੀਐ ਜਾਂ ਰਿਦੈ ਸੱਚਾ ਹੋਏ ਕੂੜ ਕੀ ਮਲ ਉਤਰੈ ਤਨ ਕਰੈ ਖੱਛਾ ਤੋਏ ਸੱਚ ਤਾਂ ਪਰ ਜਾਣੀਐ ਜਾਂ ਸੱਚ ਧਰੇ ਪਿਆਰ ਨਾਉ ਸੁਣ ਮੰਨ ਰਹਿਸੀਐ ਤਾਂ ਪਾਏ ਮੋਖ ਦਵਾਰ ਸੱਚ ਤਾਂ ਪਰ ਜਾਣੀਐ ਜਾਂ ਜੁਗਤ ਜਾਣੈ ਜੀਉ ਤਰਤ ਕਾਇਆ ਸਾਦਕੇ ਵਿੱਚ ਦੇ ਕਰਤਾ ਬੀਓ ਇਹਦੇ ਵਿੱਚ ਇੱਕ ਬਚਨ ਸੱਚ ਤਾਂ ਪਰ ਜਾਣੀਐ ਜਾਂ ਆਤਮ ਤੀਰਤ ਕਰੈ ਨਿਵਾਸ ਸਤ ਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੈ ਨਿਵਾਸ ਸੱਚ ਸਬਣਾ ਹੋਏ दारू ਪਾਪ ਕੱਢੈ ਧੋਏ ਨਾਨਕ ਵਖਾਣਾ ਬੇਨਤੀ ਜਿਨ ਸੱਚ ਪੱਲੇ ਹੋਏ ਥੋੜੇ ਜਿ ਸਿਰਫ ਦੇ ਅਰਥ ਕਰਾਂਗਾ ਬਰੀਕੀ ਨਾਲ ਮੇਰੀ ਬੇਨਤੀ ਸੁਣਿਓ ਜੀ ਇੱਕ ਸ਼ਬਦ ਕੀ ਹੋ ਗਿਆ ਸੱਚ ਤਾਂ ਪਰ ਜਾਣੀਐ ਸੱਚ ਦੀ ਤਾਂ ਸਮਝ ਪੈਗੀ ਜੇ ਰਿਦੈ ਸੱਚਾ ਹੋਏ ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ ਦੋ ਸ਼ਬਦ ਲੈ ਲੈ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਆ ਤਿੰਨ ਤਰ੍ਹਾਂ ਸੱਚ ਦੀ ਵਿਆਖਿਆ ਹੋਈ ਇੱਕ ਸੱਚ ਹੈ ਜਿਹੜੀ ਅਸੀਂ ਗੱਲ ਕਰ ਰਹੇ ਆ ਆਦ ਸੱਚ ਜੁਗਾਦ ਸੱਚ ਹੈ ਹੋਸੀ ਜਾਏ ਨਾ ਜਾਸੀ ਰਚਨਾ ਜਿੰਨ ਰਚਾਈ ਇਹ ਸੱਚ ਇੱਕ ਸੱਚ ਹੈ اخلاقی ਸੱਚ ਇੱਕ ਸੱਚ ਹੈ ਬਦਲਦਾ ਹੋਇਆ ਸੱਚ ਫਿਰ ਇਸ ਨੂੰ ਥੋੜੀ ਵਿਆਖਿਆ ਕਰਨੇ ਇੱਕ ਸੱਚ ਤਾਂ ਮੈਂ ਕਿਹਾ ਅਬਦਲ ਜਿਹੜਾ ਤਰਹ ਕਾਲ ਸਤ ਚਾਰ ਕਾਲ ਸਤ ਦੂਜਾ ਸੱਚ ਹੈ اخਲਾਕੀ ਸੱਚ اخਲਾਕੀ ਸੱਚ ਇੱਕ ਬੰਦਾ ਸਿਮਰਨ ਨਹੀਂ ਕਰਦਾ ਪਰ ਇਹ ਸ਼ਬਦ ਕਹਿੰਦਾ ਮੈਂ ਸੱਚ ਬੋਲਦਾ ਜੇ ਯਾਦ ਰੱਖੋ اخਲਾਕੀ ਸੱਚ ਬਹੁਤ ਵੱਡਾ ਗੁਣ ਹੈ ਪਰ ਕਈ ਵਾਰੀ اخਲਾਕੀ ਸੱਚ ਦੀ ਈਗੋ ਵੀ ਬੰਦੇ ਨੂੰ ਝੂਠੀਆਂ ਕਰ ਜਾਂਦੀ ਹੈ ਜਦੋਂ ਜਿਹੜਾ ਬੰਦਾ ਕਹਿੰਦਾ ਮੇਰੇ ਵਰਗਾ ਸੱਚਾ ਕੋਈ ਨਹੀਂ ਕਈ ਵਾਰੀ ਸੱਚੀ ਵਿੱਚ ਇਹ ਕੋਈ ਜੀ ਸਿਰ ਪਰ ਨੇ ਬਾਜੀ ਲੱਗਦੀ ਹੈ ਬਲੋਕਰ ਆਨ ਹੋ ਜਾਂਦੇ اخਲਾਕੀ ਸੱਚ ਹੈ ਮੈਂ ਸੱਚ ਬੋਲਣਾ ਮੈਂ ਝੂਠ ਨਹੀਂ ਬੋਲਦਾ ਮੈਂ ਚੰਗਾ ਸੋਚਣਾ ਮੈਂ ਬੇਨਤੀ ਕਰਾਂਗਾ ਇਹ ਉਹ ਸੱਚ ਹੈ ਕਿ ਜਿਹੜਾ اخਲਾਕੀ ਹੈ ਤੇ ਹੋਰ ਗੱਲ ਕਿ ਖਾਰ ਧਰਮ ਨੇ اخਲਾਕੀ ਸੱਚ ਦੀ ਆਪੋ ਆਪਣੀ ਵਿਆਖਿਆ ਕੀਤੀ ਹੈ ਸੱਚੀ ਹੈ ਆ ਸਾਡੇ اخلاق ਨੇ ਆ ਸਾਡੇ ਗੁਣ ਨੇ ਆ ਸਾਡੀ ਸ਼ਰ ਹੈ ਮੈਂ ਬੇਨਤੀ ਕਰਾਂਗਾ ਇੱਕ ਸੱਚ ਹੈ ਜਿਹੜਾ ਬਦਲ ਰਿਹਾ ਹੈ ਗੁਰਮੁਖੋ ਬਦਲਦਾ ਕਿਵੇਂ ਹੈ ਇਹ ਮੈਂ ਉਦਾਹਰਨ ਦਿੱਤੀ ਸੀ ਮੈਂ ਦੋ ਤਿੰਨ ਬੇਨਤੀਆਂ ਕਰਾਂਗਾ ਅਸੀਂ ਹੁਣ ਸਾਰੇ ਗੁਰਦੁਆਰਾ ਸਾਹਿਬਾਂ ਆਏ ਤੇ ਇਹ ਸੱਚ ਹੈ ਕਿ ਜਦੋਂ ਘਰੋਂ ਚੱਲੇ ਸੀ ਅਸਮਾਨ ਦਿਸਦਾ ਸੀ ਬੱਦਲ ਸੰ ਚਾਨਣ ਸੀ ਸੱਚ ਸੀ ਨਾ ਤੇ ਜਿਹੜਾ ਸੱਚ 2 ਘੰਟੇ ਪਹਿਲਾਂ ਸੀ ਜਦੋਂ ਆਪਜੀ ਭੋਗ ਤੋਂ ਬਾਅਦ ਜਾਓਗੇ ਉਹ ਸੱਚ ਖਤਮ ਹੋ ਚੁੱਕਾ ਹੋਣਾ ਕਿਉਂਕਿ ਉਸ ਚਾਨਣ ਦੀ ਥਾਂ ਹਨੇਰਾ ਸੱਚ ਹੋ ਗਿਆ ਹੈ ਮੈਂ ਫਿਰ ਬੇਨਤੀ ਕਰਾਂ ਬਦਲਦਾ ਹੋਇਆ ਹੈ ਚਾਨਣ ਹੈ ਉਹ ਸੱਚ ਬਦਲ ਕੇ ਹਨੇਰਾ ਬਣੇਗਾ ਹਨੇਰਾ ਹੈ ਇਹ ਬਦਲ ਕੇ ਸੱਚ ਇਹ ਵੀ ਚਾਨਣ ਬਣੇਗਾ ਅੱਜ ਜਿਹੜੇ ਕੇਸ ਚਿੱਟੇ ਨੇ ਕੱਲ ਤਾਂ ਕਾਲੇ ਸਨ ਕੱਲ ਇਹ ਸੱਚ ਸੀ ਅੱਜ ਇਹ ਸੱਚ ਹੈ ਤੇ ਯਾਦ ਰੱਖਿਓ ਦਸਾਂ ਸਾਲਾਂ ਵੀਹਾਂ ਸਾਲਾਂ ਬਾਅਦ ਰਾਜੇ ਰੱਬ ਜ਼ਿੰਦਗੀ ਰੱਖੇ ਇਹ ਦਿਸਦਾ ਹੋਇਆ ਸੱਚ ਵੀ ਝੂਠ ਹੋ ਜਾਣਾ ਹੈ ਵजूद ਹੈ ਪਰ ਇਹ ਸੱਚ ਝੂਠ ਨਹੀਂ ਹੋਵੇਗਾ ਮੰਨ ਲਓ ਮੈਂ ਕਹਿ ਰਿਹਾ ਮੇਰੀ ਬਾਡੀ ਜਾਂ ਮੇਰੇ ਬਜ਼ੁਰਗ ਦਾਦੇ ਪੁਰਦਾਦੇ ਕਦੀ ਉਹ ਸੱਚ ਸਨ ਪਰ ਨਹੀਂ ਗੁਰਮਖੋ ਅੱਜ ਜੋ ਜਿਹੜਾ ਸੱਚ ਸੀ ਉਹ ਮੇਰੀ ਫੈਮਿਲੀ ਝੂਠ ਹੋ ਚੁੱਕਾ ਹੈ ਉਹ ਵजूद ਨਹੀਂ ਮੈਂ ਫਿਰ ਅਰਜ਼ ਕਰਾਂਗਾ ਜਿਹੜਾ ਆ ਸੱਚ ਹੈ ਇਹ ਹੀ ਸੱਚ ਤੋਂ ਬੜਾ ਉੱਚਾ ਹੈ ਇਹ ਬਾਹਰ ਦੇ ਦ੍ਰਿਸ਼ਟਮਾਨ ਦੇ ਬਦਲ ਸੱਚ ਤੋਂ ਉੱਚ ਹੈ ਇਹ ਉਹ ਸੱਚ ਹੈ ਜਿਹੜਾ ਅਬਦਲ ਹੈ ਜਿਹੜਾ ਕਦੀ ਵੀ ਬਦਲਣਾ ਨਹੀਂ ਇਸ ਸੱਚ ਨੇ ਸਤਜੁਗ ਵਿੱਚ ਵੀ ਰਿਆ ਤ੍ਰੇਤੇ ਵਿੱਚ ਵੀ ਰਿਆ ਦਵਾਪਰ ਵਿੱਚ ਵੀ ਰਿਆ ਅੱਜ ਵੀ ਹੈ ਤੇ ਜਿੱਦਣ ਸਾਰੀ ਟਾਈਮ ਦੀ ਖੇਡ ਮੁੱਕ ਜਾਏਗੀ ਇਹ ਸੱਚ ਫਿਰ ਵੀ ਰਹਿਣਾ ਹੈ ਗੁਰੂ ਸਾਹਿਬ ਨੇ ਕਿਹਾ ਸਭ ਤੋਂ ਪਹਿਲਾਂ ਸੱਚ ਹੁਣ ਅਗਲੀ ਬੇਨਤੀ ਗੁਰੂ ਸਾਹਿਬ ਕੀ ਚਾਹੁੰਦੇ ਆ ਵੀ ਇਨਸਾਨ ਕਿਹੋ ਜਿਹਾ ਹੋਵੇ ਸਭ ਤੋਂ ਪਹਿਲੀ ਦਾਤਾਰ ਨੇ ਜਿਹੜੀ ਸਾਡੀ ਮੰਜ਼ਲ ਮਿੱਥੀ ਮਨੁੱਖਾਂ ਦੀ चलो मैं ਸਿੱਖ शब्द वर्तना ਪਿਆਵਾਂ ਉਂਝ ਤੇ ਗੁਰੂ ਗ੍ਰੰਥ ਸਾਹਿਬ ਦੀ पूरी मानवता ਮਾਨਵਤਾ ਵਾਸਤੇ ਹੈ ਪਿਆਰਿਓ ਇਨਸਾਨ ਸਚਿਆਰ ਪਦ ਤੇ ਕਿਵੇਂ ਪਹੁੰਚੇ ਇਹ ਇਹਨੂੰ ਸੁਣਿਓ ਜਿਹਦੇ ਅਰਥ ਜਦੋਂ ਕਰਾਂਗਾ ਮੈਨੂੰ ਇਹਦੇ ਅਰਥ ਕਰਨ ਲਈ ਸਭ ਤੋਂ ਪਹਿਲਾਂ ਇਸ ਪੌੜੀ ਦੀ ਅੰਤਲੀਆਂ ਤੁਕਾਂ ਤੇ ਜਾਣਾ ਪੈਣਾ ਪਹਿਲੇ ਨਹੀਂ ਅਰਥ ਕਰਾਂਗਾ ਜੀ ਅੰਤਲੀ ਕਿਵ ਦਾ ਅਰਥ ਤੇ ਕਿਵੇਂ ਸਚਿਆਰਾ ਦਾ ਅਰਥ ਉਸ ਅਬਦਲ ਸਾਚ ਨਾਲ ਬੰਦਾ ਕਿਵੇਂ ਜੁੜੇ ਸਚਿਆਰ ਪਦਵੀ ਤੇ ਕਿਵੇਂ ਪਹੁੰਚੇ ਕਿਵੇਂ ਸਚਿਆਰ ਹੋ ਸਕੇ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟਾ ਇਹ ਟੈਂਕੇ ਤੇ ਦੁਲਾਵਾਂ ਨੇ ਕਿਵ ਕੂੜਾ ਟੁੱਟਾ ਪਾਲ ਕੂੜਾ ਦਾ ਅਰਥ ਹੋ ਗਿਆ ਝੂਠ ਟੁੱਟੇ ਦਾ ਅਰਥ ਕਿ ਕਿਵੇਂ ਖਤਮ ਹੋਵੇ ਕਿਵੇਂ ਭੱਜ ਜਾਏ ਟੁੱਟ ਜਾਏ ਤੇ ਪਾਲ ਉਂਝ ਵੈਸੇ ਗੁਰੂ ਗ੍ਰੰਥ ਸਾਹਿਬ ਵਿੱਚ ਪਾਲ ਦੇ ਲਫ਼ਜ਼ੀ ਅਰਥ ਵਟਵੀਆ ਹੈ ਸੂਕੈ ਸਰਵਰ ਪਾਲ ਬੰਧਾਵੈ ਲੁਣਾ ਖੇਤ ਅਤ ਬਾਹਰ ਕਰੈ ਪਾਲ ਅਰਥ ਪੰਗਤ ਵੀ ਹੈ ਲਹਿਨ ਵੀ ਹੈ ਮੈਂ ਆਪ ਨੂੰ ਬੇਨਤੀ ਕਰਾਂ ਇੱਥੇ ਗੁਰਦੇਵ ਇੱਕ ਸਵਾਲ ਪੈਦਾ ਕਰ ਰਿਹਾ ਸੁਣੋ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਸਚ ਏ ਵੇ ਇਹ ਦੋ ਤੁਕਾਂ ਹੀ ਪੂਰੇ ਗੁਰੂਗ੍ਰੰਥ ਸਾਹਿਬ 'ਚ ਬੰਦੇ ਨੂੰ ਇਹ ਦੱਸ ਦੀਆਂ ਪਈਆਂ ਨੇ ਤੂੰ ਸੋਚਾ ਕਿਵੇਂ ਹੋ ਸਕਣਾ ਕਿਵੇਂ ਸਚਿਆਰ ਹੋਈਏ ਕਿਵੇਂ ਸਚਿਆਰ ਹੋਈਏ ਕਿਵ ਕੂੜਾ ਟੁੱਟੇ ਪਾਲੋਂ ਮੈਂ ਬੇਨਤੀ ਕਰਾਂਗਾ ਇੱਥੇ ਪਾਲ ਦਰਥ ਅਸੀਂ ਕੰਦ ਕਰਾਂਗੇ ਪਰਦਾ ਕਰਾਂਗੇ ਕੂੜ ਦਰਥ ਝੂਠ ਝੂਠ ਦੀ ਕੰਦ ਕਿਵੇਂ ਟੁੱਟੇ ਕਿਵੇਂ ਅਸੀਂ ਸਚਿਆਰ ਹੋ ਸਕੀਏ ਇੱਥੇ ਕੋਈ ਸ਼ੱਕ ਨਹੀਂ ਇਸ ਸਵਾਲ ਪੈਦਾ ਕੀਤੇ ਕੋਈ ਦਾ ਉੱਤਰ ਗੁਰੂ ਨਾਨਕ ਸਾਹਿਬ ਨੇ ਖੁਦ ਦਿੱਤਾ ਕੀ ਮਹਾਰਾਜ ਆਪ ਤੋਂ ਪਹਿਲਾਂ ਇਸ ਸਚਾਰ ਪਦ ਤੇ ਜਾਣ ਵਾਸਤੇ ਕਿਸਾਂ ਨੇ ਉਦਮ ਨਹੀਂ ਕੀਤਾ ਮਹਾਰਾਜ ਆਪ ਤੋਂ ਪਹਿਲਾਂ ਕਿਸੇ ਦੇ ਮਨ ਚ ਇਹ ਨਹੀਂ ਆਇਆ ਵੀ ਸਚਾਰ ਹੋਣਾ ਚਾਹੀਦਾ ਫਿਰ ਬੇਨਤੀ ਕਿਵ ਸਚਾਰਾ ਹੋਈਏ ਕਿਵ ਕੂੜਾ ਟੁੱਟੇ ਪਾਲ ਕਿਵੇਂ ਸਚਾਰ ਹੋਈਏ ਤੇ ਮੈਂ ਆਪ ਨੂੰ ਬੇਨਤੀ ਕਰਾਂ ਆ ਜਿਹੜੀ ਤੋਕ ਹੈ ਨਾ ਕਿਵ ਸਚਾਰਾ ਹੋਈਏ ਇਸ ਤੋਕ ਨੇ ਚਾਰ ਪੌੜੀਆਂ ਤੱਕ ਜਾ ਕੇ ਵਿਆਖਿਆ ਕਰਨੀ ਮੈਂ ਬੇਨਤੀ ਅੱਗੇ ਕਰਾਂਗਾ ਆਪ ਜੀ ਦੇਖੋਗੇ ਤੋ ਕਿ ਪਹਿਲੀ ਪੌੜੀ ਚ ਪਰ ਇਸ ਇੱਕ ਤੁਕ ਦੀ ਵਿਆਖਿਆ ਚਾਰ ਪੌੜੀਆਂ ਮੁਕੰਮਲ ਕਰਨੀਆਂ ਮਹਾਰਜ ਕਹਿੰਦੇ ਨੇ ਕਿਵ ਸਚਾਰਾ ਹੋਈ ਹੈ ਕਿਵੇਂ ਸਚਾਰ ਹੋਵੇ ਕਿਵੇਂ ਕੂੜ ਦੀ ਪਾਲ ਟੁੱਟੇ ਇੱਥੇ ਇੱਥੇ ਤੇ ਆ ਗਿਆ ਕਿਵ ਕੂੜਾ ਟੁੱਟੇ ਪਾਲ ਹਣਾ ਬੰਦਾ ਕਹਿੰਦਾ ਝੂਠ ਦੀ ਕੰਦ ਹੁਣ ਇਸ ਝੂਠ ਕੀ ਹੈ ਇਹਦੀ ਵਿਆਖਿਆ ਗੁਰਲੀ ਗੁਰੂ ਨੇ ਇੱਕ ਨਵਾਂ ਸ਼ਬਦ ਵਰਤਿਆ ਨਾਨਕ ਹੁਕਮ ਜੇ ਬੁੱਝੈ ਤਾਂ ਹਉਮੈ ਜਿਹੜਾ ਕੂੜ ਹੈ ਉਹ ਹਉਮੈ ਹੈ ਕਿਉਂਕਿ ਇਹ प्रकरण ਚਾਰ ਪੌੜੀਆਂ ਤੇ ਇੱਕੋ ਚੱਲਣਾ ਕਿਵਸ ਚਿਆਰਾ ਹੋਈ ਐ ਕਿ ਕੂੜਾ ਟੁੱਟੈ ਪਾਲ ਕੂੜਦਰਤ ਝੂਟ ਕੂੜਦਰਤ ਖੌਮੇ ਮੈਂ ਸਿਰਫ ਪਹਿਲਾ ਆਪ ਨੂੰ ਇਹ ਬੇਨਤੀ ਕਰਨੀ ਚਾਹਨਾ ਕਿ ਪਰਮਾਤਮਾ ਤੇ ਜੀਵ ਦੇ ਦਰਮਿਆਨ ਫਿਰ ਬੇਨਤੀ ਸੁਣਿਓ ਥੋੜਾ ਜਿਹਾ ਬਿਕਮ ਲੱਗੇਗਾ ਕਿਉਂਕਿ ਮੈਂ ਆਪ ਜੀ ਨੂੰ ਕੱਲ ਕਿਹਾ ਸੀ ਮੈਂ ਯਤਨ ਕਰਨਾ ਐ ਅਰਥ ਖੋਲ ਸਕਾਂ ਦੇਖੋ ਇਹ ਜਿਹੜੀ ਝੂਠ ਦੀ ਕੰਧ ਇਹ ਕਿੰਨੇ ਕ੍ਰੀਏਟ ਕੀਤੀ ਇਹ ਕਿੰਨੇ ਬਣਾਈ ਜੀ ਜਿਹਦੇ ਬਾਰੇ ਬਾਬਾ ਜੀ ਆਪ ਜੀ ਕਹਿ ਰਹੇ ਹੋ ਕਿ ਜਿਹੜੀ ਝੂਠ ਦੀ ਕੰਧ ਦੇ ਖੌਮੇ ਜ ਨੂੰ ਮੈਂ ਕਹਿ ਰਿਆਂ ਇਹ टुटेगी ਕਿਵੇਂ ਟੁੱਟੇਗੀ ਤੇ ਗੁਰੂ ਗ੍ਰੰਥ ਸਾਹਿਬੀ ਸ਼ਬਦ बहुत ਬਹੁਤ ਵਾਰੀ ਜ਼ਿਕਰ ਆਇਆ ਮੈਂ ਰਸਤੇ ਜਿਹਾ ਵਿਚਾਰ ਕਰ ਰਹਾ ਸਾਂ ਇੱਕ ਹੁਕਮ ਤੇ ਦੂਜੀ ਖੌਮੇ ਇਹ ਗੁਰੂ ਗ੍ਰੰਥ ਸਾਹਿਬ ਵਿੱਚੋਂ ਸਮਝਣ ਵਾਲੀ ਗੱਲ ਹੈ ਪਰ ਪਹਿਲੇ ਮੈਂ ਆਪ ਨੂੰ ਬੇਨਤੀ ਕਰਨੀ ਚਾਹਨਾ ਵੀ ਹੁਕਮ ਕੀ ਹੈ ਕਿਉਂਕਿ ਤਾਂ ਇਹਦੇ ਅਰਥ ਹੋਣਗੇ ਪਹਿਲੀਆਂ ਤੁਕਾਂ ਦੇ ਅਰਥ ਨਹੀਂ ਅਜਿਕੇ ਕਿਉਂਕਿ ਸਭ ਤੋਂ ਪਹਿਲਾਂ ਇਹ ਕੁਐਸਚਨ ਖਾਲ ਕਰ ਲਈ ਕਿ ਕਿਵਸ ਚਾਰਾ ਹੋਈ ਹੈ ਕਿ ਕੂੜਾ ਟੁੱਟਾ ਪਾਲ ਇਹ ਸਵਾਲ ਖੈ ਤੇ ਇਹਦਾ ਉੱਤਰ ਖੈ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਨ ਕੂੜ ਕੀ ਹੈ ਹੁਕਮ ਕੀ ਹੈ ਹੁਕਮ ਲਫ਼ਜ਼ ਬਹੁਤ ਜ਼ਿਆਦਾ ਪ੍ਰਚਲਿਤ ਹੈ ਸਾਡੇ ਚ ਤੇ ਮੈਂ ਬੇਨਤੀ ਕਰਾਂ ਕਰਤਾ ਅਕਾਲ ਤੋਂ ਬਾਅਦ ਆਦ ਸੱਚ ਤੋਂ ਬਾਅਦ ਗੁਰੂ ਨਾਨਕ ਸਾਹਿਬ ਨੇ ਜਿਹੜਾ ਪਹਿਲਾ ਸ਼ਬਦ ਵਰਤਿਆ ਹੁਕਮ ਤੇ ਪਹਿਲੀ ਵਾਰੀ ਜਪਜੀ ਸਾਹਿਬ ਦੇ ਵਿੱਚ ਅਰਬੀ ਲਫ਼ਜ਼ ਦੀ ਪਹਿਲੀ ਵਾਰ ਇੱਥੇ ਵਰਤੋਂ ਹੋਈ ਹੈ ਹੁਕਮ ਜਿਹੜਾ ਪੰਜਾਬੀ ਦਾ ਸ਼ਬਦ ਨਹੀਂ ਇਹ ਅਰਬੀ ਦਾ ਲਫ਼ਜ਼ ਹੈ ਇਹਦੇ ਸਮਾਨਾਂਤਰ ਜਿਹੜਾ ਲਫ਼ਜ਼ ਹੈ ਫਾਰਸੀ ਦਾ ਉਹ ਫੁਰਮਾਨ ਹੈ ਤੇ ਅਸੀਂ ਇੱਕ ਲਫ਼ਜ਼ ਆਪਣਾ ਹੋਰ ਵਰਤਨੇ ਆ ਉੰਜ ਗੁਰੂ ਗ੍ਰੰਥ ਸਾਹਿਬ ਚ ਹੁਕਮ ਵੀ ਹੈ ਫਾਰਸੀ ਦਾ ਫਰਮਾਨ ਵੀ ਹੈ ਤੇ ਗੁਰੂ ਗ੍ਰੰਥ ਸਾਹਿਬ ਚ ਆਗਿਆ ਲਫਜ਼ ਵੀ ਆਉਂਦਾ ਸਾਰੇ ਨੇ ਇਸ ਨੂੰ ਬੇਨਤੀ ਮੇਰੀ ਧਿਆਨ ਨਾਲ ਸੁਣੀਓ ਥੋੜਾ ਜਿਹਾ ਹੁਕਮ ਦੇਦੋ ਚੱਲਦਾ ਹੈ ਤੇ ਸਾਡੇ ਸਾਹਮਣੇ ਸਿਰਫ ਇੱਕੋ ਸ਼ਬਦ ਆ ਜਾਂਦਾ ਆਰਡਰ ਆਰਡਰ ਨੂੰ ਕਹਿੰਦੇ ਹੁਕਮ ਕਈ ਵਾਰੀ ਇੱਕ ਜਾਪਤ ਨੂੰ ਹੁਕਮ ਕਿਹਾ ਜਾਂਦਾ ਪਰ ਗੁਰਮਖੋ ਧਿਆਨ ਨਾਲ ਸੁਣੀਓ ਮੇਰੀ ਬੇਨਤੀ ਅਸਲ ਚ ਹੁਕਮ ਗੁਰਮਤ ਵਿੱਚ ਹਾਲਾਂ ਹੁਕਮ ਸ਼ਬਦ ਦੀ ਸੂਫੀ ਸਾਹਿਤ ਵਿੱਚ ਸੂਫੀਆਂ ਦੀ ਰਚਨਾ ਚ ਬੜੀ ਵਾਰੀ ਮੈਂ ਪੜਿਆ ਗੁਰਮਤਿ ਵਿੱਚ ਇਸਲਾਮ ਨੇ ਵੀ ਹੁਕਮ ਦਾ ਜ਼ਿਕਰ ਕੀਤਾ ਅਰਬੀ ਦਾ ਸ਼ਬਦ ਪਰ ਉਹ ਜਾਪਦਾ ਕਰਦੇ ਆ ਗੁਰਮਤਿ ਵਿੱਚ ਹੁਕਮ ਕੀ ਹੈ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੋ ਮੈਂ ਕਹੇ ਨਾ ਕੋਈ ਕੀ ਹੁਕਮਨਾਮਾ ਸਮਝ ਜਿਹੜਾ ਆ ਤਾਂ ਕੀ ਹੁਕਮ ਅਸਲ ਚ ਇਹਦੀ ਵਿਆਖਿਆ ਮਾਰੇ ਫਿਰ ਅਗਲੀ ਪੌੜੀ ਚ ਨਾਲ ਹੀ ਕਰਨਗੇ ਜਿੰਨੀ ਕੋਈ ਸਮਝ ਪਈ ਇਹਤੇ ਹੁਕਮ ਆਰਡਰ ਨਹੀਂ ਜੇ ਹੁਕਮ ਨੂੰ ਆਰਡਰ ਕਰਕੇ ਅਰਥ ਕਰਾਂਗੇ ਤੇ ਰੱਬ ਦੀ ਸਰਬ ਵਿਆਪਕਤਾ ਦਾ ਰੁਕਣ ਦਾ ਪ੍ਰਬੰਧ ਕਰ ਉਹਤੇ ਸਰਬ ਵਿਆਪਤਾ ਮੁੱਕ ਜਾਏਗੀ ਸਮਝਣ ਲਈ ਇਸਲਾਮ ਵਿੱਚ ਕਿਹਾ ਜਾਂਦਾ ਰੱਬ ਨੇ ਹੁਕਮ ਕੀਤਾ ਕੁੰਬ ਕੁੰਈ ਇਸਾਈਤ ਵੀ ਕਹਿੰਦੀ ਖੋ ਜਾ ਪਰ ਨਾਲ ਕਿਹਾ ਵੀ ਹੁਕਮ ਕਰਕੇ ਮਲਾਬ ਜਵਰਤ ਨੇ ਹੁਕਮ ਕਰਕੇ ਜਿਨੇ ਹੁਕਮ ਦਿੱਤਾ ਉਹ ਸਤਵੇਂ ਅਸਮਾਨ ਤੇ ਚਲਾ ਗਿਆ ਫਿਰ ਬੇਨਤੀ ਹੁਕਮ ਕਰਨ ਵਾਲਾ ਆਪਣੇ ਹੁਕਮ ਤੋਂ ਵੱਖ ਹੋ ਗਿਆ ਹੁਕਮ ਕਰ ਦਿੱਤਾ ਪਰ ਆਪਣੇ ਹੁਕਮ ਦੇ ਨਾਲ ਨਹੀਂ ਉਹ ਚੱਲਿਆ ਹੁਕਮ ਵੱਖਰਾ ਤੇ ਹੁਕਮੀ ਵੱਖਰਾ ਆਪ ਦੇਖੋ ਕਿ ਗੁਰੂ ਸਾਹਿਬ ਇੱਕ ਨਵਾਂ ਸ਼ਬਦ ਦੇਣਗੇ ਅੱਗੇ ਹੁਕਮੀ ਹੁਕਮੀ ਦਾ ਅਰਥ ਜਿਹੜਾ ਹੁਕਮ ਕਰ ਰਿਹਾ ਹੈ ਹੁਕਮੀ ਕੌਣ ਹੁਕਮ ਕੀਤਾ ਆਰਡਰ ਕੀਤਾ ਪਰ ਹੁਕਮ ਤੋਂ ਹੁਕਮੀ ਜਿਹੜਾ ਉਹ ਵੱਖ ਹੋ ਗਿਆ ਇੱਕ ਉਦਾਹਰਨ ਚੱਲੂ ਸਮਝਣ ਲਈ ਮੈਂ ਇੱਕ ਵਾਰ ਇੱਥੇ ਬੇਨਤੀ ਕੀਤੀ ਸੀ ਹੁਕਮ ਸਮਝ ਸਮਝ ਪੈ ਜਾਏ ਨਾ ਫਿਰ ਸਾਰੀ ਜਪਜੀ ਸਾਹਿਬ ਸਮਝ ਪੈ ਜਾਣੀ ਵੀ ਅਸੰਖ ਨਿੰਦਕ ਕਿਉ ਨੇ ਦੁਖ ਪੂਖ ਸਦਮਾਰ ਕੀ ਹੈ ਉਤਮਤਾ ਹੋਏ ਨੀਚ ਕਿਉ ਨੇ ਹੁਕਮ ਵਿੱਚ ਅਸਲ ਚ ਕੀ ਹੈ ਜਿੰਨੇ ਕੋ ਬਾਣੀ ਪੜ ਕੇ ਸਮਝ ਪਈ ਕਿ ਹੁਕਮ ਜਦੋਂ ਅਫੁਰ ਪ੍ਰਮਾਤਮਾ ਨੇ ਅਫੁਰਜ ਕਲ ਸੀ ਪੜਿਆ ਸੁੰਨ ਚ ਬੈਠੇ ਨੇ ਜਦੋਂ ਸੁੰਨ ਚ ਬੈਠੇ ਹੋਏ ਨੇ ਅਫੁਰ ਨੇ अपने ਆਪ ਨੂੰ करना सी फिर ਫਿਰ ਬੇਨਤੀ निराकार ने अपने ਆਪਣੇ ਆਪ करना सी ਕਰਨਾ ਸੀ ਤੇ ਉਸ ਨਿਰਾਕਾਰ ਵਿੱਚ ਉਸ ਅਫੁਰ ਵਿੱਚ ਜਿਹੜਾ ਸਫੁਰ ਤੇ ਆਕਾਰ ਬਣਾਉਣ ਦਾ ਫੁਰਨਾ उस ਹੋਇਆ ਉਸ ਫੁਰਨੇ ਨੂੰ ਗੁਰੂ ਹੁਕਮ ਕਹਿੰਦਾ ਹੈ ਉਸ ਹੁਕਮ ਤੋਂ ਬਿਨਾ ਆਕਾਰ ਨਹੀਂ ਬਣ ਸਕਦਾ ਫਿਰ ਬੇਨਤੀ ਕ ਕਰਤਾਪੁਰਖ ਪੰਜਾਬੀ ਚ ਇੱਕ ਸ਼ਬਦ ਵਰਤੇ ਹੈ दैਵੀ ਇੱਛਾ ਪਰ ਉਹ ਆਪਣੀ दैਵੀ ਇੱਛਾ ਤੋਂ ਵੱਖ ਨਹੀਂ ਇਸ ਨੂੰ ਸਮਝਣ ਲਈ ਮੈਂ ਜਿਹੜੀ ਉਦਾਹਰਣ ਦੇਣ ਲੱਗਾ ਮੰਨ ਲਓ ਆਪ ਜੀ ਕੈਨੇਡਾ ਚ ਬੈਠੇ ਹੋ ਸੌਖੀ ਗੱਲ ਆਪ ਜੀ ਕੋਲ ਕਈ ਬੰਦੇ ਕੰਮ ਕਰਦੇ ਆ ਤੁਹਾਡੀ ਫੈਕਟਰੀ ਜਾਂ ਜੋ ਵੀ ਬਿਜ਼ਨਸ ਹੈ ਤੇ ਤੁਹਾਡਾ ਪ੍ਰੋਜੈਕਟ ਹੈ ਕੋਈ ਕਰਨ ਵਾਲਾ ਕੋਈ ਆਪ ਜੀ ਜਾ ਰਹੇ ਹੋ ਪਰਦੇਸ਼ ਦੇ ਛੱਡ ਕੇ ਪਰ ਮੀਟਿੰਗ ਕਰਦੇ ਹੋ ਆਪਣੇ ਬੰਦਿਆਂ ਨਾਲ ਜਿੰਨੇ ਬੰਦੇ ਆਪ ਜਿੰਨਲ ਕੰਮ ਕਰ ਰਹੇ ਹੋ ਮੈਨੇਜਰ ਨੇ ਜਾਂ ਜੋ ਵੀ ਨੇ ਵਰਕਰ ਤੁਸੀਂ ਕੰਮ ਕਰਕੇ ਮੀਟਿੰਗ ਕਰਕੇ ਕਹਿੰਦੇ ਹੋ ਮੈਂ ਇੰਨੇ ਦਿਨ ਜਾ ਰਿਹਾ ਆ ਕੰਮ ਮੇਰੇ ਤੋਂ ਬਾਅਦ ਮੁਕੰਮਲ ਹੋਣਾ ਚਾਹੀਦਾ ਇਸ ਤਰ੍ਹਾਂ ਜੀ ਹੁਕਮ ਕਰ ਦਿੱਤਾ ਮੀਟਿੰਗ ਹੋ ਗਈ ਪਰ ਜਿਹੜਾ ਹੁਕਮ ਕਰਨ ਵਾਲਾ ਸੀ ਉਸੇ ਵਕਤ ਗੈਰ ਹਾਜ਼ਰ ਹੋ ਗਿਆ ਜਿੰਨੇ ਕਹੋ ਤੇ ਹੈ ਹੀ ਨਹੀਂ ਜਿੰਨੇ ਹੁਕਮ ਦਿੱਤਾ ਉਹ ਸੁੱਤਾ ਪਿਆ ਤੇ ਹੁਕਮ ਜਿਹੜਾ ਉਹ ਬਿਜ਼ਨਸ ਚ ਲਾਗੂ ਹੋ ਰਿਹਾ ਪਰਮਾਤਮਾ ਦਾ ਹੁਕਮ ਐਸਾ ਨਹੀਂ ਕਿ ਹੁਕਮ ਕਰਕੇ ਆਪਣੇ ਹੁਕਮ ਤੋਂ ਵੱਖ ਹੋ ਜਾਂਦਾ ਬਿਲਕੁਲ ਨਹੀਂ ਜਿੱਥੇ ਉਹਦਾ ਹੁਕਮ ਵਰਤਦਾ ਉੱਥੇ ਹੀ ਆਪ ਵਰਤਦਾ ਹੈ ਇਹਦੇ ਵਿੱਚੋਂ ਫਿਰ ਸ਼ਬਦ ਨਿਕਲਦਾ ਇੱਕ ਰਜ਼ਾ ਫਿਰ ਬੇਨਤੀ ਇਹ ਸਾਰੇ ਸ਼ਬਦ ਬੜੇ ਡੂੰਗੇ ਜੇ ਭਾਣਾ ਹੁਕਮ ਤੇ ਰਜ਼ਾ ਉਂ ਗੁਰੂ ਗ੍ਰੰਥ ਸਾਹਿਬ ਵਿੱਚ ਭਾਣੇ ਕਰਕੇ ਉਹਨੂੰ ਪਾਇਆ ਤੇ ਪੈਦਾ ਹੋ ਗਿਆ ਜਦੋਂ ਭਾਣਾ ਵਰਤਿਆ ਫਿਰ ਉਹਦੇ ਨਾਲ ਹੁਕਮ ਹੈ ਜਦੋਂ ਹੁਕਮ ਦੀ ਸਮਝ ਪੈ ਗਈ ਫਿਰ ਅਗਲਾ ਜਿਹੜਾ ਸ਼ਬਦ ਹੈ ਉਹ ਰਜ਼ਾ ਹੈ ਮੈਂ ਬੇਨਤੀ ਕਰਾਂਗਾ ਜਿੱਥੇ ਪਰਮਾਤਮਾ ਦਾ ਹੁਕਮ ਵਰਤੇਗਾ ਸੱਚ ਏਵੇਂ ਉੱਥੇ ਹੁਕਮ ਵਰਤੌਣ ਵਾਲਾ ਆਪ ਵਿੱਚ ਵਰਤੇਗਾ ਇਹੀ ਕਾਰਨ ਕਿ ਬੰਦਗੀ ਕਰਨ ਵਾਲਾ ਉਹਨੂੰ ਇੱਜ਼ਤ ਮਿਲੇ ਉਹਦਾ અપਮਾਨ ਹੋਵੇ ਉਹਨੂੰ ਲੋਕ ਸਲਾਉਣ ਉਹਨੂੰ ਨਿੰਦਣ ਉਹਦੇ ਪਰਿਵਾਰ 'ਚ ਮੌਤ ਆਵੇ ਜਨਮ ਆਵੇ ਘਾਟਾਂ ਆਵੇ ਵਾਧਾ ਹੋਵੇ ਉਹ ਖਾਰ ਵੇਲੇ ਕਿਉਂ ਇਕੋ ਜਾ ਰਹਿੰਦਾ ਹੈ ਕਿਉਂਕਿ ਉਹਨੂੰ ਸਮਝ ਪੈ ਗਈ ਕਿ ਜੀ ਕੋ ਜਾ ਹੁਕਮ ਵਰਤੇਗਾ ਮੇਰਾ ਹੁਕਮ ਹੀ ਵਿੱਚ ਜ਼ਰੂਰ ਹੋਵੇਗਾ ਜੇ ਦੁੱਖ ਆਵੇਗਾ ਤੇ ਦੁੱਖ ਦੇਣ ਵਾਲਾ ਵੀ ਤਾਂ ਨਾਲ ਹੋਵੇਗਾ ਨਾ ਜੇ ਸੁਖ ਆਵੇਗਾ ਤਾਂ ਸੁਖ ਵਾਲਾ ਵੀ ਨਾਲ ਹੋਵੇਗਾ ਮੈਂ ਇਸ ਕਰਕੇ ਕਿਹਾ ਵੀ ਇਸ ਹੁਕਮ ਨੂੰ ਕਿਉਂਕਿ ਮੈਂ ਅਰਤਾ ਕਰੀ ਜਾ ਰਹੇ ਹਾਂ ਪਰ ਬਾਬਾ ਜੀ ਕੱਲ ਕਲੀਅਰ ਕਰ ਦੇਣਗੇ ਐਵੇਂ ਬੋਲੀ ਨਾ ਜਾ ਹੁਕਮ ਨੂੰ ਅਜ ਤੱਕ ਨਾ ਕੋਈ ਕਹਿ ਨਹੀਂ ਸਕਿਆ ਮਾਰੇ ਨੇ ਸ਼ਬਦ ਵਰਤੇ ਆ ਵੀ ਕਿਵੇਂ ਸਚਾਰ ਹੋਈਏ ਕਿਵੇਂ ਕੂੜ ਦੀ ਪਾਲ ਟੁੱਟੇ ਹੁਣ ਪਹਿਲਾ ਸਵਾਲ ਸੀ ਕੀ ਮਹਾਰਾਜ ਆਪ ਜੀ ਤੋਂ ਪਹਿਲਾਂ ਇਹ ਉਦਮ ਨਹੀਂ ਕੀਤਾ ਗਿਆ ਸਚਾਰ ਹੋਣ ਲਈ ਗੁਰੂ ਸਾਹਿਬ ਜੀ ਨੇ ਫਿਰ ਬਖਸ਼ਿਸ਼ ਕੀਤੀ ਪਹਿਲੇ ਜਿਹੜੇ ਉਦਮ ਕੀਤੇ ਗਏ ਉਹਨਾਂ ਚਾਰਾਂ ਦਾ ਜ਼ਿਕਰ ਹਜ਼ੂਰ ਨੇ ਪਹਿਲਾਂ ਕੀਤਾ ਆਓ ਅਸੀਂ ਦੀ ਸ਼ੁਰੂਆਤ ਕਰਨੇ ਆ ਕਿ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਹਾ ਜਿੰਨੇ ਕੋ ਸਮਝ मैं ਇਹ ਨਹੀਂ ਕਿ ਮੈਂ ਸ਼ੁੱਧ ਪਾਠ ਕਰਨਾ ਸੱਚ ਇਹ ਵੇ ਕਿ ਸ਼ੁੱਧ ਪਾਠ ਦੀ ਬੜੀ ਅਹਿਮੀਅਤ ਹੈ ਪਰ ਕਦੀ ਕੋਈ ਦਾਵਾ ਨਹੀਂ ਕਰ ਸਕਦਾ ਵੀ ਸ਼ੁੱਧ ਚੱਚੇ ਉੱਤੇ ਦੁਲਾਵਾਂ ਬੋਲਣੀਆਂ ਨੇ ਲਾ ਨਹੀਂ ਬੋਲਣੀ ਸੋਚ ਅੱਗੇ ਨਾ ਨਹੀਂ ਯਾਦ ਰੱਖੋ ਸਾਰੇ ਕੰਨ ਨਹੀਂ ਪੜਦੇ ਆ ਸੋਚੈ ਸੋਚ ਨਾ ਨਾ ਨਹੀਂ ਕੱਲਾ ਨੰਨਾ ਲੱਗੇ ਕਵਤਾ ਵਿੱਚ ਮਾਤਰਾ ਵਾਧਦੀ ਕੰਨਾ ਲਾਂ ਦੇ ਨਾਲ ਇੱਥੇ ਗੁਰਦੇਵ ਦੇ ਇਸ ਬਚਨ ਵਕਤ ਆਂਦੇ ਆ ਜੇ ਸੋਚੈ ਸੋਚ ਨਾ ਹੋਵਈ ਹੋ ਵੀ ਨਹੀਂ ਅਕਸਰ ਪਾਠ ਜਿਹੜੇ ਸੱਜਣ ਸੰਤਿਆ ਤੋਂ ਬਿਨਾ ਕਰਦੇ ਨੇ ਹੋਵਈ ਈ ਈੜੀ ਨੂੰ ਬਿਹਾਰੀ ਬੋਲਣ ਦੀ ਬਜਾਏ ਵਾਵੇ ਨੂੰ ਬਿਹਾਰੀ ਲਾ ਕੇ ਬੋਲ ਜਾਂਦੇ ਆ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਹੁਣ ਇੱਥੇ ਜਿਹੜਾ ਸ਼ਬਦ ਹੈ ਸੋਚੈ ਸਿੱਖ ਜਗਤ ਵਿੱਚ ਇਹਦੇ ਦੋ ਅਰਥ ਕੀਤੇ ਆ ਇਹ ਪਹਿਲਾ ਜਿਹੜਾ ਸ਼ਬਦ ਸੀ ਨਾ ਸੋਚੈ ਇਹਦੇ ਅਰਥ तकरीबन ਕਵੀ ਸੰਤੋਖ ਸਿੰਘ ਨੇ ਜਦੋਂ ਗਰਬਗੰਜਨੀ ਟੀਕਾ ਕੀਤਾ ਜਿਹੜਾ है ਨਾਨਕ ਪ੍ਰਕਾਸ਼ ਹੈ ਇਹਨਾਂ ਦਾ ਜਪਜੀ ਸਾਹਿਬ ਦਾ ਟੀਕਾ ਹੈ ਤੇ ਬੜਾ ਮਹਿੰਗਾ ਮਹਿੰਗੇ ਦਰਤ ਪੈਸੇ ਕਰਕੇ ਨਹੀਂ ਕਿਉਂਕਿ ਇਹਨਾਂ ਗਹਿਰਾ ਹੈ ਉਹਨੂੰ ਪੜਨ ਵਾਸਤੇ ਵੀ ਸੰਤਿਆ ਲੈਣੀ ਪੈਂਦੀ ਹੈ ਭਾਈ ਸਾਹਿਬ ਸੰਤੋਖ ਸਿੰਘ ਦਾ ਟੀਕਾ ਉਹਨਾਂ ਨੇ ਸਭ ਤੋਂ ਪਹਿਲਾਂ ਇਹਦੇ ਅਰਥ ਉਹਨਾਂ ਪਹਿਲੀ ਵਾਰ ਇਹਦਾ ਅਰਥ ਕੀਤਾ ਸੀ ਸੋਚ ਦਾ ਅਰਥ ਸੁਚਮਤਾ ਇਸਨਾਨ ਅਸੀਂ ਦੇਖਨੇ ਆਗੇ ਤੇ ਉਹਨਾਂ ਨਾਲ ਕਿਹਾ ਸੀ ਵੀ ਜੇ ਮੈਂ ਇਹਦੇ ਵਿਚਾਰ ਅਰਥ ਕਰਾਂਗਾ ਮੈਂ ਫਿਰ ਵੀ ਬੇਨਤੀ ਕਰਾਂ ਜਿੰਨੀ ਕੁ ਸਮਝ ਪਈ ਮੈਂ ਓਨੇ ਅਰਥ ਕਰ ਰਿਹਾ ਪਰ ਪਲੀਜ਼ ਜੋ ਮੈਂ ਅਰਥ ਕਰਾਂਗਾ ਗੁਰਮਖੋ ਇਹਨੂੰ ਆਖਰੀ ਸੱਚ ਮਤ ਸਮਝਿਓ ਕਿਉਂਕਿ ਜਪਜੀ ਸਾਹਿਬ ਸਾਰਾ ਤਾਂ ਬਾਬਾ ਜੀ ਦਾ ਆਪਣਾ ਅਨੁਭਵ ਹੈ ਸਾਡੀ ਤਾਂ ਵਿਰਤੀ ਏ ਕਿ ਸੁਣ ਗੱਲਾਂ ਆਕਾਸ਼ ਕੀ ਕੀਟਾਂ ਹੀ ਰੀਸ ਹੁਣ ਇੱਥੇ ਜਿਹੜਾ ਸੋਚਾ ਹੈ ਪਹਿਲਾਂ ਉਹ ਕਹਿੰਦੇ ਸਨ ਜੇ ਇਹਦੇ ਅਰਥ ਸੋਚ ਵਿਚਾਰ ਕਰਾਂਗੇ ਤੇ ਸਹਿਸ ਸਿਆਣਪਾਂ ਜਿਹੜਾ ਲਬਜ ਆ ਗਿਆ ਵਿੱਚ ਆ ਜਾਂਦੀ ਹੈ ਸਿਆਣਾ ਬੰਦਾ ਚਲਾਕੀ ਵਾਲਾ ਸੋਚਦਾ ਹੁਣ ਇੱਥੇ ਸੋਚਾ ਦਾ ਅਰਥ ਉਹਨਾਂ ਕੀਤਾ ਸੁਚਮਤਾ ਸ਼ੁੱਧਤਾ ਇਸ਼ਨਾਨ ਸੋਚਾ ਗੁਰਮੁਖੋ ਧਿਆਨ ਦੇ ਆਜੇ ਪਹਿਲਾਂ ਹੋ ਗਿਆ ਸੋਚਾ ਇਹਦਾ ਹੋ ਗਿਆ ਇਸ਼ਨਾਨ ਅਗਲਾ ਲਫ਼ਜ਼ ਸੋਚ ਹੁਣ ਇਸ ਸੋਚ ਦਾ ਅਰਥ ਇਸ਼ਨਾਨ ਨਹੀਂ ਪਹਿਲਾ ਹੈ ਸੋਚ ਇਹਦਾ ਅਰਥ ਹੋ ਗਿਆ ਇਸ਼ਨਾਨ ਸੋਚ ਦਾ ਅਰਥ ਇੱਥੇ ਦੀ ਸੁਚਮਤਾ ਇੱਥੇ ਸਰੀਰ ਦੀ ਸੁਚਮਤਾ ਨਹੀਂ ਇਹਦੇ ਅਰਥ ਨੇ ਸੋਚੈ ਸੋਚ ਨਾ ਹੋਵਈ ਇਸ਼ਨਾਨ ਕਰਨ ਦੇ ਨਾਲ ਕੇਵਲ ਪਿੰਡਾਂ ਤੋਂ ਦੇ ਨਾਲ ਕੇਵਲ ਬਾਹਰ ਦੇ ਪਾਣੀ ਨੂੰ ਵਰਤਨ ਨਾਲ ਤੇਰਾ ਅੰਦਰ ਸੁੱਚਾ ਨਹੀਂ ਹੋ ਸਕਦਾ ਕਿਉਂ ਜੀ ਜੇ ਜੇਦਰਥ ਜੇਕਰ ਸੋਚੀ ਇਸ਼ਨਾਨ ਕਰੇ ਤੂੰ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਲੱਖ ਵਾਰ ਜੇ ਤੂੰ ਲੱਖਾਂ ਵਾਰੀ ਵੀ ਪਿੰਡੇ ਤੇ ਪਾਣੀ ਪਾਈ ਜਾਏ ਤੇ ਕਹੇ ਮੈਂ ਸੁੱਚਾ ਹੋ ਜਾਗਾ ਲੱਖਾਂ ਵਾਰੀ ਇਸ਼ਨਾਨ ਕਰਨ ਨਾਲ ਵੀ ਤੇਰਾ ਅੰਦਰ ਸੁੱਚਾ ਨਹੀਂ ਹੋਣਾ ਦੂਜੀ ਗੱਲ ਜਿਹੜੇ ਇਹਦੇ ਅਰਥ ਇਹ ਵੀ ਕੀਤੇ ਗਏ ਕਿ ਲੱਖਾਂ ਵਾਰੀ ਸੋਚਣ ਦੇ ਨਾਲ ਤੇਰੀ ਸਮਝ ਗੱਲ ਨਹੀਂ ਪੈਣੀ ਜੇ ਲੱਖਾਂ ਵਾਰੀ ਤੂੰ ਸਮਝ ਲੈ ਪਰ ਮੈਂ ਫਿਰ ਬੇਨਤੀ ਕਰਾਂ ਕਿ ਹਿੰਦੁਸਤਾਨ ਵਿੱਚ ਬਹੁਤ ਜ਼ਿਆਦਾ ਇਹ ਪ੍ਰਚਲਿਤ ਸੀ ਕਿ ਕਰਮ ਜਿਹੜੇ ਮਰਜ਼ੀ ਕਰੀ ਜੋ ਇਸ਼ਨਾਨ ਕਰੋ ਤੇ ਪਾਪ ਉਤਰ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਨੇ ਇਸ਼ਨਾਨ ਨੂੰ ਬੜੀ ਮਹੱਤਤਾ ਦਿੱਤੀ ਦੇਖੋ ਇੱਕ ਪਾਸੇ ਬਾਬਾ ਜੀ ਕਹਿੰਦੇ ਨੇ ਉਠ ਇਸ਼ਨਾਨ ਕਰੋ ਪਰਭਾਤੇ ਸੋਏ ਘਰ ਆਰਾਦੇ ਉਦਮ ਕਰੇ ਭਲਕੇ ਪਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਬਾਬਾ ਜੀ ਸ਼ਬਦ ਵਰਦੇ ਆ ਕਿ ਚੌਥਾ ਪੈਰ ਸਭਾਂ ਕੈ ਸੁਰਤਿਆ ਉਪਜੈ ਚਾਓ ਤਿਨਾ ਦਰਿਆਵਾਂ ਸਿਓ ਦੋਸਤੀ ਮਨ ਮੁਖ ਸਚਾ ਨਾਉ ਪਰ ਬਾਬਾ ਜੀ ਇਹ ਵੀ ਭਾਈ ਸਾਹਿਬ ਕਹਿੰਦੇ ਆ ਗੁਰਸ਼ਿਕ ਭਲਕੇ ਉੱਠਕਰ ਅੰਮ੍ਰਿਤ ਵੇਲੇ ਸਰ ਨਾ ਬੰਦਾ ਮੇਰੇ ਕਹਿਣ ਤੋਂ ਮੁਰਾਦ ਇਹ ਨਹੀਂ ਕਿ ਹਣ ਇਹ ਸੋਚਿਆ ਸੋਚਨਾ ਆ ਗਿਆ ਤੇ ਆਪਾਂ ਰਹਿਤ ਵਾਲਾ ਇਸ਼ਨਾਦ ਵੀ ਛੱਡ ਕੇ ਚਲੇ ਜਾਣ ਮੇਰੀ ਬੇਨਤੀ ਜੇ ਮੰਨ ਲੋ ਅੰਦਰ ਮਲੀਨ ਮੈਲ ਸੂਖਸ਼ਮ ਹੈ ਸੂਖਸ਼ ਮੈਲ ਸਥੂਲਤਾ ਨਾਲ ਛੇਤੀ ਨਹੀਂ ਲੈਂਦੀ ਹਾਲਾਂ ਇਸ ਬਚਨ ਦਾ ਅੱਗੇ ਜਾ ਕੇ ਆਵੇਗਾ ਭਰੀਏ ਖੱਤ ਪੈਰ ਤਨ ਤੇ ਉੱਥੇ ਫਿਰ ਵਿਆਖਿਆ ਹੈ ਕਿ ਇੱਥੇ ਗੁਰੂ ਜੀ ਕਹਿ ਰਹੇ ਆ ਜਿਹੜਾ ਸੁਖਮਨੀ ਸਾਹਿਬ ਵਿੱਚ ਹੈ ਸੋਚ ਕਰੇ ਦਿਨਸ ਅਰ ਰਾਤ ਮਨ ਕੀ ਮੈਲ ਨਾ ਤੰਤੇ ਜਾਤ ਇਸ਼ਨਾਨ ਸੋਚੈ ਸੋਚ ਨਾ ਹੋਵੇ ਬਾਹਰ ਦੀ ਸੁਚਮਤਾ ਨਾਲ ਮਾਨਸਿਕ ਫੁਰਨਿਆਂ ਦੀ ਸੁਚਮਤਾ ਨਹੀਂ ਆਉਣੀ ਇਸੇ करके ਜਿਹੜਾ बार ਮੁਕੀ ਤਨ ਦਾ ਇਸ਼ਨਾਨ ਕਰਦਾ ਹੈ ਮਾਨਸਿਕ ਤੌਰ ਤੇ ਵਾਸ਼ਨਾ ਨਾਲ ਪਲੀਤ ਹੋਇਆ गुरु ਹੈ ਗੁਰੂ ने ਸਾਹਿਬ ਨੇ ਉਹਦੇ ਬਾਰੇ ਬੜੇ ਪਰਮਾਨਦ ਦਿੱਤੇ ਅਸੀਂ ਬਾਬਾ ਜੀ ਦਾ ਇੱਕ ਬਚਨ ਪੜ੍ਹਦੇ ਹਾਂ ਅੰਤਰ ਮੈਲ ਜੇ ਤੀਰਥ ਨਾ ਵੈ ਤਿਸ ਬੈਕੁੰਠ ਨਾ ਜਾਣਾ ਲੋਕਪਤੀ ਨਾ ਕਚੂ ਨਾ ਹੋਵੈ ਨਾ ਹੀ ਰਾਮ ਆਣਾ ਪੁਜੋ ਰਾਮ ਏਕੀ ਗੁਰ ਕੀ ਸੇਵਾ ਜਲ ਕੇ ਮੱਜਨ ਜੇ ਗਤ ਹੋਵੇ ਨਿਤ ਨਿਤ ਲੱਖਾਂ ਵਰੀ ਤੂੰ ਨਾਲ ਹੈ ਨਿਤ ਨਿਤ ਮੈਂਡਕ ਨਾਵੇ ਜੈਸੇ ਮੈਂਡਕ ਤੈਸੇ ਹੋਇਨਰ ਫਿਰ ਫਿਰ ਜੁਨੀ ਆਵੇ ਗੁਰੂ ਸਾਹਿਬ ਕਹਿੰਦੇ ਨੇ ਕਈ ਵਰੀ ਤੀਰਤ ਤੇ ਗਿਆ ਹੋਇਆ ਬੰਦਾ ਵੀ ਪਲੀਤ ਹੋ ਕੇ ਆ ਜਾਂਦਾ ਜਾਂ ਤੀਰਤ ਤੇ ਨਾਵਨ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਥੇ ਮਨ ਤੇ ਤਨ ਦੋਨਾਂ ਨੂੰ ਹਿਸ਼ਾਰੀ ਲੱਗੀ ਹੈ ਜੀ ਮਨ ਵਿੱਚ ਤਨ ਵਿੱਚ ਜਿਸ ਦੇ ਮਨ ਵਿੱਚ ਖੋਟ ਉਹਦੇ ਤਨ ਚੋਂ ਚੋਰ ਕਦੀ ਜਾ ਹੀ ਨਹੀਂ ਸਕਦੇ ਮਨ ਜੇ ਮੈਲਾ ਹੈ ਤੇ ਅੱਖਾਂ ਸੁਚੀਆਂ ਹੋ ਜਾਣਗੀਆਂ ਮਨ ਮੈਲਾ ਸਭ ਕੁਝ ਮੈਲਾ ਇਹ ਗੱਲ ਅਜ ਗੁਰੂ ਜੀ ਕਰ ਰਿਹਾ ਵੀ ਕੂੜ ਦੀ ਪਾਲ ਕਿਵੇਂ ਟੁੱਟੇ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਭੌ ਲੱਤੀ ਨਾਤਿਆਂ ਦੋ ਭੌ ਚੜੀਐਸ ਹੋਰ ਬਾਹਰ ਧੋਤੀ ਤੁੰਬੜੀ ਅੰਦਰ ਵੇਸ਼ਨ ਕੋਰ ਜਿੰਨਾ ਮਰਜੀ ਲੋਕੀ ਅਸਰ ਤੀਰਥ ਨਾਈ ਕੌਰਾ ਪੰ ਤਉ ਨਾ ਜਾਈ ਗੁਰਮਤ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਤੂੰ ਬੰਦੇ ਦੇ ਸ਼ਰੀਰ ਕੀ ਇਸ਼ਨਾਨ ਨੂੰ ਮਹੱਤਤਾ ਦੇ ਰਿਹਾ ਉਹਨੂੰ ਕਿਉਂ ਨਹੀਂ ਸਮਝਾਂਦਾ ਪਿਆ ਭਲਿਆ ਕਿ ਤੇਰਾ ਅੰਦਰ ਤਾਂ ਸੁੱਚਾ ਹੋਵੇਗਾ ਜੇ ਰੱਬ ਦੀ ਇਬਾਦਤ ਕਰੇਗਾ ਤਾਂ ਇੱਥੇ ਸਤਗੁਰੂ ਕਹਿ ਰਿਹਾ ਸੋਚੈ ਸੋਚ ਨਾ ਹੋਵਈ ਸ਼ਰੀਰਿਕ ਸੁਚਮਤਾ ਨਾਲ ਮੈਂ ਫਿਰ ਅਰਜ਼ ਕੀਤੀ ਦੂਜੇ ਸੋਚ ਦੇ ਅਰਥ ਅੰਤਰਾਤਮੇ ਨਾਲ ਨੇ ਸੋਚੈ ਸੋਚ ਨਾ ਹੋਵਈ ਬਾਹਰ ਦੀ ਸੁੱਚਮਤਾ ਨਾਲ ਤੇਰੇ ਅੰਦਰ ਨੇ ਸੁਚਾ ਨਹੀਂ ਕੋਣਾ ਜੇ ਸੋਚੀ ਲੱਖ ਵਾਰ ਜੇ ਲੱਖਾਂ ਵਰੀ ਤੂੰ ਇਸ਼ਨਾਨ ਕਰ ਲੈ ਅਗਲਾ ਬਚਨ ਚੁੱਪੈ ਇੱਥੇ ਵੀ ਪੱਪੇ ਤੇ ਦੁਲਾਵਾਂ ਨੇ ਚੁੱਪੈ ਇੱਥੇ ਚੁੱਪੈ ਦਾ ਅਰਥ ਜ਼ਬਾਨ ਦੀ ਚੁੱਪ ਮੋਨੀ ਅੱਗੇ ਸ਼ਬਦ ਹੈ ਚੁੱਪ ਇਸ ਚੁੱਪ ਦਾ ਅਰਥ ਮਨ ਦੀ ਸ਼ਾਂਤੀ ਮੈਂ ਤਾਂ ਕਿਹਾ ਜੀ ਇਸ ਗੱਲ ਨੂੰ ਫਿਰ ਧਿਆਨ ਨਾਲ ਸੁਣਿਓ ਪਹਿਲਾ ਸੋਚ ਦਾ ਸੰਬੰਧ ਸਕਿਨ ਨਾਲ ਹੈ ਬਾਡੀ ਨਾਲ ਤੇ ਜਿਹੜਾ ਦੂਜਾ ਸ਼ਬਦ ਸੋਚ ਆਇਆ ਉਹਦਾ ਸੰਬੰਧ ਮਨ ਨਾਲ ਹੈ ਹੁਣ ਅੱਗੇ ਸ਼ਬਦ ਆਇਆ ਚੁੱਪ ਹੈ ਦਾ ਅਰਥ ਹੈ ਜੀ ਜ਼ਬਾਨ ਦੀ ਚੁੱਪ ਮੋਨੀ ਹੋ ਜਾਣਾ ਬੋਲਣਾ ਨਹੀਂ ਚੁੱਪ ਨਾ ਹੋ ਫਿਰ ਬੇਨਤੀ ਹੈ ਕਿ ਤੇਰੀ ਜ਼ਬਾਨ ਦੀ ਖਮੋਸ਼ੀ ਨਾਲ ਮਨ ਨੇ ਚੁੱਪ ਨਹੀਂ ਹੋਣਾ ਤੂੰ ਚੁੱਪ ਕਰਕੇ ਬੈਠਾ ਰਹੋ ਮਨ ਤਾਂ ਗੱਲਾਂ ਕਰ ਜਾਂਦਾ ਮਨ ਨਹੀਂ ਚੁੱਪ ਹੋਣਾ ਚੁੱਪ ਕਰਨਾ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲੇਵ ਤਾਰ ਜੇ ਲਾਏ ਰਹਾ ਇਹਦਾ ਸਿੱਧਾ ਅਰਥ ਜੀ ਲੇਵ ਸ਼ਬਦ ਬੜੇ ਕਮਾਲ ਦਾ ਹੈ ਸਾਡੇ ਅੰਦਰ ਵਰਦਿਕ ਹੈ ਲੇਵ ਝੂਠੀ ਵੀ ਹੁੰਜੀਏ ਤੇ ਲੇਵ ਸੱਚੀ ਵੀ ਹੁੰਦੀ ਹੈ ਇਹ ਨੂੰ ਸੁਣਿਓ ਤਾਰ ਲੱਭ ਜਾਇਆ ਤਾਰ ਦਾ ਅਰਥ ਕਰਦੇ ਆ ਇੱਕ ਰਜਤ ਧਾਰ ਸ਼ਬਦ ਨਹੀਂ ਧਾਰ ਤੇਲ ਦੀ ਧਾਰ ਨਰਵਿਗਣ ਜਿਹਦੇ ਚ ਬਿਲਕੁਲ ਕੋਈ ਰੁਕਾਵਟ ਨਹੀਂ ਜੇ ਮੰਨ ਲਿਆ ਜਾਏ ਤੂੰ ਚੁੱਪ ਕਰਕੇ ਲਿਵ ਲਾ ਕੇ ਲਗਾਤਾਰ ਇਸ ਤਰ੍ਹਾਂ ਸਮਾਧੀ ਲਾ ਕੇ ਬਹਿ ਜਾਏ ਕਿ ਜਿਵੇਂ ਤੇਲ ਦੀ ਧਾਰ ਟੁੱਟਦੀ ਨਹੀਂ ਤੇਰੀ ਸਮਾਧੀ ਵੀ ਨਾ ਟੁੱਟੇ ਮੈਂ ਪਿਛਲੇ ਦਿਨੀ ਕਿਹਾ ਸੀ ਲਿਵ ਪਾਪ ਵੀ ਕਮਾਂਦੀ ਏ ਧਿਆਨ ਪਾਪ ਵੀ ਕਮਾਂਦਾ ਹੈ ਤੇ ਧਿਆਨ ਪੁੰਨ ਵੀ ਕਮਾਂਦਾ ਹੈ ਇਸ ਨੂੰ ਫਿਰ ਬੇਨਤੀ ਨੂੰ ਮੰਨ ਲਓ ਇੱਕ ਬੰਦਾ ਜ਼ਬਾਨ ਕਰਕੇ ਚੁੱਪ ਹੋ ਗਿਆ ਜੀ ਮੈਂ ਮੋਨੀ ਹਾਂ ਉਂਝ ਵੈਸੇ ਜ਼ਬਾਨ ਨਾਲ ਘੱਟ ਬੋਲਣ ਤੇ ਗੁਰੂ ਜੀ ਨੇ ਕਿਹਾ ਥੋੜਾ ਬੋਲਣ ਦੀ ਗੱਲ ਕਹੀ ਹਉ ਤਿਸ ਘੋਲ ਕਮਾਇਆ ਮਹਾਰਾਜ ਨੇ ਇਹ ਸ਼ਬਦ ਵਰਤੇ ਵੀ ਥੋੜਾ ਬੋਲਦਾ ਥੋੜਾ ਖਾਂਦਾ ਇਹ ਸਿੱਧੀ ਜੀ ਗੱਲ ਸੰਤ ਮਿਲੈ ਕਿ ਸੁਣੀਆਂ ਕਈ ਐ ਮਿਲੈ ਅਸੰਤ ਮਸ਼ਟ ਕਰ ਰਹੀ ਐ ਬਾਬਾ ਬੋਲਣਾ ਕਿਆ ਕਈ ਐ ਜੈਸੇ ਰਾਮਨਾਮ ਰਬ ਰਹੀ ਐ ਸੰਤਨ ਸੋਂ ਬੋਲੈ ਉਪਕਾਰੀ ਮੂਰਖ ਸੋਂ ਬੋਲੈ ਝੱਕ ਮਾਰੀ ਹੁਣ ਇਹ ਬੰਦਾ ਜ਼ਬਾਨ ਨਾਲ ਚੁੱਪ ਕਰੇ એનર્ਜੀ ਸੇਵ ਹੁੰਦੀ ਐ ਪਰ ਅਧਿਆਤਮਕ ਮੰਜ਼ਲ ਥੋੜਾ ਗੁਰੂ ਸਾਹਿਬ ਕਹਿੰਦੇ ਆ ਕਿ ਕਦੀ ਦੇਖੋ ਕਈ ਵਾਰੀ ਬੰਦਾ ਇਹ ਕਹਿ ਵੀ ਮੈਂ ਚੁੱਪ ਕਰ ਗਿਆ ਮੇਰਾ ਮਨ ਸ਼ਾਂਤ ਹੋ ਜਾਏ ਮੈਂ ਫਿਰ ਬੇਨਤੀ ਕਰਾਂ ਚੁੱਪ ਨਾਲ ਕੁਝ ਕੋ ਮਦਦ ਮਿਲਦੀ ਏ ਪਰ ਕੱਲੀ ਚੁੱਪ ਨਾਲ ਬ੍ਰਹਮ ਗਿਆਨ ਨਹੀਂ ਗੁਰੂ ਸਾਹਿਬ ਦਾ ਇੱਕ ਬਚਨ ਹੁੰਦਾ ਸਰਵਰ ਤਰਵਰ ਸਦੀਵ ਮੋਨ ਸਾਦੇ ਹੀ ਮਰਤ ਹੈ ਗੁਰੂ ਗੋਬਿੰਦ ਸਿੰਘ ਮਾਰਚ ਕਨੇ ਰੁੱਖ ਜਿਹੜੇ ਨੇ ਤਾਂ ਚੁੱਪ ਖਲੋਤੇ ਆ ਇਹ ਕਿਹੜੇ ਗੱਲਾਂ ਕਰਦੇ ਆ ਪਰ ਇਹਨਾਂ ਨੂੰ ਬ੍ਰਹਮ ਗਿਆਨ ਹੋ ਗਿਆ ਬੇਨਤੀ ਹੈ ਕਦੀ ਦੇਖਿਓ ਲੇਵ तार एक बगला एक बिल्ला एक बगयाड़ तिन ना बड़े सिरे दी कह मारे ने शब्द वरतिया, कल भी मैं क्यासी ठग दृष्ट बगगा लेब लागा सुनियो इस बिनती नु लाए रहा लेब तार ठग दृष्ट बग्गा लेब लागा बगले दी भी लेब लगी है किनारे ते बैठा ए उस मच्छी नु चंचल नु पता ही नहीं ਕਿਆ ਜਿਹੜਾ ਸਾਹਮਣੇ ਇੱਕ ਲੱਤ ਤੇ ਖਲੋਤਾ ਇਹ ਮੈਨੂੰ ਮਾਰਨ ਵਾਲਾ ਹੈ ਉਹਦੀ ਲਿਬ ਹੈ ਇਕਾਗਰਤਾ ਹੈ ਪਰ ਉਸਦੀ ਇਕਾਗਰਤਾ ਤੇ ਲਿਬ ਦੇ ਵਿੱਚ ਪਾਵ ਲੁਕਿਆ ਹੈ ਉਹਨੇ ਉਸ ਲਿਬ ਨਾਲ ਮੱਛੀ ਦਾ ਸ਼ਿਕਾਰ ਕਰਨਾ ਹੈ ਬੰਦਾ ਭੇਖੀ ਬਣ ਜਾਏ ਮੋਨੀ ਬਣ ਜਾਏ ਲਿਬ ਲਾ ਕੇ ਬੈਠਾ ਰਹੇ ਤੇ ਜਦੋਂ ਕੋਈ ਉਹਦੇ ਕੋਲ ਸ਼ਰਧਾਲੂ ਆ ਜਾਏ ਉਹਨੂੰ ਇਸ ਤਰ੍ਹਾਂ ਨਿਚੋੜ ਕੇ ਖਾ ਜਾਏ ਜਿਵੇਂ ਇੱਕ ਬਗੜਾ ਲਿਬ ਖਲਾ ਕੇ ਕਾਂਦਾ ਹੈ ਮਹਾਰਾਜ ਕਹਿੰਦੇ ਝੂਠ ਹੈ ਕਿਉਂਕਿ ਸੱਚੀ ਲਿਵਾ ਬਿਨ ਸੱਚੀ ਲਿਵ ਦੀ ਗੱਲ ਵੀ ਕੀਤੀ ਹੁਣ ਇੱਥੇ ਫਿਰ ਮੇਰੀ ਬੇਨਤੀ ਸੁਣਿਓ ਕਿ ਚੁੱਪ ਕਰਨਾ ਗੁਰੂ ਗੋਬਿੰਦ ਸਿੰਘ ਦਾ ਇੱਕ ਬਚਨ ਹੈ ਬਗੁੱਲਾ ਬਿੜਾਲ ਬ੍ਰਿਕ ਧਿਆਨੀ ਠਾਨੀਆਂ ਤਖੈ ਬਗਲਾ ਇਹ ਲਿਵ ਲਾ ਕੇ ਬੈੰਦਾ ਕਦੀ ਤੁਸੀਂ ਦੇਖੋ ਬਿੱਲਾ ਇਹ ਅਕਾਂਗਰੋ ਕੇ ਬੈਠਾ ਬਗਿਆੜ ਜਦੋਂ ਸ਼ਿਕਾਰ ਕਰਦਾ ਉਹਨੂੰ ਪਤਾ ਹੀ ਨਹੀਂ ਉਹਦੇ ਜਿੰਨੇ ਸ਼ਿਕਾਰ ਹੋਣਾ ਵੀ ਮੇਰੇ ਸਾਹਮਣੇ ਕੋਈ ਬੈਠਾ ਹੈ ਉਹਨਾਂ ਦੀ ਵੀ ਹੈ ਔਰ ਉਹਨਾਂ ਦੀ ਲਿਬ ਕਿਸੇ ਪਾਪ ਵਾਸਤੇ ਹੈ ਮੈਂ ਬੇਨਤੀ ਕੀਤੀ ਧਿਆਨ ਪਾਪ ਵੀ ਕਰਾ ਦਿੰਦਾ ਹੈ ਤੇ ਧਿਆਨ ਚ ਇਨੀ ਤਾਕਤ ਹੈ ਜੇ ਸਿੱਧੇ ਪਾਸੇ ਬੰਦਾ ਤੁਰ ਪਵੇ ਤੇ ਵੀ ਮਿਲਾ ਦਿੰਦਾ ਕਰਕੇ ਵਿਸ਼ਾ ਭੋਗਦਾ ਮੈਂ ਆਪ ਨੂੰ ਬੇਨਤੀ ਕਰਾਂ ਮਹਾਰਾਜ ਦੂਜੀ ਗੱਲ ਕਹਿੰਦੇ ਆ ਮੰਨ ਲਓ ਤੂੰ ਚੁੱਪ ਕਰ ਜਾ ਕਿ ਚੁੱਪ ਕਰਨ ਦੇ ਨਾਲ ਤੇਰਾ ਮਨ ਚੁੱਪ ਕਰ ਜਾਏਗਾ ਕਈ ਅਸੀਂ ਦੇਖਿਆ ਜੀ ਮੋਨ ਧਾਰਨ ਕਰਦੇ ਆ ਵਰਤ ਰੱਖਿਆ ਜਾਂਦਾ ਜਬਾਨ ਨਾਲ ਨਹੀਂ ਬੋਲਦੇ ਸਲੇਟ ਰੱਖੀ ਹੁੰਦੀ ਹੈ ਮੈਂ ਕਿਸੇ ਨੂੰ ਨਿੰਦ ਨਹੀਂ ਰਿਆ ਉਹ ਸਲੇਟ ਰੱਖ ਕੇ ਕਹਿ ਦਿੰਦੇ ਆ ਕਿ ਅੱਜ ਸਵੇਰੇ ਆਹ ਫਰੂਟ ਲੈਵੇਂ ਦੁਪਹਿਰ ਨੂੰ ਆਹ ਖਾਣ ਨੂੰ ਦਿਲ ਕਰਦਾ ਸ਼ਾਮ ਨੂੰ ਮੇਰਾ ਅਜੇ ਚੇਤੇ ਕਰਦਾ ਤੇ ਅਗਲਾ ਕਹਿ ਵੀ ਉਹ ਜ਼ਬਾਨ ਨਾਲ ਬੋਲ ਹੀ ਪਹੁੰਚ ਸਲੇਟ ਤੇ ਲਿਖ ਕੇ ਜਾਈ ਜਾਣਾ ਫੁਰਨੇ ਤੇ ਅੰਦਰ ਪੈਦਾ ਹੋਈ ਨੇ ਨਾ ਜ਼ਬਾਨ ਦੀ ਚੁੱਪ ਖੈ ਪਰ ਮਨ ਤਾਂ ਬੋਲ ਜਾ ਰਿਹਾ ਗੁਰਮਖੋ ਇਹ ਚੁੱਪ ਵਿੱਚ ਤਾਂ ਇੰਨਾ ਰੌਲਾ ਪਾਉਂਦਾ ਇਹ ਤਾਂ ਜ਼ਬਾਨ ਦੇ ਬੋਲਿਆਂ ਵੀ ਕੁਝ ਹੋਰ ਹੀ ਬੋਲੀ ਜਾਂਦਾ ਇਹ ਖੰਬੋਸ਼ ਨਹੀਂ ਹੁੰਦਾ ਗੁਰੂ ਸਾਹਿਬ ਨੇ ਵੇਖੋ ਪਹਿਲਾਂ ਦੱਸ ਰਹੇ ਇਹ ਸਾਧਨ ਲੋਕਾਂ ਨੇ ਅਪਣਾਏ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਬ ਤਾਰ ਇੱਕ ਤਾਰ ਸਮਾਧੀ ਲਾ ਲਾਂ ਭੁੱਖ ਨਾ ਇੱਥੇ ਵੀ ਨੰਨੇ ਨੂੰ ਕੰਨਾ ਨਹੀਂ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਇਹ ਤੀਸਰਾ ਬਚਨ ਇੱਥੇ ਬੇਨਤੀ ਜਿਹੜਾ ਸ਼ਬਦ ਭੁੱਖਿਆ ਆਇਆ ਹੈ ਇਸ ਦੇ ਕੁਝ ਅਰਥ ਸੱਜਣ ਕਰਦੇ ਆ ਭੁੱਖਿਆ ਦਰ ਤੇ ਤ੍ਰਿਸ਼ਨਾ ਅਦੀਨ ਤ੍ਰਿਸ਼ਨਾਦੀਨ ਪਰ ਗੁਰਮੁਖੋ ਇੱਥੇ ਭੁੱਖਿਆ ਦਾ ਅਰਥ ਹੈ ਵਰਤ ਰੱਖਣਾ ਇਸ ਕਾਰਨ ਕਈ ਵਾਰੀ ਕਈ ਬੰਦੇ ਆਪਣੇ ਸੰਸਾਰਿਕ ਪਦਾਰਥਾਂ ਲਈ ਚੰਦਰਾਇਣ ਵਰਤ ਰੱਖਦੇ ਆ ਮੈਂ ਇੰਨੇ ਵਰਤ ਰੱਖਾਂਗਾ ਮੇਰਾ ਇਹ ਬਿਜ਼ਨਸ ਚੱਲ ਜਾਏ ਗੁਰੂ ਸਾਹਿਬ ਕਹਿੰਦੇ ਨੇ ਮੰਨ ਲਿਆ ਜਾਏ ਕਿ ਤੂੰ ਵਰਤ ਰੱਖ ਕੇ ਇਸ ਵਾਸ਼ਨਾ ਨਾਲ ਵਰਤ ਰੱਖ ਰਿਹਾ ਕਿ ਮੈਨੂੰ ਆ ਕੁਝ ਮਿਲ ਜਾਏ ਤੇ ਮਹਾਰਾਜ ਕਹਿੰਦੇ ਨੇ ਉਸ ਵੀ ਤੇਰੀ ਭੁੱਖ ਨਹੀਂ ਉਤਰਨੀ ਜੇ ਸਾਰੀਆਂ ਪੁਰੀਆਂ ਦਾ ਜਿੰਨੇ ਖੰਡ ਬ੍ਰਹਿਮੰਡ ਨੇ ਸਾਰੇ ਪਦਾਰਥ ਤੇਰੇ ਘਰ ਵਿੱਚ ਆਜਨ ਭਲਿਆ ਇਹਨੇ ਲੈ ਕੇ ਵੀ ਫਿਰ ਤੂੰ ਭੁੱਖੇ ਦਾ ਭੁੱਖਾ ਹੀ ਰਹਿਣਾ ਹੈ ਮੈਂ ਫਿਰ ਬੇਨਤੀ ਕਰਾਂਗਾ ਇੱਥੇ ਜਿਹੜਾ ਭੁਖ ਲਫ਼ਜ਼ ਹੈ ਨਾ ਇਹਦੇ ਇਹਦੇ ਫਿਰ ਅਰਥ ਸਮਝੋ ਮੈਂ ਰਿਪੀਟ ਕਰ ਲਗਾ ਅਰਥ ਪਹਿਲਾਂ ਮੈਂ ਅਰਥ ਕੀਤਾ ਸੋਚੈ ਦਾ ਅਰਥ ਸਰੀਰਿਕ ਇਸ਼ਨਾਨ ਤੇ ਸੋਚ ਦੂਜੇ ਲਫ਼ਜ਼ ਦਾ ਅਰਥ ਅੰਦਰ ਦੀ ਸੁਚਮਤਾ ਬਾਹਰ ਦੀ ਸੁਚਮਤਾ ਨਾਲ ਅੰਦਰ ਸੁਚਾ ਨਹੀਂ ਹੋਣਾ ਫਿਰ ਦੂਜੀ ਤੁਕ ਚ ਅਸੀਂ ਲਿਆ ਚੁੱਪ ਹੈ ਇਹਦਾ ਅਰਥ ਜ਼ਬਾਨ ਦੀ ਚੁੱਪ ਚੁੱਪ ਨਾ ਹੋਵੀ ਇਹਦਾ ਅਰਥ ਮਨ ਨੇ ਨਹੀਂ ਸ਼ਾਂਤ ਹੋਣਾ ਇਸ ਚੁੱਪ ਦਾ ਅਰਥ ਸ਼ਾਂਤੀ ਮਨ ਦੀ ਪੀਸ ਆਫ ਮਾਈਂਡ ਜੀ ਨੂੰ ਕਹਿੰਦੇ ਚੁੱਪ ਹੋ ਜਾਣਾ ਹੁਣ ਪਹਿਲਾ ਸ਼ਬਦ ਆਇਆ ਭੁੱਖਿਆ ਇਹਦਾ ਅਰਥ ਹੈ ਭੁੱਖੇ ਰਹਿ ਕੇ ਤੇ ਅਗਲਾ ਬਚਨ ਹੈ ਭੁੱਖ ਨਾ ਉਤਰੀ ਇਹਦਾ ਅਰਥ ਹੈ ਮਨ ਦੀ ਭੁੱਖ ਨਹੀਂ है। ਫਿਰ ਸ਼ਬਦ ਜੀ ਪਹਿਲਾ ਇੱਕ ਇੱਕ ਕਰਮ ਕਾਂਡ ਦਾ ਜ਼ਿਕਰ ਹੈ ਦੂਜੇ ਸ਼ਬਦ ਵਿੱਚ ਗੁਰਦੇਵ ਨੇ ਇਸ ਲਈ ਦੱਸਿਆ ਭੁੱਖਿਆ ਭੁੱਖ ਨਾ ਉਤਰੀ ਜੇ ਸਭ कुछ तेरे बैंक ਚ ਆ ਜਾ तेरी ਭੁੱਖ ਫਿਰ भी नहीं ਨਿਕਲਨੀ उस दिन मैं न्यू ਵੈਸਟਿਕ एक ਕੀਤੀ ਸੀ ਇਹ एक ਇੱਕ ਮਸਲ ਹੀ ਐਸਾ ਗੁਰੂ ਨਾਨਕ ਸਾਹਿਬ ਜੀ ਨੇ जी ਚਾਰ ਜਿਹੜੇ ਦੁੱਖ ਮੈਨ ਮੰਨੇ ਆ ਉਸ ਵਿੱਚ ਭੁੱਖ ਇੱਕ ਦੁੱਖ ਇਸ ਦੀ ਵਿਆਖਿਆ ਕੀਤੀ ਸੀ ਮੈਂ ਥੋੜਾ ਰਿਪੀਟ ਕਰਨ ਲੱਗਾ ਕੁਝ ਸੰਗਤ ਹੋ ਸਕਦਾ ਇੱਥੇ ਆਈਏ ਦੇਖੋ ਇੱਕ ਭੁੱਖ ਹੈ ਪਦਾਰਥਕ ਇੱਕ आजीब ਦੀ ਢਿੱਡ ਭਰਨ ਦੀ ਇੱਕ ਭੋਖ ਹੈ ਕਾਮੁਕ ਇੰਦਰੀ ਦੀ ਤੇ ਚੌਥੀ ਭੋਖ ਹੈ ਪਰਮਾਰਥ ਦੀ ਫਿਰ ਬੇਨਤੀ ਪਹਿਲੀ ਪਦਾਰਥਕ ਜਿਹਨੂੰ ਗੁਰੂ ਜੀ ਕਹਿੰਦੇ ਆ ਵੱਡੇ ਵੱਡੇ ਰਾਜਨ ਅਰ ਭੋਮਨ ਤਾਂ ਕਿ ਤ੍ਰਿਸ਼ ਨਾ ਬੂਜੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਜੀ ਇੰਨਾ ਕੁਝ ਲੈ ਪਰ ਬਿਸਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਣੀ ਉਹ ਧਿਆਨ ਭਰਮ ਨੇ ਸ਼ਾਂਤੀ ਨਹੀਂ ਹੁਣ ਇਹ ਪਦਾਰਥਕ ਭੁੱਖ ਹੈ ਇਹਨੇ ਹੋਰ ਵਦਨਾ ਹੋਰ ਵਦਨਾ ਦੂਸਰੀ ਮੈਂ ਬੇਨਤੀ ਕੀਤੀ ਸੀ ਕਿ ਇੱਕ ਭੁੱਖ ਹੈ ਆ ਆ ਜਿਹੜੀ ਜੀਬ ਦਾ ਟੁਕੜਾ ਹੈ ਨਾ ਜੀ ਇਹ ਵੀ ਉੱਥੇ ਕਿਹਾ ਸੀ ਸੱਚੀ ਮੁੱਚੀ ਇਹਦੀ ਭੁੱਖ ਨਹੀਂ ਜੇ ਜਾਂਦੀ ਇੰਨਾ ਕੁਝ ਚਖ ਚੁੱਕੀ ਹੈ ਇੰਨਾ ਕੋਈ ਸਵਾਦ ਲੈ ਚੁੱਕੀ ਮੈਂ ਉਸ ਦਿਨ ਕਿਹਾ ਸੀ ਇਹਦੇ ਸਵਾਦ ਪਿੱਛੇ ਆ ਸਾਡੇ ਤਰੇਮਨ ਦੀ ਦਿਉਰੀ ਵੀ ਡਾਕਟਰਾਂ ਕੋਲ ਜਾਂਦੀ ਇਹ 10 ਮਿੰਟ ਖਾਂਦੀ ਇਹ ਬੰਦਾ ਮਹੀਨਾ ਟੰਗਿਆ ਰਹਿਦਾ ਸ਼ੂਗਰ ਨਾਲ ਇਹ ਨਹੀਂ ਨਾ ਰਜਰੀ ਇਹਨੂੰ ਗੁਰੂ ਜੀ ਨੇ ਕਿਹਾ ਦਿਨ ਦਿਨ ਕਰਤ ਭੋਜਨ ਬੋ ਵਿੰਜਨ ਤਾਂਕੀ ਮਿਟੈ ਨਾ ਭੁੱਖਾ ਉਦਮ ਕਰੇ ਸਵਾਨ ਕੀ ਨਿਆਈ ਚਾਰੇ ਕੁੰਟਾਂ ਕੋਖਾ ਇਹ ਹੋ ਗਈ ਜੀ ਪੇਟ ਦੀ ਭੁੱਖ ਮੈਂ ਅਰਜ਼ ਕੀਤੀ ਭੁੱਖ ਸਰੀਰ ਦਾ ਇੱਕ ਸੁਭਾਅ ਹੈ ਇਹ ਰੱਬ ਦਾ ਇੱਕ ਦਿੱਤੀ ਹੋਇਆ ਦਾ ਭੁੱਖ ਪਰ ਅਗ ਬਣ ਜਾਏ ਤੇ ਤੀਸਰੀ ਭੁੱਖ ਹੈ ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਹਿ ਜੋਈ ਨਹੀਂ ਚੁੱਕੇ ਜਿਹਨੂੰ ਇਹ ਭੁੱਖ ਲੱਗੀ ਨਾ ਜਿੰਨਾ ਮਰਜੀ ਜ਼ੋਰ ਮਾਰ ਲੋ ਚੇਤੇ ਰੱਖਿਓ ਭਰ ਘਰਵਲ ਮੂੰਹ ਮਾਰਨ ਤੋਂ ਬਿਨਾ ਰਹਿ ਨਹੀਂ ਸਕਦਾ ਮਹਾਰਾਜ ਕਹਿੰਦੇ ਇਹ ਕੀ ਸਭ ਕੁਝ ਇਹ ਭੁੱਖਿਆ ਰਹਿ ਕੇ ਤੇਰੀ ਇਹ ਭੁੱਖ ਉਤਰ ਜਾਏਗੀ ਭੁੱਖ ਤੇ ਬੜੀ ਕਹਿੰਦਾ ਮੈਂ ਤੀਸਰੀ ਗੱਲ ਕਹੀ ਇਹ ਪਰਮਾਰਥਕ ਭੁੱਖ ਹੈ ਬਾਕੀ ਜਨੀਆਂ ਭੁੱਖਾਂ ਨੇ ਇਹਨਾਂ ਵਿੱਚ ਬੇਚੈਨੀ ਇਹਨਾਂ ਵਿੱਚ ਬਿਮਾਰੀ ਇਨਾਂ ਵਿੱਚੋਂ ਸੱਚਮੁੱਚ ਚਿੰਤਾ ਨਿਕਲਦੀ ਏ ਇੱਕ ਭੁੱਖੇ ਸੀ ਜਿਹੜੀ ਕਰੋੜਾਂ ਵਿੱਚੋਂ ਇੱਕ ਅੱਦੇ ਨੂੰ ਲੱਗਦੀ ਏ ਉਹ ਕਹੇ ਸੱਚੇ ਨਾਮ ਕੀ ਲੱਗ ਹੈ ਭੁੱਖ ਉਤ ਭੁੱਖੇ ਖਾਏ ਚਲਿਆ ਦੁਖ ਮਹਾਰਾਜ ਕਹਿੰਦੇ ਨੇ ਫਿਰ ਬੇਨਤੀ ਸੁਣਿਓ ਕਿਉਂਕਿ ਆਪਾਂ ਮੈਂ ਫਿਰ ਪ੍ਰਮਾਨ ਤਾਂ ਦੇ ਜਨਾ ਵੀ ਗੱਲ ਖੁੱਲ ਜਾਏ ਇੱਥੇ ਆ ਭੁੱਖਿਆਂ ਭੁੱਖ ਨਾ ਉਤਰੀ ਜੇ ਤੂੰ ਭੁੱਖਿਆ ਰਹਿ ਕੇ ਇਹ ਕਹੇ ਵੀ ਆ ਮੈਂ ਵਰਤਾ ਜਿ ਰੱਖ ਲਈ ਨਾ ਆ ਬਿਜ਼ਨਸ ਮੇਰਾ ਚੱਲ ਜਾਏ ਗੋਨੀ ਮੇ ਹੁਣ ਫਿਰ ਕੁਝ ਕਰਨਾ ਬਸ ਲੱਭਾ ਇਹਨਾ ਸੱਚੀ ਮੁੱਝ ਸਾਰੇ ਅਰਦਾਸ ਇਹ ਕਰਨੇ ਆ ਵੀ ਆ ਕੰਮ ਹੋ ਜਾਏ ਆ ਨਿਆਣੇ ਸੈੱਟ ਹੋ ਗਏ ਸਿੱਧੀ ਗੱਲ ਆ ਸੈੱਟ ਹੋ ਗਏ ਉਸ ਤੋਂ ਬਾਅਦ ਨਹੀਂ ਜੀ ਹੁਣ ਬਸ ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਹੈ ਚੇਤੇ ਰੱਖਿਓ ਪਾਤਰ ਬਦਲੀ ਜਾਂਦੇ ਆ ਖੇਚੋਥੀ ਖਲੋਤੀ ਪਹਿਲਾਂ ਪੁੱਤਰ ਤੀਨ ਉਂਗਲੀ ਲਾ ਕੇ ਜਾਂਦੇ ਸਾਂ ਖਿੱਚ ਸੀ ਖਾਏ ਇਹਨਾਂ ਦਾ ਕੋਈ ਬੰਜਾਏ ਅਗਾ दोते ਦੋਤੀਆਂ ਤੇ ਪੋਤੇ ਪੋਤੀਆਂ ਆ ਗਏ ਚਿਹਰੇ ਬਦਲ ਗਏ ਪਰ ਅੰਦਰ ਦੀ ਖੇਚੋ ਤੇ ਹੀ ਖਲੋਤੀ ਕੇ ਅੰਦਰ ਦੀ ਭੁੱਖ ਨਹੀਂ ਗਈ ਗੁਰੂ ਸਾਹਿਬ ਦੇ ਤੇ ਸ਼ਬਦ ਵਰਤ ਰਿਆ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਹੁਣ ਚੌਥਾ ਬਚਨ ਸਾਹਸ ਚਲੋ ਪਾਠ ਭਾਵੇਂ ਸਾਰੇ ਸੱਜਣ ਸਾਡੇ ਸਹਿਸ ਹੀ ਕਰਦੇ ਆ ਪਰ ਸਿਹਾਰੀ ਕੋਈ ਨਹੀਂ ਲੱਗੀ ਸਿੰਧਾ ਖੜਵਾ ਸਸਾ ਹਾ ਸਾਹਸ ਸਿਆਣਪਾਂ ਲੱਖ ਹਾਂ ਲੱਖ ਹੋ ਹੈ ਹੋਏ ਨਹੀਂ ਅਕਸਰ ਕਈ ਗੁਰਮਖ ਪਿਆਰੇ ਚਲੋ ਮੈਂ ਸ਼ਬਦ ਵਰਤਾਂ ਖਾਕੇ ਨੂੰ ਬੋਲਦੇ ਨਹੀਂ ਉਹ ਈੜੀ ਬੋਲੀ ਜਾਂਦੇ ਆ ਸਹਿ ਸਿਆਣਪਾਂ ਲੱਖ ਹੋਏ ਪਰ ਇੱਥੇ ਪਾਟ ਹੈ ਸਹਿਸ ਸਿਆਣਪਾਂ ਸਾਹਸ ਸਿਆਣਪਾਂ ਲੱਖ ਹੋ ਹੈ ਇਹਦਾ ਅਰਥ ਉਹ ਗਾ ਸਾਹਸ ਦਾ ਅਰਥ ਹਜ਼ਾਰ ਉਨ੍ਹੀ ਯਾਦ ਰੱਖਿਓ ਇੱਕ ਸਾਹਸ ਦਾ ਅਰਥ ਸਹਿਸਾ ਚਿੰਤਾ ਕਰਮੀ ਸਹਿਜ ਨਾ ਉਪਜੈ ਵਿਨ ਸਹਿਚ ਹਾਂ ਨਹੀਂ ਹਾਂ ਸਾਹਸ ਤਵ ਨੈਨ ਨਨ ਹੈ ਉਥੇ ਦਾ ਇਤਿਹਾਸ ਇੱਥੇ ਗੁਰੂ ਜੀ ਕਹਿੰਦੇ ਆ ਸਾਹਸ ਸਿਆਣਪਾਂ ਹਜ਼ਾਰਾਂ ਸਿਆਣਪਾਂ ਬੰਦੇ ਕੋਲ ਹੁਣ ਚਲਾਕ ਹੋ ਲੱਖ ਹੋਖ ਹੈ ਫਿਰ ਹਜ਼ਾਰਾਂ ਤੋਂ ਅੱਗੇ ਲੱਖ ਇਹ ਸ਼ਬਦ ਸਿਆਣਪ ਨਾਲ ਇਹਦੇ ਸਿੱਧੇ ਅਰਥ ਹੋ ਗਿਆ ਕਿਸੇ ਬੰਦੇ ਕੁਲ ਹਜ਼ਾਰਾਂ ਤੇ ਲੱਖਾਂ ਸਿਆਣਪਾਂ ਹੋਣ ਇਹਨਾਂ ਚਲਾਕ ਹੋਵੇ ਜੀ ਪੁੱਛੋ ਕੁਝ ਨਾ ਤੇ ਬਾਬਾ ਜੀ ਕਹਿੰਦੇ ਨੇ ਸਿਆਣਪ ਨਾਲ ਦੁਨੀਆ ਠੱਗੀ ਜਾ ਸਕਦੀ ਸਾਹਸ ਸਿਆਣਪਾਂ ਲੱਖ ਹੋਵੇ ਤਾਂ ਦੇਰ ਦਿੱਤਾ ਤਾਂ ਨਹੀਂ ਕੰਨਾ ਨਹੀਂ ਲੱਗਾ ਫਿਰ ਬੇਨਤੀ ਹੈ ਜੀ ਸਾਹਸ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੇ ਨੰਨੇ ਨੂੰ ਵੀ ਕੰਨ ਨਾ ਚੱਲੇ ਪਾਠਨੀ ਕਰਨਾ ਲੱਲੇ ਤੇ ਦੁਲਾਮਾਂ ਬੋਲਨੀਆ ਚੱਲੈ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਜੇ ਬੰਦਿਆ ਤੇਰੇ ਕੋਲ ਹਜ਼ਾਰਾਂ ਤੇ ਲੱਖਾਂ ਸਿਆਣਪਾਂ ਨੇ ਤੂੰ ਸਾਰੀ ਦੁਨੀਆ ਨੂੰ ਬੇਵਕੂ ਬਣਾ ਸਕਣਾ ਪਰ ਰੱਬ ਦੇ ਘਰ ਵਿੱਚ ਨਾ ਤੇਰੀ ਚਲਾਕੀ ਜਾਣੀ ਐ ਨਾ ਤੇਰੀ ਸਿਆਣਪ ਜਾਣੀ ਐ ਸਭ ਕੋਈ ਧਰਿਆ ਤਰਾਇਆ ਰਹਿ ਜਾਣਾ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਇਹ ਹੋ ਗਈਆਂ ਚਾਰ ਤੁਕਾਂ ਇਹ ਮਾਰੇ ਨੇ ਕਿਹਾ ਵੀ ਸਾਡੇ ਤੋਂ ਪਹਿਲਾਂ ਇਹ ਯਤਨ ਲੋਕ ਕਰ ਰਹੇ ਆ ਮਨ 'ਚ ਹੈ ਮੈਂ ਸਚਿਆਰ ਪੱਤੇ ਪਹੁੰਚਾਂ ਪਰ ਜਿਹੜਾ ਤਰੀਕਾ ਅਪਣਾ ਰਹੇ ਆ ਦੁੱਖ ਇਸ ਚੀਜ਼ ਦਾ ਇਹਨਾਂ ਦਾ ਮੰਜ਼ਿਲ ਕੋਈ ਨਹੀਂ ਮਿਲ ਰਹੀ ਬਾਬਾ ਜੀ ਨੇ ਫਿਰ ਸ਼ਬਦ ਸੋਚੈ ਸੋਚਣਾ ਹੋ ਬਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋ ਜੇ ਲਾਏ ਰਹਾ लिवतार ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਪੁਰੀਆਂ ਦੇ सब कुछ ਕੁਝ ਸਾਹ ਸਿਆਣਪਾਂ ਲਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ ਹੁਣ ਜਿਹੜਾ ਸਵਾਲ ਮੇਰੇ ਤੇਰੇ ਵਰਗਾ ਕੋਈ ਕਰ ਲਿੰਦਾ ਬਾਬਾ ਜੀ ਨੂੰ ਵੀ ਤੁਸੀਂ ਆ ਵੀ ਖੰਡਨ ਕਰਤਾ ਇਸ਼ਾਨਾ ਵੀ ਖੰਡਨ ਕਰਤਾ ਮੋਹਨ ਵੀ ਖੰਡਨ ਕਰਤਾ ਵਰਤ ਵੀ ਖੰਡਨ ਕਰ ਦਿੱਤੇ ਸਿਆਣਪ ਵੀ ਇਥੋਂ ਤੱਕ ਸਾਰੇ ਖੰਡਨ ਕਰ ਜਾਂਦੇ ਆ ਖੰਡਨ ਕਰਨਾ ਸੌਖਾ ਹੁਣ ਅਗਲਾ ਸਵਾਲ ਸੀ ਵੀ ਜੇ ਇਹ ਚਾਰ ਤਰੀਕੇ ਨਹੀਂ ਤੇ ਤੁਹਾਡੇ ਕੋਲ ਕੀ ਇਹ ਲੋਕਾਂ ਨੂੰ ਦੇਣ ਲਈ ਤੁਸੀਂ ਕੀ ਰਸਤਾ ਦਿੰਦੇ ਹੋ ਫਿਰ ਅੱਗੇ ਗੁਰਦੇਵ ਬੋਲਦੇ ਆ ਇਹ ਤੇਰੇ ਮਨ ਚ ਸਵਾਲ ਉੱਠਣਾ ਸੀ ਤੇ ਗੁਰੂ ਸਾਹਿਬ ਨੇ ਆਪੇ ਕੁਐਸਚਨ ਪੈਦਾ ਕਰ ਦਿੱਤਾ ਕਿਵ ਸਚਿਆਰਾ ਹੋਈਏ ਗੁਰਮ ਕੋ ਇੱਥੇ ਹੋ ਵੀ ਨਹੀਂ ਆਇਆ ਉੱਤੇ ਜਿੰਨੇ ਸੀ ਪੜਨੇ ਹੋ ਵੀ ਆਇਆ ਇੱਥੇ ਈੜੀ ਨੂੰ ਬਿਹਾਰੀ ਲੱਗੀ ਏ ਐੜੇ ਤੇ ਦੁਲਾਵਾਂ ਨੇ ਕਿਵ ਸਚਿਆਰਾ ਹੋਈ ਏ ਕਿਵ ਕੂੜਾ ਟੁੱਟਾ ਗੁਰਮਖੋਟ ਟੈਂਕਾ ਨਹੀਂ ਬੋਲਣਾ ਟੁੱਟਾ ਨਹੀਂ ਬੋਲਣਾ ਮੈਂ ਇਹ ਨਹੀਂ ਆਪਜੀ ਲਈ ਕਹਿ ਰਿਹਾ ਤੁਸੀਂ ਤੇ ਪਾਰ ਰੋਜ਼ ਕਰਦੇ ਕਹੋਗੇ ਵੀ ਇਹ ਸਾਨੂੰ ਕਿ ਸਮਝਾਂਦਾ ਇੰਨੇ ਸਾਲ ਹੋ ਗਏ ਅਕਸਰ ਕਈ ਵਾਰੀ ਨਵੇਂ ਪੁਰਾਣੀਆਂ ਨੂੰ ਸਮਝ ਨਹੀਂ ਪੈਂਦੀ ਟੇਪ ਤੋਂ ਸੁਣਿਆ ਹੁੰਦਾ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਤੱਤਾ ਲੱਗਾ ਕਿ ਟੈਂਕਾ ਲੱਗਾ ਉਹ ਟੁੱਟੇ ਪੜੀ ਜਾਂਦੇ ਇੱਥੇ ਹੈ ਕਿਵ ਸਚਿਆਰਾ ਹੋਈ ਐ ਕਿਵ ਕੂੜਾ ਟੁੱਟੈ ਪਾਲ ਕਿਵ ਕਿਵ ਦਰਤ ਕਿਵੇਂ ਇੱਕ ਹੋਰ ਜੀ ਆ ਜਿਹੜਾ ਸ਼ਬਦ ਕਹੇਵੇ ਨਾ ਇਹ ਪੁਰਾਣੀ ਪੰਜਾਬੀ ਸੀ ਸਾਡੀ ਮੈਂ ਕਿ ਦਿਨ ਬੇਨਤੀ ਕੀਤੀ ਜਿਹੜੀ ਆ ਪੰਜਾਬੀ ਅਸੀਂ ਬੋਲਨੇ ਆ ਉਹ ਨਹੀਂ ਮਿਲੇਗੀ ਜ਼ਿਆਦਾ ਇੱਚ ਇਹ ਸ਼ਬਦ ਅਸੀਂ ਵਰਤਨੇ ਕਿਉਂ ਤੇ ਮੈਂ ਅੱਗੇ ਅਰਜ਼ ਕਰਾਂਗਾ ਕਿਉਂ ਸ਼ਬਦ ਨਵੀਨ ਪੰਜਾਬੀ ਵਿੱਚੋਂ ਸੀ किव कर ਆਖਾਂ ਕਿਵਸਾ ਲਾਹੀ ਕਿਉ ਵਰਨੀ ਕਿਵ ਜਾਣਾ ਮਾਰੇ ਦੋਵੇਂ ਹੁਣ ਆਪਾਂ ਕਿਵ ਜੇਵ ਤਿਵ ਿਵ ਇਹ ਲਫ਼ਜ਼ ਸਾਡੀ ਬੋਲੀ ਚ ਨਹੀਂ ਹੁੰਦੇ ਜਿਵੇਂ ਲਫ਼ਜ਼ ਵਰਤ ਲੈਨੇ ਪਰ ਇੱਥੇ ਮਹਾਰਾਜ ਕਹਿੰਦੇ ਕਿਵ ਦਰ ਤੇ ਕਿਵੇਂ ਕਿਸ ਤਰ੍ਹਾਂ ਸਚਿਆਰਾ ਦਾ ਅਰਥ ਅੰਦਰੋਂ ਸਚਿਆਰ ਕਿਵੇਂ ਹੋਵਾ ਖਾਲਸਾ ਜੀ ਸੱਚੀ ਮੁੱਚੀ ਜਿਓ ਨਿਰਮਲ ਬਾਹਰੋਂ ਨਿਰਮਲ ਜੀ ਨੂੰ ਗੁਰੂ ਅਮਰਦਾਸ ਕਹਿੰਦਾ ਮੈਂ ਕਿਵੇਂ ਬਨਣਾ ਸਾਰੀ ਬਾਣੀ ਚ ਯੋਰ ਦਿੱਤਾ ਕਿਵ ਸਚਿਆਰਾ ਹੋਈਐ ਸਾਨੂੰ ਦਸ ਉੱਤੇ ਖੰਡਨ ਕਰ ਦਿੱਤਾ ਚਾਰ ਗੱਲਾਂ ਦਾ ਕਿਵ ਕੂੜੈ ਟੁੱਟੈ ਪਾਲ ਕੂੜੈ ਦਾ ਅਰਥ ਝੂਟ ਝੂੜਦਰ ਤਖੰਮੈ ਟੁੱਟੈ ਦਰ ਤੇ ਖਤਮ ਹੋ ਜਾ ਟੁੱਟ ਜਾ ਪਾਲ ਦਾ ਅਰਥ ਕੰਧ ਕਿਵੇਂ ਸਚਿਆਰ ਹੋਈਏ ਸਾਡੇ ਤੇ ਪ੍ਰਮਾਤਮਾ ਦੇ ਵਿਚਾਰ ਜਿਹੜੀ ਕੰਧ ਕਿਵੇਂ ਟੁੱਟੇ ਹੁਣ ਮਹਾਰਾਜ ਪਰ ਅੱਗੇ ਉੱਤਰ ਦਿੰਦਿਆ ਹੁਕਮ ਰਜ਼ਾਈ ਚਲਣਾ ਨਾਣੇ ਨਾਲ ਕੈ ਨੰਨੇ ਨਾਲ ਨਹੀਂ ਚਲਣਾ ਨਹੀਂ ਚਲਣਾ ਹੁਕਮ ਰਜ਼ਾਈ ਚਲਣਾ ਫਿਰ ਬੇਨਤੀ ਕਰ ਨੰਨਾ ਨਹੀਂ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਸਤਿਗੁਰੂ ਨੇ ਇੱਕ ਤੋਕ ਵਿੱਚ ਸਾਰੀ ਸਮੱਸਿਆ ਹੱਲ ਕਰ ਦਿੱਤਾ ਹੁਕਮ ਰਜ਼ਾਈ ਮੈਂ ਅੱਗੇ ਬੇਨਤੀ ਕੀਤੀ ਹੁਕਮ ਲਫ਼ਜ਼ ਅਰਬੀ ਵਿੱਚੋਂ ਹੈ ਜਦੋਂ ਕਿਸੇ ਨੂੰ ਹੁਕਮ ਪਾਉਣ ਲੱਗ ਪੈਂਦਾ ਤੇ ਗੁਰਮਖੋ ਉਹਦੇ ਜੀਵਨ ਚ ਰਜਾ ਵਾਪਰਦੀ ਵੈਸੇ ਰਜਾ ਦੇ ਅਰਥ ਸਭ ਨੇ ਸਮਾਨ ਅਰਥ ਕੀਤੇ ਆ ਰਜਾ ਦਾ ਅਰਥ ਵੀ ਹੁਕਮ ਕੀਤਾ ਉੰਜ ਰਜਾ ਦਾ ਅਰਥ ਪ੍ਰੇਮ ਸੁਣੋ ਇਸ ਬੇਨਤੀ ਨੂੰ ਹੁਕਮ ਰਜਾਈ ਚੱਲਣਾ ਜੋ ਪਰਮਾਤਮਾ ਦਾ ਹੁਕਮ ਵਰਤੇ ਉਹਦੇ ਤੇ ਖੁਜਤ ਕਰਨ ਦੀ ਥਾਂ ਉਹਨੂੰ ਮੱਥਾ ਟੇਕ ਕੇ ਸੱਚੀ ਮੁੱਚੀ ਪ੍ਰੇਮ ਕਰਕੇ ਸਵੀਕਾਰ ਕਰ ਲੈਣਾ ਫਿਰ ਬੇਨਤੀ ਹੁਕਮ ਰਜਾਈ ਚੱਲਣਾ ਉਸਦੀ ਹੁਕਮ ਵਿੱਚ ਪ੍ਰੇਮ ਨਾਲ ਚੱਲ ਤੇ ਗੁਰੂ ਜੀ ਕਹਿੰਦੇ ਨਾਨਕ ਲਿਖਿਆ ਨਾਲ ਜਿਹੜਾ ਹੁਕਮ ਇਸ ਜੀਵ ਦੇ ਨਾਲ ਪ੍ਰਮਾਤਮਾ ਨੇ ਲਿਖ ਕੇ ਭੇਜਿਆ ਜਿਹੜਾ ਲਿਖਿਆ ਹੀ ਹੈ ਤੇ ਉਹ ਕਿਉਂ ਕਲਪ-ਕਲਪ ਕੇ ਤੂੰ ਰੱਬ ਨੂੰ ਲਾਹਮੇ ਦੇਈ ਜਾਂਦਾ ਉਹਨੂੰ ਮਿੱਠਾ ਕਰਕੇ ਮੰਨ ਲੈ ਤੇ ਕੂੜ ਦੀ ਪਾਲ ਟੁੱਟ ਜਾਏਗੀ ਇਸ ਬੇਨਤੀ ਨੂੰ ਥੋੜਾ ਜਿਹਾ ਫਿਰ ਸੁਣਿਓ ਮੈਂ ਅੱਗੇ ਆਪ ਨੂੰ ਅਰਜ਼ ਕੀਤੀ ਹੁਕਮ ਇੱਕ ਹੁਕਮ ਦੇ ਅਰਥ ਆਰਡਰ ਕੀਤੇ ਮੈਂ ਇਹ ਨਹੀਂ ਕੀਤੇ ਮੈਂ ਸੱਚੇ ਵੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੁਕਮ ਦੇ ਅਰਥ ਦੇਵੀ ਇਸ਼ਾ ਕਰ ਰਿਹਾ ਜੋ ਪਰਮਾਤਮਾ ਦੇ ਆਪਣੇ ਆਪੇ ਵਿੱਚੋਂ ਵਰਤਿਆ ਉੰਜ ਵੈਸੇ ਹੁਕਮ ਦਾ ਅਰਥ ਨਾਮ ਵੀ ਆਉਂਦਾ ਹੈ ਹੁਕਮਦਾਰ ਸ਼ਬਦ ਵੀ ਆਉਂਦਾ ਹੈ ਇੱਕੋ ਨਾਮ ਹੁਕਮ ਖੈ ਨਾਨਕ ਸਤਗੁਰੂ ਦੀਆ ਬੁਝਾਏ ਜੀ ਇੱਥੇ ਹੁਕਮ ਜੇ ਨੂੰ ਸਮਝ ਪੈ ਜਾਏ ਨਾ ਹੁਕਮੀ ਬੰਦਾ ਹੁਕਮ ਨੂੰ ਮੰਨਣ ਵਾਲਾ ਉਹ ਪਰਮਾਤਮਾ ਦੇ ਕੀਤੇ ਕਦੀ ਖੁਜਤ ਨਹੀਂ ਕਰਦਾ ਬੇਨਤੀ ਹੈ ਜੀ ਅੱਜ ਸਮੱਸਿਆ ਇਹ ਵੇ ਕਿ ਖੋਕਮ ਦੇ ਕਨਸੈਪਟ ਨੂੰ ਅੱਜ ਦਾ ਜਿਹੜਾ ਆਧੁਨਿਕ ਯੁੱਗ ਹੈ ਇਹ ਮੰਨਣ ਨੂੰ ਤਿਆਰ ਨਹੀਂ ਮੈਂ ਸੱਚ ਕਹਿ ਰਿਹਾ ਦੋ ਤਰੀਕੇ ਨੇ ਇੱਕ ਹੈ ਸੰਘਰਸ਼ ਦਾ ਇੱਕ ਹੈ ਸਮਰਪਣ ਦਾ ਜ਼ਿੰਦਗੀ ਵਿੱਚ ਅੱਗੇ ਵਧਣਾ ਤੇ ਸੰਘਰਸ਼ ਅਤਿ ਲਾਜ਼ਮੀ ਹੈ ਜੇ ਰੱਬ ਵਾਲੇ ਪਾਸੇ ਚੱਲਣਾ ਹੈ ਉਹਦੇ ਨਾਲ ਸੰਘਰਸ਼ ਮਤ ਕਰ ਉਹਦੇ ਅੱਗੇ ਸਮਰਪਣ ਕਰ ਸੰਘਰਸ਼ ਤੇ ਸਮਰਪਣ ਦੋ ਚੀਜ਼ਾਂ ਨੇ ਜੇ ਸਮਰਪਣ ਕਰੇਗਾ ਸਮਰਪਣ ਵਿੱਚ ਹੌਮੇ ਨਹੀਂ ਰਹਿੰਦੀ ਹੌਮੇ ਦਰਅਸਲ ਉੱਠਦੀ ਉਦੋਂ ਵਿੱਚ ਜਦੋਂ ਇਹ ਕਹਿਣ ਲੱਗਦਾ ਮੈਂ ਵੀ ਕੁਝ ਹਾਂ ਜਦੋਂ ਮੈਂ ਮਾਰੀ ਜਾਏ ਤੇ ਪਿਆਰਿਓ ਫਿਰ ਫਿਰ ਕਾਹਦਾ ਉੱਥੇ ਜੀ ਕੋਈ ਸਮੱਸਿਆ ਹੀ ਨਹੀਂ ਮੈਂ ਫਿਰ ਬੇਨਤੀ ਕਰਾਂਗਾ ਹੁਕਮ ਨੂੰ ਥੋੜਾ ਜਿਹਾ ਸਮਝਣ ਲਈ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਜਿਹੜੇ ਅਸੀਂ ਕਹਿੰਨੇ ਆ ਮੈਂ ਹੁਕਮ ਨਹੀਂ ਮੰਨਦਾ ਕੋਈ ਜੀਵ ਐਸਾ ਨਹੀਂ ਜੋ ਉੰਜ ਵੈਸੇ ਜਿਹੜਾ ਹੁਕਮ ਤੋਂ ਬਾਹਰ ਜਾਏ ਗੁਰਮੁਖੋ ਥੋੜਾ ਜਿਹਾ ਤਵਜੂ ਦੇਓ ਮੈਂ ਬੇਨਤੀ ਕਰਾਂ ਥੋੜੀਆਂ ਜੇ ਇਹ ਬਿਕਮ ਨੇ ਪੌੜੀਆਂ ਬਿਕਮਦਾਰਤ ਡੂੰਗੀਆਂ ਨੇ ਮੇਸਜ ਦੇ ਅਰਥ ਕਰ ਜਾਂਦਾ ਸਨ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਅਸਲ 'ਚ ਜਦੋਂ ਹੁਕਮ ਨਾਲ ਲਿਖਿਆ ਕੋਈ ਜੀਵ ਐਸਾ ਨਹੀਂ ਅਗਲੀ ਗੱਲ ਅਗਲੀ ਇਸ ਇਸ ਪੌੜੀ ਨੇ ਇਸ ਪੌੜੀ ਨੇ ਅਗਲੀ ਪੌੜੀ ਚ ਪਹਚਾਣਾ ਇਹਨੇ ਕਹਿਣਾ ਮੇਰੇ ਅਰਥ ਜੇ ਲੱਭਣੇ ਨਹੀਂ ਹੁਕਮ ਰਜਾਈ ਦੇ ਤੇ ਅਗਲੀ ਪੌੜੀ ਪੜ੍ਹ ਦੂਜੀ ਪੌੜੀ ਨੇ ਕਹਿਣਾ ਜੇ ਹੁਕਮ ਨੂੰ ਬੁੱਝ ਨਹੀਂ ਤੇ ਤੀਜੀ ਪੌੜੀ ਪੜ ਗਾਵੇ ਕੋ ਤੇ ਤੀਜੀ ਪੌੜੀ ਨੇ ਕਹਿਣਾ ਜੇ ਸਚਿਆਰ ਹੋਣੀ ਤੇ ਚੌਥੀ ਪੌੜੀ ਕਮਾ ਨਾਨਕ ਐਵੇਂ ਜਾਣੀਏ ਸਭ ਆਪੇ ਇਹ ਯਾਦ ਰੱਖਿਓ ਚਾਰ ਪੌੜੀਆਂ ਤੱਕ ਕੋ ਪਰਕਰਨ ਇੱਥੇ ਗੁਰਦੇਵ ਨੇ ਜਿਹੜਾ ਸ਼ਬਦ ਵਰਤਿਆ ਹੁਕਮ ਨਾਲ ਲਿਖ ਦਿੱਤਾ ਅਗਲੀ ਇੱਕ ਸਵਾਲ ਹੈ ਜੀ ਸੁਣਿਓ ਇੱਕ ਸ਼ਬਦ ਖੌਮੈ ਅਸੀਂ ਹਉਮੈ ਦਰਤ ਕਰਨੇ ਹੰਕਾਰ ਗੁਰਮੁਖ ਕੋ ਜਦੋਂ ਹੰਕਾਰ ਨਹੀਂ ਸੀ ਹਉਮੈ ਉਦੋਂ ਵੀ ਸੀ ਹਉਮੈ ਕੀ ਚੀਜ਼ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਕੀਤਾ ਗੁਰੂ ਨਾਨਕ ਸਾਹਿਬ ਨੂੰ ਸਿੱਧਾਂ ਨੇ ਪੁੱਛਿਆ ਕਿਤ ਕਿਤ ਵਿਦਜਗ ਉਪਜੈ ਪੁਰਖਾ ਕਿਤ ਕਿਤ ਦੁੱਖ ਬਿੰ ਸਜਾਈ ਗੁਰਮੁਖ ਸੁਣਿਓ ਧਿਆਨ ਦੇ ਕੇ ਇਹਦਾ ਅਰਥ ਹੈ ਮਾਹਪੁਰਖਾ ਇਹ ਜਗਤ ਕਿਵੇਂ ਪੈਦਾ ਹੋਇਆ ਇਹ ਬਿਨਸੇਗਾ ਕਿਵੇਂ ਕਿਤ ਕਿਤ ਵਿਦਜਗ ਉਪਜੈ ਪੁਰਖਾ ਕਿਤ ਕਿਤ ਦੁੱਖ ਬਿਨਸ ਜਾਈ ਬਾਬਾ ਜੀ ਕਹਿੰਦੇ ਸਿੱਧੋ ਖੌਮੇ ਵਿੱਚ ਜਗ ਉਪਜੈ ਪੁਰਖਾ ਹੌਮੇ ਅਸਲ ਚ ਹੁਕਮ ਵਿੱਚ ਜੇ ਫਿਰ ਬੇਨਤੀ ਸੁਣਿਓ ਹੌਮੇ ਹੁਕਮ ਤੋਂ ਬਿਲਕੁਲ ਬਾਹਰ ਨਹੀਂ ਕਿਉਂਕਿ ਹੁਕਮ ਤੋਂ ਬਿਨਾ ਖੌਮੇ ਦੀ ਪਦائش ਹੋ ਹੀ ਨਹੀਂ ਸਕਦੀ ਤੇ ਜਿੰਨੀ ਦੇਰ ਤੱਕ ਹੁਕਮ ਨਾ ਸਮਝਿਆ ਜਾ ਉਨੀ ਦੇਰ ਤੱਕ ਹੌਮੇ ਨਹੀਂ ਜਾ ਸਕਦੀ ਜਿਹੜੇ ਸ਼ਬਦ ਪੜਨ ਵਾਲੇ ਨੇ ਮੇਰੀ ਬੇਨਤੀ ਨੂੰ ਸੁਣ ਕੇ ਮੈਂ ਦੋਖ ਪ੍ਰਮਾਣ ਦੇਣੇ ਨੇ ਖਉਮੈ ਵਿੱਚ ਜਗ ਉਪਜੈ ਪੁਰਖਾਂ ਨਾਮ ਵਿਸਰਿਆ ਦੁਖ ਪਾਈ ਇੱਕ ਬਚਨ ਪੜੋ ਆਸਾ ਕੀ ਵਾਰ ਦਾ ਹੋਰ ਸੌਖਾ ਹੋ ਜਾਏਗਾ ਜੀ ਇਹ ਗੱਲ ਨੂੰ ਸਮਝਣ ਲਈ ਕਿ ਕੂੜ ਦੀ ਪਾਲ ਅਗਲਾ ਸਵਾਲ ਉੱਠੇਗਾ ਰੱਬ ਨੇ ਸਿਆਪਾ ਪਾ ਦਿੱਤਾ ਬਣਾਉਣ ਵਾਲਾ ਉਹ ਤੇ ਮੈਂ ਤਾਂ ਜੰਮੇ ਨੇ ਪਾਲ ਖਿੱਚੀ ਨਹੀਂ ਜਿਸ ਵਕਤ ਜੀ ਪੈਦਾ ਹੋਇਆ ਇਹ ਪਾਲ ਕਿੰਨੇ ਪੈਦਾ ਕੀਤੀ ਮਾਪਿਆਂ ਨੇ ਕੀਤੀ ਗੁਰੂ ਅੰਗਦ ਦੇਵ ਦਾ ਇੱਕ ਸ਼ਲੋਕ ਹੈ ਖਉਮੈ ਇਹ ਖਾ जात ਹੈ ਹਉ ਮੈਂ ਕਰਮ ਕਮਾਹੇ ਹਉ ਮੈਂ ਇਹੀ ਬੰਦਨਾ ਫਿਰ ਫਿਰ ਜੁਨੀ ਪਾਹੇ ਸੁਣਵੇ ਇਸ ਬੇਨਤੀ ਨੂੰ ਪਹਿਲਾਂ ਕਹੇ ਖਉਮੇ ਇਹਾਂ ਜਾਤ ਹੈ ਮੈਂ ਉਸ ਦਿਨ ਅਰਥ ਕੀਤੇ ਸਨ ਜਾਤ ਦਾ ਅਰਥ ਆ ਬ੍ਰਾਹਮਣ ਨਹੀਂ ਇੱਥੇ ਜਾਤ ਦਾ ਅਰਥ ਜੀਵ ਤਤ ਜਿਸ ਦਿਨ ਜੀਵ ਪੈਦਾ ਹੋਇਆ ਉਸ ਦਿਨ ਨਾਲੇ ਖਉਮੇ ਪਾਈ ਕਿਉਂਕਿ ਖਉਮੇ ਤੋਂ ਬਿਨਾ ਢਾਂਚਾ ਬਣੀ ਨਹੀਂ ਸਕਦਾ ਇਹ ਬੜਾ ਡੂੰਗੀ ਗੱਲ ਹੈ ਜੀ। ਹਉਮੇ ਤੋਂ ਬਿਨਾ ਨਹੀਂ ਸੀ ਹੋ ਸਕਦਾ। ਹਉਮੇ ਵੀ ਦੋ ਤਰ੍ਹਾਂ ਦੇ ਇੱਕ ਸ਼ੁੱਧ ਹਉਮੇ ਵੀ ਇੱਕ ਮਲੀਨ ਹਉਮੇ ਕਹੇ। ਜਦੋਂ ਹਉਮੇ ਸ਼ੁੱਧ ਹੋ ਜਾਂਦੀ ਹੈ ਕਰਤਾਰ ਦੇ ਸਿਮਰਨ ਵੱਲ ਤੁਰਦੀ ਹੈ। ਜਦੋਂ ਮਲੀਨ ਹੁੰਦੀ ਉਦੋਂ ਕਹਿੰਦੀ ਰੱਬ ਨਾਂ ਦੀ ਕੋਈ ਚੀਜ਼ ਨਹੀਂ। ਇਸ ਨੂੰ ਸੁਣੋ ਹਉਮੈ ਇਹ ਖਾ ਜਾਤ ਕਹੇ ਇਹਦਾ ਅਰਥ ਹਉਮੇ ਜੀਵ ਤੱਤਵ ਨਾਲ ਆਈ। ਹਉਮੈ ਇਹ ਖਾ ਜਾਤ ਕਹੇ ਮਹਾਰਾਜ ਕਹਿੰਦੇ ਨੇ ਇਹ ਜਦੋਂ ਪੈਦਾ ਹੋਏ ਉਦੋਂ ਨਾਲ ਆਗੇ। ਖੌਮੇ ਕਰਮ ਕਮਾਏ ਹੌਮੇ ਇਹ ਹੀ ਬੰਦਨਾ ਇਹ ਬੰਦਨ ਪੈਦਾ ਕਰਦੀ ਫਿਰ ਫਿਰ ਜੋਨੀ ਪਾਏ ਹੌਮੇ ਨਾ ਹੁੰਦੀ ਤਿਆਵਾ ਕੋ ਨਹੀਂ ਸੀ ਹੋਣਾ ਮਹਾਰਾਜ ਕਹਿੰਦੇ ਨੇ ਖੌਮੇ ਕਿੱਥੋਂ ਉਪਜਿਆ ਆ ਸਵਾਲ ਹੈ ਵੀ ਕੂੜ ਦੀ ਪਾਲ ਕਿੱਥੋਂ ਉਪਜੀ ਹੌਮੇ ਕਿੱਥੋਂ ਉਪਜਾ ਕਿਤ ਸੰਜਮੇ ਜਾਏ ਬਾਬਾ ਜੀ ਕਹਿੰਦੇ ਆ ਖੌਮੇ ਇੱਕ ਹੁਕਮ ਹੈ ਹੌਮੇ ਹੁਕਮ ਤੋਂ ਬਿਨਾ ਕਿਉਂਕਿ ਖੌਮੇ ਤੋਂ ਬਿਨਾ ਸ੍ਰਿਸ਼ਟੀ ਰਚੀ ਗਈ ਨਹੀਂ ਜਾ ਸਕਦੀ ਖੌਮੇ ਉਹ ਦੇਖ ਹੁਕਮ ਚ ਬਣੀ ਰਾਚ ਉਹਨੇ ਖੇਡ ਦਿੱਤੀ ਉਹਦੀ ਖੇਡ ਜੀਵਾਂ ਦੀ ਬਸ ਹੋਈ ਪਈ ਐ ਜਿਦ ਦਿਨ ਹੁਕਮ ਨੂੰ ਸਮਝ ਜਾਏ ਉਹ ਖੌਮੇ ਦੀ ਸਮਝ ਪੈ ਜਾਂਦੀ ਫਿਰ ਬੇਨਤੀ ਖੌਮੇ ਇਹੋ ਹੁਕਮ ਹੈ ਪਿਆ ਕਿਰਤ ਫਿਰਾਹ ਇਹ ਕਿਵੇਂ ਜਾਏਗੀ ਤੇ ਮਹਾਰਾਜ ਕਹਿੰਦੇ ਨੇ ਖੌਮੇ ਦੀਰਗ ਰੋਗ ਹੈ दारू ਪੀਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰਕਾ ਸ਼ਬਦ ਹੁਕਮ ਹੈ ਫਿਰ ਬੇਨਤੀ ਹੈ ਸ਼ਬਦ ਹੁਕਮ ਹੈ ਮਹਾਰਾਜ ਕਹਿੰਦੇ ਜੇ ਉਹਦੀ ਕਿਰਪਾ ਹੋ ਜਾਏ ਫਿਰ ਜੀਵ ਹੁਕਮ ਕਮੰਦ ਹੈ दारूਏ ਦੇ ਵਿੱਚ ਜਿਹੜੀ એનર્ਜੀ ਪਵਾੜੇ ਪਾਉਂਦੀ ਪਈ ਹੈ ਸੁਣੋ ਸਿੱਧੇ ਜੀ ਗੱਲ ਜਿਹੜੀ એનર્ਜੀ ਦਿਵਾਰਾਂ ਖੜੀਆਂ ਕਰਕੇ ਕਹਿੰਦੀ ਆ ਮੇਰਾ ਆ ਮੈਂ ਅਤੇ ਤੇਰਾ ਮੇਰ ਤੇਰ ਕਰਦੀ ਏ ਜੇ ਇਹਹੀ એનર્ਜੀ ਕਨਵਰਟ ਹੋ ਕੇ ਤੂੰ ਤੂੰ ਗੌਣ ਲੱਗ ਪਵੇ ਤੇ ਰੱਬ ਨਾਲ ਮਿਲ ਜਾਏ ਹੈ ਇਹਦੇ ਵਿੱਚ ਗੁਰੂ ਜੀ ਨੇ ਤੇ ਸ਼ਬਦ ਵਰਤਿਆ ਕਿ ਹੁਕਮ ਰਜਾਈ ਚੱਲਣਾ ਜੋ ਉਹਦਾ ਹੁਕਮ ਵਰਦ ਉਸ ਨੂੰ ਪ੍ਰੇਮ ਨਾਲ ਮੰਨ ਲੈ ਮੈਂ ਅਰਜ਼ ਕਰਾਂਗਾ ਹੁਕਮ ਅਸੀਂ ਮੰਨਿਆ ਮੈਂ ਆਪਣੀ ਗੱਲ ਕਰ ਰਿਹਾ ਸੁਖ ਵਾਲਾ ਹੁਕਮ ਸਵਕਾਰ ਹੈ ਦੁੱਖ ਵਾਲਾ ਕਹਿੰਿਆ ਰੱਬ ਵੈਰ ਕਮਾਂਦਾ ਇੱਜ਼ਤ ਵਾਲਾ ਹੁਕਮ ਸਵਕਾਰ ਹੈ ਪਰ ਬੇਇੱਜ਼ਤੀ ਵਾਲਾ ਨਹੀਂ ਸੱਚੀ ਮੁੱਚੀ ਜਨਮ ਵਾਲਾ ਹੁਕਮ ਪ੍ਰਵਾਨ ਹੈ ਮੌਤ ਵਾਲਾ ਨਹੀਂ ਤੇ ਨਾਨਕ ਲਿਖਿਆ ਨਾਲ ਜਿੰਨੇ ਅਸੀਂ ਜੰਮੇ ਸਾਡੇ ਹੁਕਮ ਕਰ ਤੁਰੇ ਫਿਰਨੇ ਜੇ ਹੁਕਮ ਨਾ ਹੁੰਦਾ ਤੇ ਸਾਡੇ ਵਰਗੇ ਨਿੱਕੇ ਨਿੱਕੇ ਕਿੰਨੇ ਸੈੱਲ ਇੱਕੋ ਦਮ ਅਣਗਿਣਤ ਆਏ ਸਾਰੇ ਸ਼ੀਣ ਹੋ ਗਏ ਰੱਬ ਨੇ ਤੇਰੇ ਸੈੱਲ ਤੇ ਹੁਕਮ ਲਾਗੂ ਕਰ ਦਿੱਤਾ ਕਿਉਂਕਿ ਹੁਕਮ ਤੋਂ ਬਿਨਾ ਤਾਂ ਢਾਂਚਾ ਨਹੀਂ ਬਣ ਸਕਦਾ ਹੁਕਮੀ ਖੋਵਣ ਅੱਗੇ ਗੱਲੇ ਚਲਣੀ ਇਹ ਢਾਂਚਾ ਉਹਦੇ ਹੁਕਮ 'ਚ ਬਣਿਆ ਉਹਦੇ ਹੁਕਮ 'ਚ ਭਾਣਾ ਵਰਤਿਆ ਮੈਂ ਫਿਰ ਬੇਨਤੀ ਕਰਾ ਭਾਣਾ ਜਾਂ ਤਿਸ ਭਾਣਾ ਤਾਂ ਜੰਮਿਆ ਹੁਣ ਇਹ ਥੋੜਾ ਸਾ ਥੋੜਾ ਕਿ ਇਹ ਉਹਨੂੰ ਪਾਇਆ ਹੁਕਮ ਹੋਇਆ ਢਾਂਚਾ ਬਣਿਆ ਉਹਦੇ ਬਾਣੇ 'ਚ ਜੰਮਿਆ ਜਿਹੜਾ ਕਹੇ ਮੈਂ ਹੁਕਮ ਨਹੀਂ ਮੰਨਦਾ ਹੁਕਮ ਮਾਂ ਦੇ ਦੁੱਧ ਤੋਂ ਲੈ ਕੇ ਸਿਵਿਆਂ ਤੱਕ ਵਰਤਦਾ ਕਿਦਾਂ ਦਿਲ ਕਰਦਾ ਜਿਵੇਂ ਮਰ ਜਾ ਕਿਸੇ ਦਾ ਨਹੀਂ ਕਰਦਾ ਨਾ ਪਰ ਯਾਦ ਰੱਖਿਓ ਹੁਕਮ ਆਪਣਾ ਲਾਗੂ ਕਰਾ ਕੇ ਉਹਨੂੰ ਵੀ ਅੱਗੇ ਲੈ ਜਾਂਦਾ ਕਹਿੰਦਾ ਚੱਲ ਇਹ ਸਭ ਦੇ ਨਾਲ ਲਿਖਿਆ ਮਹਾਰਾਜ ਕਹਿੰਦੇ ਨੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਇਹ ਨਾਲ ਕੈਪਰੇਥਿਕ ਸਵਾਲ ਹੋਰ ਵੀ ਹੈ ਜੇ ਹੁਕਮ ਹੈ ਤੇ ਫਿਰ ਕਰਮ ਕੀ ਚੀਜ਼ ਹੈ ਮੈਂ ਤਾਂ ਕਿਹਾ ਪੌੜੀਆਂ ਪਹਿਲੀਆਂ 2-3 ਜਣੀਆਂ ਬੜੀਆਂ ਬਿਕਮ ਤੇ ਅਖੀਰ ਜਾ ਕੇ ਵੀ ਫਿਰ ਕਰਮ ਦੀ ਕੀ ਗੱਲ ਅਗਲਾ ਕਹਿੰਦਾ ਜੀ ਤੁਸੀਂ ਕਹਾਂ ਕਰਮ ਹੁਕਮ ਕਿਹਾ ਤੇ ਹੁਕਮ ਵਿੱਚ ਸਭ ਕੁਝ ਵਰਤ ਗਿਆ ਮੈਂ ਫਿਰ ਬੇਨਤੀ ਕਰਾਂ ਜਿਹੜੀ ਖੌਮੇ ਹੈ ਇਹ ਕਰਮ ਕਰਾਂਦੀ ਹੈ ਪਰ ਖੌਮੇ ਗਿਣਤੀ ਵਿੱਚ ਹੈ ਹੁਕਮ ਗਿਣਤੀ ਵਿੱਚ ਨਹੀਂ ਜਦੋਂ ਖੌਮੇ ਅਧੀਨ ਬੰਦਾ ਮਾਰੇ ਤਾਂ ਮਾਰਾ ਵੀ ਕਰਮ ਕਰ ਲੈ ਜੇ ਉਹਦੀ ਕਿਰਪਾ ਵਰਤ ਜਏ ਤਾਂ ਮਾੜੇ ਤੋਂ ਮਾੜੇ ਕਰਮ ਨੂੰ ਵੀ ਸਾੜ ਦਿੰਦੀ ਹੈ ਗਾ। ਗੁਰੂ ਜੀ ਇੱਥੇ ਫਿਰ ਅੱਗੇ ਕਹਿੰਦਿਆ ਹੁਕਮ ਕੀਖ ਹੈ। ਹੁਣ ਮੈਂ ਬੇਨਤੀ ਕਰਾਂ ਮੈਨੂੰ ਹੁਕਮ ਦੇ ਅਰਥ ਆਰਡਰ ਨਹੀਂ ਕਰਾਂਗੇ। ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਅੱਗੇ ਗੁਰੂ ਜੀ ਕਹਿੰਦਿਆ ਹੁਕਮੀ ਹੋਵਨ ਆਕਾਰ ਆਕਾਰ ਨਹੀਂ ਐੜੇ ਨੂੰ ਕੰਨਾ ਲੱਗਾ ਆਕਾਰ। ਪਾਠ ਅਵਸਰ ਆਕਾਰੀ ਕੀਤਾ ਜਾਂਦਾ ਹੁਕਮੀ ਇੱਥੇ ਹੁਕਮੀ ਦਾ ਅਰਥ ਗੁਰਮਖਾ ਨੇ ਹੁਕਮੀ ਕੀਤਾ ਹੈ। ਔਰ ਮੈਂ ਇੱਥੇ ਬੇਨਤੀ ਕਰਾਂ ਇਹਤੇ ਹੁਕਮੀ ਦਾ ਅਰਥ یوں ਕਰੀਏ ਜਿਦਾ ਹੁਕਮ ਵਰਤ ਰਿਹਾ ਹੈ ਇੱਕ ਹੁੰਦਾ ਨਾਮ ਇੱਕ ਹੈ ਨਾਮੀ ਇੱਕ ਹੈ ਹੁਕਮ ਇੱਕ ਹੈ ਹੁਕਮੀ ਹੁਕਮੀ ਦਾ ਅਰਥ ਹੋ ਗਿਆ ਉਸ ਪਰਮਾਤਮਾ ਦੇ ਹੁਕਮ ਨਾਲ ਉਸ ਹੁਕਮੀ ਦੇ ਹੁਕਮ ਨਾਲ ਹੁਕਮੀ ਖੋਵਣ ਆਕਾਰ ਤੇ ਜਿੰਨੇ ਵੀ ਆਕਾਰ ਨੇ ਮੇਰੀ ਬਾਡੀ ਤੁਹਾਡਾ ਸ਼ਰੀਰ ਆਕਾਰ ਹੈ ਆ ਪਹਾੜੀਆਂ ਆਕਾਰ ਨੇ ਰੁੱਖ ਆਕਾਰ ਹੈ ਪਾਣੀ ਸਮੁੰਦਰ ਦਾ ਆਕਾਰ ਹੈ ਸੂਰਜ ਆਕਾਰ ਹੈ ਮੰਗਲ ਗ੍ਰਹਿ ਜਿੰਨੀਆਂ ਵੀ ਇਸ ਸਪੇਸ ਵਿੱਚ ਜੋ ਕੁਝ ਪਿਆ ਹੈ ਜੋ ਕੁਝ ਵੀ ਦ੍ਰਿਸ਼ਤਮਾਨ ਢਾਂਚਾ ਹੈ ਸਾਰੇ ਢਾਂਚੇ ਉਹਦੇ ਹੁਕਮ 'ਚ ਬਣੇ ਆ ਹੁਕਮੀ ਖੋਵਣ ਆਕਾਰ ਪਰ ਨਾਲ ਇੱਕ ਬਖਸ਼ਿਸ਼ ਕੀਤੀ ਹੁਕਮ ਨਾ ਕਿਹਾ ਜਾਈ ਮੈਂ ਤਾਂ ਕਹਿਆ ਸੀ ਵੀ ਹੁਕਮ ਨੂੰ ਕੋਈ ਕਹਿ ਨਹੀਂ ਸਕਦਾ ਹੁਕਮ ਨੂੰ ਮੰਨ ਸਕਣਾ ਹੈ ਹੁਕਮ ਅੱਗੇ ਝੁਕ ਸਕਣਾ ਹੈ ਪਰ ਜੇ ਤੂੰ ਕਹਿਣਾ ਮੈਂ मैं रब ਦੇ ਹੁਕਮ ਬਾਰੇ ਸਭ ਕੁਝ ਸਮਝ ਗਿਆ ਤੇਰਾ ਝੂਠ ਹੈ ਤੂੰ ਹੁਕਮ ਸਮਝ ਨਹੀਂ ਸਕਦਾ ਹੁਕਮੀ ਖੋਵਣ ਆਕਾਰ ਹੁਕਮ ਨਾ ਕਿਹਾ ਜਾਈ ਹੁਣ ਸਵਾਲ ਸੀ ਕੱਲੇ ਢਾਂਚੇ ਬਣਾ ਦਿੱਤੇ ਮਹਾਰਾਜ ਕਹਿੰਦੇ ਨਹੀਂ ਇਹਨਾਂ ਢਾਂਚਿਆਂ 'ਚ ਹਰਕਤ ਪੈਦਾ ਕਰਨੀ ਸੀ ਨਾ ਇਹ ਢਾਂਚਾ ਮੱਲੂ ਬਣਾ ਦਿੱਤਾ ਅਗਲੀ ਗੱਲ ਇਹ ਸੀ ਕਿਉਂਕਿ ਜੀਤ ਉਹ ਬਿਨਾ ਢਾਂਚਾ ਕੰਮ ਨਹੀਂ ਕਰ ਸਕਦਾ ਹੁਕਮੀ ਖੋਵਣ ਜੀ ਖੋਕਮ ਜਿਹਨੂੰ ਅਸੀਂ ਕਹਿੰਦੇ ਆ ਜੀਓ ਪਾਇ ਪਿੰਡ ਜਿਨ ਸਾਜਿਆ ਪਿੰਡ ਆਕਾਰ ਕਾ ਜੀਓ ਜੀਖ ਹੈ ਇਹ ਮੇਰਿਆ ਖਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹੁਕਮੇ ਖੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਖੋਵਣ ਜੀ ਉਹਦੇ ਹੁਕਮ ਵਿੱਚ ਚੇਤਨਾ ਪੈਦਾ ਹੋਈ ਹੈ ਆ ਰੁਖ ਆਕਾਰ ਕਾ ਕਿ ਉਹਦੇ ਵਿੱਚ ਚੇਤਨਾ ਨਹੀਂ ਜੇ ਚੇਤਨਾ ਹੋਵੇ ਨਾ ਹੋਵੇ ਤੇ ਫਲ ਫਲ ਕਿਉਂ ਦੇਈ ਜਾਂਦਾ ਜੀ ਆ ਆ ਸੂਰਜ ਹੈ ਕਿ ਇਹਦੇ ਚ ਜੀ ਜੀ ਨਹੀਂ ਚੇਤਨਾ ਨਹੀਂ ਜੇ ਉਹਦੇ ਚੇਤਨਾ ਨਾ ਹੁੰਦੀ ਤੇ ਰੋਸ਼ਨੀ ਸਾਨੂੰ એનર્ਜੀ ਕਿਉਂ ਦਿੰਦੀ ਮੈਂ ਬੇਨਤੀ ਕਰਾਂ ਜੋ ਆਕਾਰ ਬਣਾਏ ਉਸ ਆਕਾਰ ਦੇ ਵਿੱਚ ਉਹਨੇ ਚੇਤਨਾ ਵੀ ਪੈਦਾ ਕਰ ਦਿੱਤੀ ਇਵਨ ਕਿ ਪਾਣੀ ਵੀ ਬਣਾਇਆ ਉਹਦੇ ਵਿੱਚ ਵੀ ਤਾਂ ਰੱਬ ਨੇ ਚੇਤਨਾ ਪੈਦਾ ਕੀਤੀ ਹੈ ਪਹਿਲਾ ਪਾਣੀ ਇਹ ਉਹਦੇ ਹੁਕਮ ਚ ਹੈ ਮੈਂ ਤਾਂ ਬੇਨਤੀ ਕੀਤੀ ਜੀ ਆ ਜਿਹੜੀ ਪੌੜੀ ਹੈ ਪਹਿਲੀਆਂ ਦੋ ਖਾਸ ਕਰਕੇ ਇਸ ਸ੍ਰਿਸ਼ਟੀ ਦੀ ਰਚਨਾ ਬਾਰੇ ਇਹ ਸਾਰਾ ਜਪਜੀ ਸਾਹਿਬ ਦੇ ਦਵਾਰੇ ਘੁੰਮਣਾ ਜੀ ਹੁਕਮੀ ਖੋਵਨ ਆਕਾਰ ਹੁਕਮ ਨਾ ਕਇਆ ਜਾਈ ਹੁਕਮੀ ਖੋਵਨ ਜੀ ਹੁਕਮ ਮਿਲੇ ਲੱਲੇ ਤੇ ਦੁਲਾਵਾਂ ਨੇ ਮਿਲੇ ਨਹੀਂ ਪੜਨਾ ਹੁਕਮ ਮਿਲੇ ਵਡਿਆਈ ਸਾਚੇ ਵੇ ਜੀ ਵੀ ਉਹਨੇ ਪੈਦਾ ਕੀਤੇ ਉਹਦੇ ਹੁਕਮ ਦੇ ਵਿੱਚ ਹੀ ਵਡਿਆਈਆਂ ਮਿਲਦੀਆਂ ਪਈਆਂ ਨੇ ਮੈਂ ਇੱਥੇ ਵਡਿਆਈ ਦੇ ਅਰਥ ਇੱਕ ਤਾਂ ਨਾ ਵੀ ਕੋਈ ਲੀਡਰ ਬਣ ਗਿਆ ਵਡਿਆਈ ਮਿਲ ਗਈ ਪਦਵੀ ਮਿਲ ਗਈ ਚਲੋ ਇਹ ਵੀ ਹੁਕਮ ਜੀ ਖੇੜੀ ਓੰਜ ਸਾਚੇ ਵੇ ਉਹਦੀ ਸਭ ਤੋਂ ਵੱਡੀ ਵਡਿਆਈ ਇਹ ਵੇ ਜਿਹਨੂੰ ਸੱਚਾ ਨਾਮ ਚੇਤੇ ਆਉਣ ਲੱਗ ਪਵੇ ਵੱਡੀ ਵਡਿਆਈ ਜਾਂ ਵੱਡਾ ਨਾਮ ਚਾਹ ਵਡੀ ਵਡਿਆਈ ਖੈ ਉਹਦੇ ਹੁਕਮ ਚ ਹੀ ਵਡਿਆਈ ਮਿਲਦੀ ਪਈ ਇਹ ਗੱਲ ਹੋਰ ਇਹਨੂੰ ਹੋਰ ਡੂੰਗਾ ਦੇਖੀਏ ਆ ਜਿੰਨੇ ਜੂਨੀਆਂ ਨੇ 84 ਲੱਖ ਜੂਨ ਸਭਾਈ ਮਾਨਸ ਪ੍ਰਭ ਆ ਵਡਿਆਈ ਉਹਦੇ ਹੁਕਮ ਚ ਇੱਕ ਢਾਂਚਾ ਹੋਵੇ ਜਿਹਦੇ ਚਾਰ ਪੈਰ ਨੇ ਇੱਕ ਢਾਂਚਾ ਉਹ ਵਿੱਚ ਜਿਹਦੇ ਦੋ ਪੈਰ ਨੇ ਇੱਕ ਢਾਂਚਾ ਇਹ ਵਿੱਚ ਜਿਹਦੇ ਪੈਰ ਵੀ ਕੋਈ ਨਹੀਂ ਧਰਤੀ ਤੇ ਰेंगਦਾ ਪਿਆ ਇੱਕ ਢਾਂਚਾ ਇਹ ਵਿੱਚ ਜਿਹਦੇ ਦੋ ਖੰਭ ਨੇ ਤੇ ਦੋ ਪੈਰ ਨੇ ਪ੍ਰਮਾਤਮਾ ਆ ਜੋ ਕੋਈ ਤੂੰ ਬਣਾਨਾ ਪਿਆ ਇਹ ਵਡਿਆਈ ਵੀ ਬੰਦੇ ਨੂੰ ਤੂੰ ਦਿੱਤੀ ਏ ਜੇ ਮਾਨਸਾ ਨਾ ਪੈਦਾ ਕਰਦਾ ਕਿਸੇ ਦਾ ਕੀ ਜ਼ੋਰ ਸੀ ਇਹ ਢਾਂਚੇ ਇਹ ਜੀਵ ਤੇਰੇ ਹੁਕਮ ਚ ਨੇ ਹੁਕਮੀ ਖੋਵਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਉਤਮ ਨੀਚ ਹੁਣ ਉਹਦੇ ਹੁਕਮ ਚ ਕੀ ਖੇਡ ਕੈ ਮੈਂ ਬੇਨਤੀ ਕੀਤੀ ਸੀ ਅੱਗੇ ਜਦੋਂ ਇਹ ਬਚਨ ਉੱਤਮ ਜਦੋਂ ਆਵੇਗਾ ਤੇ ਬੰਦਿਆਂ ਦੀ ਕੈਟਾਗਰੀ ਚ ਇਹ ਸਕਦਾ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਬਤਾਉ ਉੱਤਮ ਨੇ ਅਗਲੀ ਪੌੜੀਆ ਸੰਖ ਮੂਰਖ ਅੰਧ ਕੋਰ ਸੰਖ ਚੋਰ ਹਰਾਮ ਖੋਰ ਇਚ ਨਾਨਕ ਨੀਚ ਕਹੇ ਵਿਚਾਰ ਹੁਣ ਉਹ ਸਾਰੇ ਜਿਹੜੇ ਨੇ ਨੀਚ ਬਿਰਤੀ ਵਾਲੇ ਮਹਾਰਾਜ ਕਹਿੰਦਿਆ ਉੱਤਮ ਵੀ ਤੇਰੇ ਹੁਕਮ ਚ ਨੇ ਤੇ ਸਾਚੇ ਵੇ ਨੀਚ ਵੀ ਤੇਰੇ ਹੁਕਮ ਚ ਹੀ ਪੈਦਾ ਹੋਏ ਆ ਤੇਰੇ ਹੁਕਮ ਤੋਂ ਬਾਹਰ ਕੋਈ ਨਹੀਂ ਮੈਂ ਫਿਰ ਅਰਜ਼ ਕਰਾਂ ਹੁਕਮੀ ਉਤਮ ਨੀਚ ਅੱਗੇ ਬਚਨ ਹੁਕਮ ਲੇਖ ਦੁਖ ਸੁਖ ਪਾਈ ਨਹਿ ਐੜਾ ਪਿੱਛੇ ਹਾਇ ਨੂੰ ਪਾਈਏ ਪੜਸ ਨਹੀਂ ਕਰਨਾ ਉਹ ਬੋਲਣਾ ਜਿਹੜਾ ਐੜਾ ਤੇ ਹਾਇ ਨੂੰ ਹਿਯਾਰੀ ਲੱਗੀ ਹੈ ਮਹਾਰਾਜ ਕਹਿੰਦੇ ਨੇ ਦੇਖੋ ਹਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਇਆ ਹੈ ਤੇਰੇ ਹੁਕਮ ਦੇ ਵਿੱਚ ਉੱਚੇ ਨੇ ਤੇਰੇ ਹੁਕਮ ਦੇ ਵਿੱਚ ਨੀਚ ਨੇ ਤੇ ਸੱਚੀ ਮੁੱਚੀ ਇੱਕ ਦੂਜੇ ਦੇ ਪੂਰਕ ਨੇ ਇਹਨੂੰ ਸੁਣਿਓ ਜੇ ਦੁਸ਼ਟ ਨਾ ਹੁੰਦਾ ਹਰਨਾਖਸ਼ ਤੇ ਪ੍ਰਹਿਲਾਦ ਨੂੰ ਰੋਜ਼ ਸੰਤ ਚ ਪੜਨਾ ਸੀ ਕਿਸੇ ਨੇ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਨੀਚ ਵੀ ਉੱਤਮਤਾ ਨੂੰ ਉਗਾਰਨ ਵਾਸਤੇ ਹੈ ਗੁਰਮੁਖੋ ਜੇ ਬਲੈਕ ਬੋਰਡ ਨਾ ਹੁੰਦਾ ਤੇ ਚਿੱਟੇ ਚਾਕ ਨੇ ਕਿੱਥੇ ਉਗੜ ਕੇ ਆਉਣਾ ਸੀ ਜਗੇ ਆਂਤਾਂ ਨਾ ਹੁੰਦੀ ਤੇ ਗਿਆਨ ਨੇ ਕਿੱਥੇ ਪ੍ਰਕਾਸ਼ਿਤ ਹੋਣਾ ਸੀ ਉਹਦੇ ਹੁਕਮ ਦੀ ਖੇਡ ਕੈਸੀ ਹਾਂ ਇਹ ਦੀ ਸਮਝ ਪੈ ਜਾ ਫਿਰ ਕਲਪਨਾ ਕੋਈ ਨਹੀਂ ਫਿਰ ਬੰਦਾ ਇਹ ਨਹੀਂ ਕਿ ਵੀ ਨੀਚਲੀ ਉੱਤਾਂ ਨਹੀਂ ਸੰਘਰਸ਼ ਕਰਦਾ ਪਰ ਹੁਕਮ ਨੂੰ ਮੰਨਣ ਵਾਲਾ ਕਲਪ ਨਹੀਂ ਗੁਰੂ ਜੀ ਕਹਿੰਦੇ ਆ ਹੁਕਮੀ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਉਹਦੇ ਹੁਕਮ ਚ ਕੈ मन मूर्ख काहे बिललाए पूर्व लिखे का लिखा पाई है दुख सुख प्रभु देवنهار अपर त्याग तू तसे चितार तू नो चेते कर ए हुक्म चख एसे करके गुरुजी ने वाणी च क्या ओदे हुक्म च हुक्मी उत्तम नीच हुक्म दुख सुख पाई है इकना इथे इकना दा लब्जी अर्थ है कई इकना हुक्मी ਬਖਸ਼ੀਸ਼ ਬਖਸ਼ੀਸ਼ ਲਫ਼ਜ਼ ਵੀ ਫਾਰਸੀ ਚੋਂ ਬਖਸ਼ਿਸ਼ ਰਹਿਮਤ ਇੱਕ ਉਹ ਨੇ ਜਿਨ੍ਹਾਂ ਤੇ ਤੇਰੀਆਂ ਬਖਸ਼ਾਂ ਵਰਦੀਆਂ ਪਈਆਂ ਨੇ ਇੱਕ ਇੱਥੇ ਇੱਕ ਦੇ ਕੱਕੇ ਨੂੰ ਸਿਹਾਰੀ ਲੱਗੀ ਵੀ ਬਹੁਵਚਨ ਕਈ ਜਿਵੇਂ ਇਕਨਾ ਆਇਆ ਨਾ ਜੀ ਇਸੇ ਤਰ੍ਹਾਂ ਇੱਕ ਇਕਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪੁਵਾਈ ਹੈ ਪੁਵਾਈ ਹੈ ਈੜੀ ਪਿੱਛੇ ਬਿਹਾਰੀ ਇਹ ਬੋਲ ਕੇ ਫਿਰ ਅੱਗੇ ਫਿਰ ਬੇਨਤੀ ਹੈ एक ना ਹੁਕਮੀ ਬਖਸ਼ਿਸ਼ एक ਹੁਕਮੀ सदा ਪਵਾਈ है, एक तेरे ਹੁਕਮ ਚ ਸਦਾ ਭਟਕਦੀ ਪਏ ਨੇ ਇਕ ਨਾ ਤੇ ਬਖਸ਼ਿਸ਼ ਹੋਗੀ ਇਹਨੂੰ पढ़ो, ਪੜੋ ਆਪੇ ਭਾਂਡੇ ਸਾਜੀਆਂ ਆਪੇ ਪੂਰਨ ਦੇ ਇਕ ਨਹੀਂ ਦੁੱਧ ਸਮਾਈ ਹੈ ਇਕ ਚੁੱਲੇ ਰਹਿਣ ਚੜੇ ਕੋਈ ਚੰਗਾ ਕੋਈ ਮੰਦਾ ਹੈ ਨਾ ਸਾਰੇ ਤੇਰੇ ਇਕ ਹੁਕਮ ਚ ਵਿਚਾਰੇ ਭਟਕਦੇ ਪਿਆਵਾ ਗੌਣ ਚ ਇਕ ਤੇਰੇ ਹੁਕਮ ਚ ਬਖਸ਼ਾ ਨੇ ਮਹਾਰਾਜ ਇਹ ਜਿਹੜਾ ਤੁਸੀਂ ਕੂੜ ਦੀ ਪਾਲ ਕਹੀ ਹੁਕਮ ਕਿਹਾ ਤੇ ਸਾਨੂੰ ਇਹ ਦੱਸੋ ਵੀ ਕੋਈ ਇਸ ਸ੍ਰਿਸ਼ਟੀ ਤੇ ਹੈ ਜਿਹੜਾ ਉਹਦੇ ਹੁਕਮ ਨੂੰ ਚੈਲੰਜ ਕਰ ਸਕੇ ਕੋਈ ਹੈ ਮਾਰਜ ਕਨੇ ਝੂਠ ਹੁਕਮ ਹੈ ਅੰਦਰ ਸਭ ਕੋ ਹਰ ਚੀਜ਼ ਉਹਦੇ ਹੁਕਮ ਚ ਹੈ ਬਾਹਰ ਹੁਕਮ ਨਾ ਨਾ ਕੋਏ ਬਾਹਰ ਹੁਕਮ ਨਾ ਕੋਏ ਕੋਈ ਵੀ ਐਸਾ ਨਹੀਂ ਜਿਹੜਾ ਉਹਦੇ ਹੁਕਮ ਤੋਂ ਬਾਹਰ ਹੋਵੇ ਖਾਰਕ ਨੂੰ ਉਹਦੇ ਹੁਕਮ ਅੱਗੇ ਝੁਕਣਾ ਹੀ ਪੈਂਦਾ ਹੈ। ਨਾ ਫਿਰ ਬੇਨਤੀ ਕਰਾਂਗਾ ਕੋਈ ਹੁਕਮ ਤੋਂ ਬਾਹਰ ਨਹੀਂ। ਵੱਡੇ ਵੱਡੇ ਸੁਲਤਾਨ ਖਾਨ ਮਾਰੇ ਨੇ ਕਿਹਾ ਜਾਂਕਾ ਵਸ ਖਾਨ ਸੁਲਤਾਨ ਜਾਂਕਾ ਵਸ ਸਗਲ ਜਹਾਨ ਜਾਂਕਾ ਕੀਆ ਸਭ ਕਿਛ ਹੋਏ ਤਿਸਤੇ ਬਾਹਰ ਨਹੀਂ ਕੋਈ। ਚੀਜ਼ ਹੁਕਮ ਚ ਹੈ। ਹਾਂ ਅਸੀਂ ਸਭ ਪੁਤਲੀਆਂ ਵਾਂ। ਮੈਂ ਬੋਲ ਰਿਹਾ ਆਪ ਸੁਣਦੇ ਪਇਓ ਤੇ ਉਹ ਵਿੰਦਾ ਪਿਆ ਵੀ ਇਹ ਨੱਚਦੇ ਫਿਰਦੇ ਨੇ। ਤੇ ਜਿੱਥੇ ਲੋੜ ਪੈਣੀ ਨਾਲ ਹੀ ਧਾਗਾ ਤੋੜ ਕੇ ਕਹਿੰਨੇ ਚੱਲ ਇਹਨੂੰ ਡੱਬੇ ਚ ਪਾ ਦਿਓ ਹੁਣ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਮੈਂ ਫਿਰ ਇੱਕ ਬੇਨਤੀ ਕਰਾਂ ਜਿਹੜੇ ਬੰਦੇ ਇਸ ਧਰਤੀ ਤੇ ਰੱਬ ਨੂੰ ਚੈਲੰਜ ਕਰਨ ਆਏ ਹੁਕਮ ਉਹਨਾਂ ਨੂੰ ਵੀ ਮੰਨਣਾ ਪਿਆ ਜਿਨ੍ਹਾਂ ਕੈਸੀ ਨਹੀਂ ਮੰਨਦੇ ਇੱਕ ਜਦੋਂ ਸਿੰਘਾਂ ਦਾ ਸਿੰਘਾਂ ਦਾ ਜੰਗਨਾਮਾ ਲਿਖਿਆ ਸ਼ਾ ਮੁਹੰਮਦ ਨੇ ਉਹਨੇ ਪਹਿਲਾ ਬੈਂਤ ਲਿਖਿਆ ਉਹ ਕਹਿੰਦਾ ਜੱਗ ਹੈ ਸਰਾਂ ਮੁਸਾਫਰਾਂ ਦੀ ਇੱਥੇ ਜ਼ੋਰ ਵਾਲੇ ਕਈ ਆਏ ਗਏ ਸ਼ੈਦਾਦ ਨਮਰੂਦ ਫਰਾਉਨ ਜੇ ਦਾਵੇ ਬਨ ਖੁਦਾਏ ਕਹਾਏ ਗਏ ਅਕਬਰ ਸ਼ਾਹ ਜੇ ਵਿੱਚ ਦਿੱਲੀ ਫੇਰੀ ਵਾਂਗ ਵਰ ਜਾ ਰਿਆ ਪਾਏ ਗਏ ਸ਼ਾ ਮੁਹੰਮਦਾ ਰਹੇਗਾ ਰੱਬ ਸੱਚਾ ਵਾਜੇ ਕੂੜ ਦੇ ਕਈ ਵਜਾਏ ਗਏ ਉਹਦੇ ਤੋਂ ਬਾਅਦ ਕਿਨੇ ਜਾਣਾ ਹੈ ਇਹ ਗੁਰਮਤਿ ਦੀ ਸਭ ਤੋਂ ਪਹਿਲੀ ਸਿੱਖਿਆ ਹੈ ਇਹ ਕਾਰਨ ਜਦੋਂ ਇਹ ਦੀ ਸਮਝ ਪੈ ਜਾਵੇਂ ਆਉਣ ਵਾਲੇ ਦਿਨਾਂ 'ਚ ਬੇਨਤੀ ਕਰਾਂਗਾ ਵੀ ਸਭ ਕੁਝ ਹੁਕਮ 'ਚ ਇੱਕ ਸਵਾਲ ਉੱਠਦਾ ਹੈ ਜੀ ਮੰਨ ਲਓ ਕਿਸੇ ਦੇ ਬੱਚੇ ਦੀ ਡੈਥ ਹੋ ਜਾਏ ਨਾ ਲੋਕੀ ਅਫਸੋਸ ਕਰਨ ਜਾਂਦੇ ਆ ਪਿੱਛੋਂ ਬੜਾ ਉਹਨਾਂ ਨੂੰ ਟੌਰਚਰ ਕਰਦੇ ਆ ਵਿਚਾਰਿਆਂ ਦੇ ਕਰਮ ਬੜੇ ਮਾੜੇ ਕਰਮ ਮਾੜੇ ਲਖਾਏ ਹੋਣੇ ਨਾ ਤਾਂ ਹੀ ਮਰ ਗਿਆ ਕਰਮ ਮਾੜੇ ਲਖਾਏ ਤਾਂ ਹੀ ਬੇਇਜ਼ਤੀ ਹੋਈ ਮੈਂ ਇੱਕ ਬੇਨਤੀ ਕਰਾਂ ਜਿਹੜਾ ਸੁਰਤ ਦੀ ਬਖਸ਼ਿਸ਼ ਮਿਲ ਜਾਂਦੀ ਜਿਹਨੂੰ ਸ਼ਬਦ ਦੀ ਉਹਦੇ ਵਾਸਤੇ ਇਹ ਟ੍ਰੈਜੇਡੀਆਂ ਕਰਮਿਕ ਹੁੰਦੀਆਂ ਰੱਬ ਉਹਨੂੰ ਭਾਣੇ ਦੀ ਕਸੌਟੀ ਵਿੱਚੋਂ ਕੱਢਦਾ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਕਰਮ ਮਾੜੇ ਕੀਤੇ ਸੱਤਾ ਦੇ ਚ ਘਰ ਦੇ ਪੰਜ ਜੀ ਸ਼ਹੀਦ ਹੋ ਗਏ meri ek binti hai guru karm nahi bhogda main fir binti karanga ohne din chahega kach pakayi utthe pae paap unji di gal chalegi sach ewe ke guru ode karma vich sant ode karma ch gurm ko ode karma ch bardda hukm nu swikar karke kenda main zor vi la la main ode hukm ch dakal nahi dena innu thoda ja samjan layi ek var main ek udharan ditti si ਇਥੇ ਦੁੱਖ ਤੇ ਸੁਖ ਹੁਕਮ ਆਇਆ ਇਕੱਠਾ ਫਿਰ ਬੇਨਤੀ ਸੁਣਿਓ ਇਥੇ ਜਿਹੜਾ ਬਚਨ ਆ ਨਾ ਹੁਕਮ ਲਿਖ ਦੁੱਖ ਸੁਖ ਹੈ ਤੇ ਇਹ ਕਦੀ ਖੋ ਹੀ ਨਹੀਂ ਸਕਦਾ ਜਿੱਥੇ ਸੁਖ ਵਰਤਦਾ ਉਹਦੇ ਕਦੀ ਦੁੱਖ ਨਾ ਆਵੇ ਅਸੀਂ ਜੇ ਕਹੀਏ ਜੀ ਨਹੀਂ ਰੱਬ ਸੁਖ ਹੀ ਦਏ ਸੁਖ ਮੇਰੀ ਫਿਰ ਬੇਨਤੀ ਜੇ ਪਰਮਾਤਮਾ ਦੇ ਹੁਕਮ ਦਾ ਵਰਤਾਰਾ ਹੋਵੇ ਜਿੱਥੇ ਜਨਮ ਦਾ ਸੁਖ ਦਏਗਾ ਉਥੇ ਉਹਦੀ ਮੌਤ ਦਾ ਦੁੱਖ ਨਾਲ ਲਿਖ ਕੇ ਪਾਇਆ ਜਿਹੜਾ ਅੱਜ ਸੋਕੇ ਇੱਕ ਦਿਨੇ ਦਾ ਮਾਤਮ ਹੋਣਾ ਹੈ ਜਿਹੜਾ ਅੱਜ ਮੈਂ ਸੋਖ ਕਰਕੇ ਚੱਠ ਕਰਕੇ ਬਣਾਣਾ ਪਿਆ ਇਹ ਸੋਖ ਹੈ ਪਰ ਨਾਲ ਦੱਸਿਆ ਨਹੀਂ ਜਾਂਦਾ 100 ਸਾਲ ਵੇਦ ਪਏਗਾ ਮੇਰੀ ਫਿਰ ਬੇਨਤੀ ਜਿੱਤੇ ਸੋਖ ਹੈ ਗੁਰੂ ਸਾਹਿਬ ਨੇ ਇੱਕ ਬਖਸ਼ਿਸ਼ ਕੀਤੀ ਜਦੋਂ ਹੁਕਮ ਨੂੰ ਸਮਝ ਦੀ ਜਾਏ ਉਦੋਂ ਦੁੱਖ ਵਿੱਚ ਵੀ ਰੱਬ ਜੀ ਚੰਗੇ ਲੱਗਦੇ ਆ ਸੁੱਖ ਵਿੱਚ ਵੀ ਸਿਰਫ ਇੱਕ ਮੈਂ ਉਦਾਹਰਣ ਆਪ ਜੀ ਨੂੰ ਦੇ ਕੇ ਸਮਾਪਤੀ ਕਰਨਾ ਟਾਈਮ ਕਾਫੀ ਜ਼ਿਆਦਾ ਮੈਂ ਲਾ ਲਿਆ ਪਰ ਇਸ ਕਰਕੇ ਤੁਸੀਂ ਟੇਕ ਕੇ ਬੈਠੇ ਹੋ ਇੱਕ ਵਾਰ ਉਦਾਹਰਨ ਦਿੱਤੀ ਸੀ ਕਿ ਬਾਦਸ਼ਾਹ ਦਾ ਪਿਆਰ ਸੀ ਵੈਸੇ ਇਹ ਓਸ਼ੋ ਨੇ ਕੋਟ ਕੀਤੀ ਸੀ ਜਬਜੀ ਸਾਹਿਬ ਚ ਬਾਦਸ਼ਾਹ ਦਾ ਪਿਆਰ ਸੀ ਮੰਤਰੀ ਨਾਲ ਜਿੱਥੇ ਜਾਣਾ ਕੱਥੇ ਕਪੜੇ ਇੱਕੋ ਜਿਹਾ ਬਹੁਤ ਪਿਆਰ ਕੀਤਾ ਉਹਨੂੰ ਇੱਕ ਦਿਨ ਕਿਤੇ ਬਾਹਰ ਦੂਰ ਨਿਕਲ ਗਿਆ ਘੋੜਸਵਾਰ ਘੋੜੇ ਤੇ ਚੜ੍ਹ ਕੇ ਭੁੱਖ ਲੱਗੀ ਆਪਣੇ ਸੀ ਬਾਗ ਚਲੇ ਗਏ ਮਾਲੀ ਨੂੰ ਪੁੱਛਦੇ ਨੇ ਕੁਝ ਖਾ ਲੂ ਨੇ ਕਹੇ ਇੱਕ ਫਲ ਕਹੇ ਲੱਗਾ ਰੁੱਖ ਨੂੰ ਉਹਨੇ ਤੋੜ ਦਿੱਤਾ ਫਲ ਇੱਕੋ ਸੀ ਤੇ ਰਾਜਾ ਕਹਿੰਦਾ ਵੀ ਕੰਮਕਾਰ ਮੰਤਰੀ ਨੂੰ ਪਹਿਲਾਂ ਤੂੰ ਖਾ ਲੈ ਮੈਂ ਬਾਅਦ ਚ ਉਹ ਕਹਿੰਦਾ ਨਹੀਂ ਰਾਜਨ ਤੁਸੀਂ ਪਹਿਲਾਂ ਉਹ ਕਹਿੰਦਾ ਨਹੀਂ ਨਹੀਂ ਤੂੰ ਮੇਰਾ ਮਿੱਤਰ ਵੀ ਹੈ ਮੈਂ ਤੇਨੂੰ ਬਹੁਤ ਪਿਆਰ ਕਰਨਾ ਮੰਤਰੀ ਨੇ ਹੁਕਮ ਮੰਨ ਕੇ ਫਲ ਮੂੰਹ ਚ ਪਾ ਕੇ ਜਦੋਂ ਖਾਦਾ ਅੱਖਾਂ ਚ ਪਾਣੀ ਆ ਗਿਆ ਰਾਜਾ ਪੁੱਛਦਾ ਮਿੱਠਾ ਕਹਿੰਦਾ ਐਦਾਂ ਵਰਗਾ ਤਾਂ ਮਿੱਠਾ ਕਦੀ ਖਾਦਾ ਹੀ ਨਹੀਂ ਉਹ ਚੱਕ ਮਾਰੀ ਜਾ ਚੱਕ ਸਮਝਦੇ ਨਾ ਮੈਂ ਜਾਣ ਬੁੱਝ ਕੇ ਸ਼ਬਦ ਵਰਤਣਾ ਪਿਆ ਪੁਰਾਣੇ ਉਹ ਚੱਕ ਮਾਰ ਕੇ ਖਾਈ ਜਾ ਤੇ ਆਪਣਾ ਹਿੱਸਾ ਖਾ ਕੇ ਜਦੋਂ ਰਾਜੇ ਦਾ ਖਾਨ ਲੱਗਾ ਉਹ ਕਹਿੰਦਾ ਵੀ ਇੰਨਾ ਮਿੱਠਾ ਮੇਰਾ ਤਾਂ ਹਿੱਸਾ ਦੇ ਦੇ ਉਹ ਕਹਿੰਦਾ ਨਹੀਂ ਨਹੀਂ ਇੰਨਾ ਸਵਾਦ ਮੈਨੂੰ ਹੀ ਖਾਣ ਦਿਓ ਉਹ ਜੋ ਹਿੱਸਾ ਖਾਣ ਲੱਗਾ ਰਾਜੇ ਨੇ ਚਪਟ ਕੇ ਖੋਇਆ ਉਹ ਟੁਕੜਾ ਜਦੋਂ ਮੂੰਹ 'ਚ ਪਾਇਆ ਤੇ ਜ਼ਹਿਰ ਤੋਂ ਵੱਧ ਕੌੜਾ ਉਹ ਕਹਿੰਦਾ ਤੈਨੂੰ ਅਕਲ ਨਹੀਂ ਜਦੋਂ ਮੈਂ ਤੈਨੂੰ ਆਪਣੇ ਹੱਥਾਂ ਨਾਲ ਫਲ ਪਕੜਾਇਆ ਤੂੰ ਇਹਨੂੰ ਖਾਦਾ ਤੂੰ ਉਦੋਂ ਦੱਸ ਦੇਂਦਾ ਕੌੜਾ ਸੀ ਇਹ ਜ਼ਹਿਰ ਹੈ ਉਹ ਅੱਖਾਂ ਭਰ ਕੇ ਕਹਿੰਦਾ ਰਾਜਨ ਮੈਂ ਹੁਕਮੀ ਬੰਦਾ ਵਾਂ ਜਿਸ ਹੱਥ ਨੇ ਅੱਜ ਜ਼ਹਿਰ ਭਰਿਆ ਫਲ ਦਿੱਤਾ ਹੈ ਕਈ ਸਾਲ ਹੋ ਗਏ ਨੇ ਇਸ ਹੱਥ ਨੇ ਮੈਨੂੰ ਅੰਮ੍ਰਿਤ ਵਰਗੇ ਫਲ ਵੀ ਦਿੱਤੇ ਜਿੰਨਾ ਹੱਥਾਂ ਨਾਲ ਤੂੰ ਮਿਠਾਸ ਦਿੱਤੀ ਅੱਜ ਜ਼ਹਿਰ ਦੇ ਦਿੱਤਾ ਮੈਂ ਉਲਾਮਾ ਨਹੀਂ ਸੀ ਦੇਣਾ ਕਿਉਂਕਿ ਤੇਰੇ ਹੱਥਾਂ ਨਾਲ ਸੁੱਖ ਵੀ ਮਿਲਿਆ ਤੇ ਮੈਂ ਫਿਰ ਬੇਨਤੀ ਕਰਾਂਗਾ ਗੁਰਮਤ ਕਹਿੰਦੀ ਹੈ ਕਿ ਫੁਰਮਾਨ ਤੇਰਾ ਸਿਰ ਹੈ ਉਪਰ ਫਿਰ ਨਾ ਕਰਤ ਵਿਚਾਰ ਤੂੰ ਹੀ ਦਰਿਆ ਤੂੰ ਹੀ ਕਰਿਆ ਤੁਝੈ ਤੇ ਨਿਸਤਾਰ ਬੰਦੇ ਬੰਦਗੀ ਇਕਤਿਆਰ ਸਾਹਿਬ ਰੋਸ ਧਰੋ ਕੇ ਪਿਆਰ ਤੋਂ ਪਿਆਰ ਕਰ ਲੈ ਧੱਕੇ ਮਾਰ ਲੈ ਮਹਾਰਾਜ ਕਹਿੰਦਿਆ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ कोई ਹੁਕਮ तो ਬਾਹਰ नहीं पर ਗੁਰੂ ਜੀ ਨਾਲ ਇੱਕ ਫਿਰ ਅਮਜ ਪਾ ਗਏ ਨਾਨਕ ਹੁਕਮੈ ਜੇ 부ਝੈ ਜਿਹੜਾ ਹੁਕਮ ਨੂੰ ਸਮਝ ਜਾਏ ਤਾਂ ਹਉਮੈ ਕਹਿ ਨਾ ਕੋਈ ਫਿਰ ਉਹ ਨਹੀਂ ਕਹੇਗਾ ਕੂੜ ਦੀਪਾਲ ਫਿਰ ਹਉਮੈ ਟੁੱਟੇਗੀ ਹੁਣ है ਤੁਕ ਜਿਹੜੀ ਹੈ ਨਾ ਨਾਨਕ ਹੁਕਮੈ ਜੇ 부ਝੈ ਕੌਣ 부ਝੈ ਜਿੰਨਾ 부ਝਿਆ ਉਹ ਕਹਿੰਦੇ ਨੇ ਗਾਵੈ ਕੋਤਾਨ ਹੋਵੈ ਕਿਸੈ ਤਾਨ ਆਹ ਚਲਾਏ ਰਾਓ ਇਹ ਫਿਰ ਚੱਲੇਗਾ ਅੱਗੇ ਇਹ ਲੜੀ ਇੱਕੋ ਚੱਲਦੀ ਕੱਲ ਨੂੰ ਫਿਰ ਆਪਾਂ ਇਸ ਨੂੰ ਵਿਚਾਰਾਂਗੇ ਸਾਧ ਸੰਗਤ ਮੇਰੇ ਤੋਂ ਬੋਲਦੇ ਆ ਬੇਅੰਤ ਪੁੱਲਾ ਹੋਈਆਂ ਫਿਰ ਵੀ ਮੈਂ ਯਤਨ ਕਰਾਂਗਾ ਜੀ ਮੈਂ ਸੰਗਤ ਦੀ ਸੰਤੁਸ਼ਟੀ ਕਰਾ ਸਕਾਂ ਸੇਵਾ ਕਰਕੇ ਪਰ ਆਪ ਜਰੂਰ ਪੌੜੀ ਰੋਜ਼ ਪੜ੍ਹ ਕੇ ਆਇਆ ਕਰੋ ਗੁਰੂ ਸਾਹਿਬ ਜੀ ਨੇ ਇੱਕ ਤਾਇ ਦਾ ਉਚਾਰਨ ਜਰੂਰ ਖਿਆਲ ਰੱਖਣਾ ਦੂਜਾ ਇਹਦੇ ਸੰਖੇਪ ਜੇ ਅਖਰੀ ਅਰਥ ਇਹ ਵਿਸ਼ੇ ਨੂੰ ਕੱਲ ਫਿਰ ਮੈਂ ਆਪ ਜੀ ਦੇ ਸਨਮੁਖ ਅੱਗੇ ਬੇਨਤੀ ਕਰਾਂਗਾ ਦੋ ਪੌੜੀਆਂ ਆਪਾਂ ਕੱਲ ਨੂੰ ਇਕੱਠੀਆਂ ਵਿਚਾਰਾਂਗੇ ਮੇਰੇ ਤੋਂ ਬਹੁਤ ਬੁਲਾਵੀਆਂ ਨੇ ਸਾਧ ਸੰਗਤ ਜੀ ਬਖਸ਼ ਦੇਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ